ਇਹ ਉਸ ਬਾਰੇ ਨਿਕਲਦਾ ਜਿਹੜਾ ਸੁਤੋਕਤ ਹੋ ਗਿਆ ਸੁਤੋਕਤ ਹੈਗਾ ਦੁਨੀਆ ਸੰਸਾਰ ਦੇ ਕਿਸੇ ਪਦਾਰਥ ਦੇ ਤਾਂ ਇਹ ਕਹਿੰਦੇ ਤਨਬਲ ਤੁਹਾਡਾ ਹਰ ਕੋਲ ਕਿਸੇ ਸੰਸਾਰੀ ਪਰ ਉਹ ਤੇ ਨੋ ਕੋਮ ਸੁਧੂ ਦਾ ਬਣ ਨਾਲ ਜਾਉਂਦਾ ਸੌਂਪਣ ਦਾ ਕੀ ਮਤਲਬ ਆ ਸੌਂਦੂ ਤੰਦਮਨ ਆਪਣੀ ਆਪਣਾ ਕੰਮ ਕੀ ਆਪਣਾ ਹੀ ਹੁੰਦਾ ਉਹ ਸੁਭਾਣ ਨੂੰ ਇਹ ਦੱਸਦਾ ਤੇ ਜੇ ਤੇ ਸੌਂਪਦਾ ਬਾਵੀਂ ਦੂਏ ਦਾ ਮਨ ਦੂਏ ਨੇ ਕੀ ਕਰਨਾ ਦੂਏ ਦਾ ਹਰਦਾ ਦੂਏ ਨੇ ਕੀ ਕਰਨਾ ਸੁਭਾਲਣ ਦੀ ਗੱਲ ਸਰਫ ਸੁਭਾਲਣ ਦੀ ਵੀ ਗੱਲ ਜਿਹੜਾ ਧਨ ਇਹਦੇ ਇੱਥੇ ਦੂਏ ਆਗੇ ਸਭ ਸਾਰੇ ਵੀ ਆ ਗਏ ਤਾਂ ਜਿਹੜਾ ਗਾਉਂ ਉਹ ਮੇਰੇ ਬੇਰੇ ਦੇ ਵਿੱਚ ਕੀ ਗੱਲਤਾ ਹੈ ਕੀ ਠੀਕ ਹੈ ਉਹ ਜਿਹੜੀ ਚੀਜ਼ ਬਰਦੀ ਬਾਹਰ ਕੱਢ ਕੇ ਸੁੱਟ ਦੋ ਬਾਪੜੀ ਵਰਗੀ ਰੋਟੀ ਦੇਖ ਲੋ ਬਿੱਕੀ ਗੱਲ ਸਹੀ ਹੈ ਕੀ ਕਰਦੇ ਹਾਂ ਗੱਲ ਸੁਣ ਲੈਂਦੇ ਹਾਂ ਜਿਹੜੀ ਸਾਨੂੰ ਚੰਗੀ ਲੱਗਦੀ ਉਹ ਬਦਲ ਲੈਂਦੇ ਆ ਜਿਹੜੀ ਸਾਨੂੰ ਚੰਗੀ ਲੱਗਦੀ ਹੈ ਉਹ ਅਸੀਂ ਉਹਦਾ ਰੱਖ ਲੈਂਦੇ ਹਾਂ ਕਈ ਗੱਲਾਂ ਗਲਤ ਵੀ ਸੀ ਤਾਂ ਹਟਾਉਣਾ ਉਹ ਸਾਨੂੰ ਚੰਗੀਆਂ ਲੱਗਦੀਆਂ ਕਰਕੇ ਅਸੀਂ ਛੱਡਦੇ ਆਵੇ ਕੁਰਬਾਨੀ ਨੂੰ ਕਹਿ ਦਿਆ ਵੀ ਕਹਾ ਸੰਤ ਬਾਲਾ ਨਹੀਂ ਛੱਡਦਾ ਜੋ ਵਰਜੀ ਕਰੀਓ ਤੁਸੀਂ ਆਰੇ ਜੀ ਆ ਆਵੇ ਉਹਨਾਂ ਨੂੰ ਐ ਸਮਝਾ ਦਿਓ ਵੀ ਕੁਰਬਾਨੀ ਚ ਬਾਲਾ ਦਾ ਕੋਈ ਥਾਂ ਨਹੀਂ ਹੈ ਬਾਲਾ ਵਾਸਤੇ ਉਹ ਬਾਲਾ ਤਾਂ ਇੱਕ ਅਲੱਗ ਭੇਖ ਹੈ ਅਲੱਗ ਇੱਕ ਵਿਚਾਰਧਾਰਾ ਹੈ ਅਲੱਗ ਇੱਕ ਵਤ ਹੈ ਜਿਤੀ ਵਾਰ ਜਿਵੇਂ ਸਾਡਾ ਕੜਾ ਸਰਪਾਰ ਕੰਗਾ ਕੁਸ਼ਹਿਰਾ ਵਗੈਰਾ ਹੈਗੀ ਹੈ ਕਕਾਰ ਸਿੱਖੀ ਦੀ ਨਿਸ਼ਾਨੀ ਕਹਿ ਲੋ ਇਹ ਬਾਹਰਲਾ ਨਿਸ਼ਾਨੀ ਹੈ ਇਹ ਸਿੱਖ ਹੋਣ ਦੀ ਪਹਿਲੀ ਨਿਸ਼ਾਨੀ ਇਹ ਦੇਖੋ ਨਿਸ਼ਾਨੀਆਂ ਬਹਰ ਹੈ ਬਾੜਾ ਵੀ ਕਿਸੇ ਦੀ ਨਿਸ਼ਾਨੀ ਹੈ ਲੋਕੀ ਰਿਓ ਪਰ ਦਿੱਤੀ ਹੈ ਕੁਰਬਾਨੀ ਚ ਜਦ ਮਾਲਾ ਦਾ ਜ਼ਿਕਰ ਆਇਆ ਉੱਥੇ ਧੋਤੀ ਟਿੱਕਾ ਨਾਲ ਹੈ ਉਹ ਜੀਣਾ ਨੇ ਕਿਹਾ ਟਿੱਕਾ ਦਿੱਤੋ ਉਸ ਜੀਵ ਦੇ ਟਿੱਕਾ ਦਿੱਤਾ ਨਾ ਕਰੇ ਬਿਲਕੁਲ ਗਲਤ ਇਸ ਕਰਕੇ ਹੈ ਕਿ ਉਹ ਤਾਂ ਬ੍ਰਾਹਮਣ ਤੇ ਉਹਦਾ ਬੱਕਰਾ ਹੋਵੇ ਤਾਲੀ ਬੱਕਰੀ ਮੱਤਦਾ ਨਹੀਂ ਬੱਕਰੀ ਮੱਤ ਕਿਵੇਂ ਹੋਣੀ ਹਾਲਾਂਕਿ ਜੋਗੀਆਂ ਕੋਲ ਵਾਲਾਂ ਨਹੀਂ ਹੈ ਮੈਰੀ ਨੋ ਬ੍ਰਾਹਮਣ ਕੋ ਕੋ ਬ੍ਰਾਹਮਣ ਕੋ ਵਾਲਾਂ ਖਾਦਾ ਇਹ ਬ੍ਰਾਹਮਣ ਕੋ ਵੈਸੇ ਨਹੀਂ ਹੁੰਦੇ ਸੇ ਅਸਲੀ ਬ੍ਰਾਹਮਣ ਤਾਂ ਅਪਰਿਵਚਾਰ ਵਾਲਾ ਹੀ ਬ੍ਰਾਹਮਣ ਉਹ ਤਾਂ ਉਹ ਸਿੱਖਾ ਇਹ ਪੰਡਤ ਹੋ ਗਿਆ ਬ੍ਰਾਹਮਣ ਇਹ ਵਿਦਵਾਨ ਰਹੇ ਬਰੋਹ ਵਿਚਾਰ ਛੱਡਤੀ ਵਿਦਵਾਨ ਉਹ ਹੈ ਜਿਹਨੇ ਬ੍ਰह्म ਵਿਚਾਰ ਛੱਡਤੀ ਸੰਸਾਰੀ ਜਿਹੜੇ ਗ੍ਰੰਥ ਨੇ ਸੰਸਾਰੀ ਲੜਾਈ ਝਗੜਿਆਂ ਦੇ ਗੀਤਾ ਉਹਦੇ ਵਿੱਚ ਜਿਹਵੇਂ ਲੜਾਈ ਝਗੜਾ ਹੈ ਉਹਦਾ ਮਹਾਭਾਰਤ ਦੀ ਲੜਾਈ ਹੈ ਇਹਸ ਬਦਿਆਂ ਦਾ ਜਿਹੜਾ ਇਤਿਹਾਸ ਹੈ ਸਰੀਰ ਦਾ ਸੁਬਦਤ ਲਾਈਫ ਹੈ ਉਹਦੇ ਇਵੈਂਟਸ ਨੇ ਜਿਹੜੇ ਉਹਦੇ ਘਟਨਾਵਾਂ ਨੇ ਉਹ ਇਤਿਹਾਸ ਬੜ ਜਾਂਦਾ ਉਹਨਾਂ ਦੀ ਡੋਰੇ ਰੱਖਣਾ ਉਹਨੂੰ ਪੜ੍ਹ ਪਿਆਸ ਉਸਾਰ ਦੇ ਹੋਰ ਕਈ ਕਾਰੋਬਾਰ ਜਿਵੇਂ ਰਾਜੇ ਨੂੰ ਲੋੜ ਹੈ ਕਿੱਡੇ ਵਿਸ਼ੇ ਸਾਡੇ ਕੋਲ ਰਾਜ ਪ੍ਰਬੰਧਨ ਨੇ ਇਹਨੂੰ ਦਿੱਤਾ ਵਿਸ਼ੇ ਤੁਸੀਂ ਹੀ ਲਿਖੇ ਹੋ ਆਤਮ ਲੈ क्षत्रियां ने राज करना दला रख लिया असल तबितता राज हुनी करता हुला जिते हाथ च पावरफुल की ठीक है धर्म दे अनुसार की गलती है जी ने फैसला देना है तो वो एबे मुसलमान दा काजी है काजी फैसला ददा की गलती है की ठीक है, है। साडे सुप्रीम कोर्ट ਸਰਕਾਰ ਚਾਹੇ ਚਲਾਨ ਕਰ ਦਿੰਦੀ ਹੈ ਸੁਪਰੀਮ ਕੋਰਟਾਂ ਛੱਡ ਦਿੰਦੀ ਹੈ ਪੁਲਿਸ ਚਲਾਨ ਕਰ ਦਿੰਦੀ ਹੈ ਚੀਫ ਡਿਸਟ੍ਰਿਕਟ ਪੁਲਿਸ ਤੋਂ ਚਲਾਨ ਕਰਵਾ ਸਕਦਾ ਹੈ ਸਜ਼ਾ ਨਹੀਂ ਦਰਵਾ ਸਕਦਾ ਸਜ਼ਾ ਚਲਾਨ ਪੇਸ਼ ਵੀ ਕਰਵਾ ਸਕਦਾ ਹੈ ਤੇ ਕੇਸ ਵੀ ਬੁਲਵਾ ਦਿੰਦੇ ਨੇ ਸਰਕਾਰ ਪਰ ਕੋਰਟਾਂ ਛੱਡ ਦਿੰਦੀਆਂ ਨੇ ਫਿਰ ਕੋਰਟ ਦੇ ਭਾਵੇਂ ਜ਼ਿਆਦਾ ਹੋਈ ਨਾ ਅਸਲ ਤਾਂ ਹਕੂਮਤ ਕੋਰਟ ਦੇ ਹੱਥ ਕੀ ਹੋਈ ਉਹ ਤਾਂ ਬੈਦਰ ਨੂੰ ਫਸਿਲੇ ਜਣੀ ਚਾਹੀਦੀ ਆ ਕੋਟ ਗਾਂਦੀ ਨੂੰ ਬਰੀ ਕਰਨਾ ਸੀ بڑا ਉਹ ਹੈ ਜਿਹੜਾ ਬਰੀ ਕਰ ਉਹ ਪਾਵਰ ਇਹਨਾਂ ਨੂੰ ਦੇਤੀ ਰੋ ਰਹੀ ਸੀ ਸਿਆਣੇ ਅਸਲ ਵਿੱਚ ਪਾਵਰ ਦੋਸਤ ਹੋ ਗਈ ਦੋਸਤ ਹੋ ਗਈ ਲੋ ਪੂਰੇ ਹਿੱਸੇਦਾਰੀ ਪਾਵਰ ਦੇ ਬਿਸਕੁਟ ਦੇਖ ਕੇ ਰੁਪਰਪ ਕਿਉਂ ਤੋੜ ਲੈ ਰਿਹਾ ਕੁਕਰ ਆਇਆ ਦੇਖ ਲਾਵੇ ਰਾਜ ਨੂੰ ਬਰਵਰਦੀ ਕਰਦੇ ਛਾਉਦੀ ਹੈ ਆਪਣਾ ਇੱਕ ਕਰਦੀ ਹੈ ਗਰੀਬ ਨੂੰ ਕਿਉਂ ਲਾਭਦ ਹੋ ਜ਼ਾਲਮ ਦਾ ਲਾਭਦ ਕਿਉਂ ਹੋ ਜਿਹੜਾ ਫੁੱਲ ਕਰ ਰਿਹਾ ਉਹਨੂੰ ਲਾਭਦ ਨੂੰ ਲਾਭਦ ਸਭ ਜ਼ਰੂਰ ਹੋਊਗਾ ਜਿਹੜਾ ਹੋ ਰਿਹਾ ਲਾਬਤ ਕਰ ਰਹੇ ਹੈ ਲਾਬਤ ਫਿਰ ਉਹਨਾਂ ਦੇ ਹੁਣ ਜਿਹੜੇ ਧੱਕਾ ਕਰ ਰਹੇ ਨੇ ਇਸ ਕਰਕੇ ਇਸ ਗੱਤ ਤੋਂ ਹਰ ਵਕਤ ਖਤਰਾ ਹਿਲ ਰਹਾ ਹੈ ਬਹੁਤ ਵੱਡਾ ਖਤਰਾ ਹਕੂਬਤ ਨਹੀਂ ਬਣ ਸਕਦੀ ਕਦੇ ਵੀ ਸਖਵਤ ਇਹ ਆਹ ਹਕੂਬਤ ਕਰਨ ਲੱਗ ਗਈ ਆਹ ਹਕੂਬਤ ਕਿੱਥੋਂ ਕਰਨਗੇ ਇਹ ਤਾਂ ਹੱਕ ਬਾਲ ਹਕੂਬਤ ਰਾਜਨ ਦਾ ਹਮੇਸ਼ਾ ਬਾਹਰ ਹੈ ਜਿਹੜੀ ਉਹ ਕੋਬਦ ਕਰ ਰੂ ਪਾਣੀ ਕਹਦੀ ਹੈ ਉਹ ਤਾਂ નોકરી ਹੈ ਅਵਰਕਦੀ ਉਹ ਤਾਂ ਗੁਲਾਬੀ ਹੈ ਅਵਰਕਦੀ ਉਹ ਤਾਂ ਦਾਸ ਬਣ ਕੇ ਕਰਦੀ ਹੈ ਉਹ ਕੌਣ ਕਰੂਗਾ ਉਹ ਤਾਂ ਉਹ ਆ ਜਿਵੇਂ ਲੰਗਰ ਚ ਰੋਟੀ ਹੁੰਦਾ ਹੈ ਭਾਡੇ ਵਾਜਦਾ ਹੈ ਅਵਰਕ ਕੇ ਆਪਣੇ ਚਲੀ ਗਿਆ ਉਹ ਲੀਡਰ ਲੀਡਰ ਅਗਦਾਸ ਇਹ ਤਾਂ ਹੈ ਜੀ ਲੀਡਰ ਹੈ ਸੇਵਾ ਕਰਨੀ ਜੋੜੇ ਝਾੜਦੇ ਇਹ ਹੀ ਹੈ ਲੀਡਰ ਇਹ ਤੇ ਗੁਰੂ ਕਰਤੋ ਜਿਹੜਾ ਕੋਈ ਨਾ ਕੰਮ ਕਰਨਾ ਘਟਿਆ ਹੋਵੇ ਲੀਡਰ ਘਾਇ ਵੀ ਉਹ ਵੈਸੇ ਕਰੂਗਾ ਭਾਈ ਜੇ ਤੋੜ ਲਾ ਨਾ ਘਟਿਆ ਹੋਵੇ ਕੋ ਉਹ ਕੰਮ ਹੋ ਆਏ ਵਿੱਚ ਵੀ ਹੋਵੇ ਤਾਂ ਫਿਰ ਲੀਡਰ ਖਾਲਾ ਹੋ ਗਿਆ ਸਭ ਤੋਂ ਘਾਟ ਹੋਵੇ ਉਹਦੇ ਵਿੱਚ ਹੁਣ ਚੈਦੀ ਹੈ ਨਾ ਚਲ ਜੇ ਹੈ ਵੀ ਬੰਦ ਲੀ ਹੋਵੇ ਉਸ ਵਿੱਚ ਵੀ ਹੈਗੀ ਹੈ ਆਖਰ ਤਾਂ ਇਨਸਾਨ ਹੈ ਪਰ ਬਾਕੀਆਂ ਨੂੰ ਤਾਂ ਘਟ ਗਿਆ ਹੀ ਦੀ ਇਸ ਕਰਕੇ ਜੇ ਕੋਈ ਜਿਹੜਾ ਕੋਈ ਲੋਕ ਕੰਮ ਕਰੇ ਉਹ ਜਗਦਾਨ ਨੂੰ ਕਰ ਦੋ ਕੋਈ ਗੱਲ ਚਾਹ ਕੋੜਿਆ ਢਿੱਲੇ ਦੀ ਚੜੀ ਹੋਵੇ ਚਾਹ ਪਾਣੀ ਪਿਲਾਉਣਾ ਹੋਵੇ ਚਾਹ ਲੱਕੜ ਦੀ ਸੇਵਾ ਹੋਵੇ ਜਾਂ ਢਿਆ ਦੀ ਸੇਵਾ ਜੋ ਵੀ ਮਰਜੀ ਹੋਵੇ यह ਕੋਲ ਦਾ ਸਾਡੇ ਰਾਜਾ ਗਰੋਜਾ ਮੈਂ ਹਗਮ ਕਰਦੀ ਉਹਦਾ ਨੌਕਰਾ ਦੇ ਤਰ੍ਹਾਂ ਹੈ ਗਮ ਅਜੇ ਕੈ ਨਾ ਮੈਂ ਧੋਕਰ ਇਸ ਕਰਕੇ ਰਾਜੇ ਨਾਲ ਵੀ ਬਣਦੀ ਇਹ ਵਿਚਾਰਤਾ ਦਾ ਰਾਜ ਨੂੰ ਫਿੱਟ ਨਹੀਂ ਹੈਗੀ ਜਿਹੜਾ ਰਾਜਾ ਕਹਰੋ ਦਾ ਹੋਬੇ ਜਿਹੜੀ ਮਾਲਾ ਬਣੋ ਨਾ ਕੋਈ ਲੋੜ ਕੋਈ ਜਿਹੜੀ ਆਲਾ ਜਿਹੜੀ ਹੈਗੀ ਕਾਰਨ ਕੀ ਕਾਰਨ ਹੋਦਾ ਆਲਾ ਜਿਹੜੀ ਹੈਗੀ ਇਹ ਪਹਿਲਾਂ ਕਹਿੰਦੇ ਨੇ 27 ਬਣਕੇ ਹੁੰਦੇ ਸੀ 27 ਸਭਰਤੀ ਹੁੰਦੇ ਹਰ ਸਭਰਤੀ ਦੇ ਲੋੜ ਆਖ ਬਣ ਬਣ ਕੇ ਕੋਲ ਪੂਰੀ ਬਣ ਆ ਉਹ ਵੀ ਉਹਦੇ ਗਿਆਨ ਦਾ ਹੀ ਪ੍ਰਤੀਕ ਹੈ ਉੜਦਾ ਫੇਰੋ ਆ ਗਿਆ ਵਿਸ਼ਰੂ ਭਗਤ ਹੋ ਗਏ ਫਿਰ ਮਾੜਾ ਹੋ ਫੇਰ ਲੱਗੇ ਲੈ ਕੇ ਕੋਣ ਤਾਂ ਹਾਂ ਤੇ ਘਰ ਉੜਦਾ ਫੇਰੋ ਨੇ ਚੌਕੜੀ ਬਣਾ ਲਈ 108 ਮੜਕਾਂ ਦੀ ਬਣਾ ਲਈ ਤਾਂ ਹੀ ਕੋਈ ਕਹਿੰਦਾ ਨਾ ਬੈਸੂ ਪਿਆ ਤਾਂ ਪਿਆ ਬਾੜਾ ਬਹਿਲੀ ਚਾਰ ਚਾਈ ਚੋਕੇ ਸੌੜੇ ਬਸ علاوہ ਚੌਕੜੀ ਬਣਾਉਗਾ ਮਾੜਾ ਉਬਨੇ ਕਰਤੇ ਕਿਆ ਹੋਰ ਕੁਝ ਪੱਟਲ ਦੇ ਬਾਲਾ ਸਤਾਇ ਲੋਕ ਕਹਿੰਦੇ ਆ ਜਿਹੜੇ ਬਿਸ਼ੂ ਦੇ ਡਾਇਰੈਕਟ ਸਿੱਧਾ ਸੰਤ ਬੋਨੇ ਭਾਇ ਲੋ ਬਿਸ਼ੂ ਬੋਤੜੇ ਜੀ ਬੋਲੇ 108 ਬੋਲੇ ਬਾਲਾ ਜੇ ਨਹੀਂ ਕਹਿਦਾ ਬੋਤੜਾ ਪਹਿਲਾਂ ਕੋਈ ਮਤ ਹੈ ਜਿਹਦੇ ਨਾਲ ਬਾਲਾ ਜੀ ਨਹੀਂ ਗੱਲ ਲੇ ਤੋ ਹੈ ਉਹਦੇ ਕੋਟੇ ਕਾਇ ਵਾੜਾ ਜਪਦਾ ਜਪ ਬਾਲੀ ਵਾੜਾ ਜਪਦਾ ਹੋ ਦਾਉਰੀ ਜਪਦਾ ਵਾੜਾ ਜਪਦਾ ਅਸੀਂ ਬਾਲੀ ਜਪੜੀ ਸਾਡੇ ਬਾਣੀ ਦੇ ਪੁਰ ਜਪ ਬਨ ਬੇਰੇ ਗੋਬਿੰਦ ਗੋਬਿੰਦ ਹੁਣ ਅਸੀਂ ਨਾਮ ਜਪਣ ਦੀ ਗੱਲ ਕਰ ਲਈ ਬਾਣੀ ਚੋਹੀ ਲੋਬ ਜਪਣਾ ਬਾਣੀ ਜਪਣਾ ਲੋਬ ਜਪਣਾ ਇਹ ਬਾਣੀ ਨੂੰ ਸਮਝਣਾ ਲੜਕਣਾ ਕਹਿ ਲੋ ਇਹ ਚੁੱਕੜ ਕੱਢ ਲੈਣ ਵਿਚਾਰਨਾ ਵੀ ਸਾਨੂੰ ਕਿਹਾ ਹੋਇਆ ਸੱਚ ਹੈ ਕੀ ਜਿਹੜਾ ਕਿਹਾ ਆ ਅਸੀਂ ਕਰ ਕਰਾਂਗੇ ਤਾਂ ਇਹ ਜੀ ਤੁਹਾਨੂੰ ਸਮਝਾਊਗੀ ਜੇ ਸਮਝ ਗਲਤ ਆਦੀ ਤਾਂ ਗਲਤ ਰਾਹ ਤੇ ਫਿਰ ਗਲਤ ਕਰੀ ਜਾਵਾਂਗੇ ਜੋ ਕੋ ਸੱਚ ਕਰ ਰਿਹਾ ਇਸ ਕਰਕੇ ਬਾੜਾ ਸਾਡੀ ਜੀ ਪਸੰਤ ਮਰਦਾ ਫਿਰ ਗੋਕੇ ਸੰਤਾ ਸੰਜੀਣਾ ਜੋ ਆਏ ਹੋਣੇ ਬਾੜਾ ਉਹ ਫਿਰਦੇ ਸੀ ਉਹਨਾਂ ਨੇ ਬਾੜਾ ਨਹੀਂ ਛੱਡੀ ਸਿੱਖੀ ਲੈ ਕੱਲੇ ਬਾੜਾ ਅੱਧੀ ਆ ਬੜੀ ਛੱਡੀ ਕਹਿੰਦੇ ਬਾੜਾ ਛੱੜਣੀ ਨਹੀਂ ਸਿੱਖੀ ਔਰ ਇਹ ਸੰਤਕ ਗੁਰੂਆਂ ਦੇ ਵੇਲੇ ਬਿਲਕੁਲ ਐਟਰੀ ਰਹਿਣਾ ਨਹੀਂ ਸਿੱਖੀ ਇਹ ਬਿਲਕੁਲ ਕੋਈ ਬੰਦਾ ਸਿੰਘ ਦਾ ਨੌਣਾ ਪਹਿਲੀ ਗੱਲ ਕੋਈ ਨਾ ਸਾਤਰੀ ਲੱਗਿਆ ਇਰਾਦੇ ਨਾਲ ਸੰਤ ਵੀ ਹੈ ਗੁਰੂ ਉਹ ਬਣਾਏ ਨੇ ਸਿੱਖ ਸੰਤ ਬਣਾਏ ਨੇ ਇਹਦਾ ਮਤਲਬ ਹੈ ਸਿੱਖਾਂ ਜੋ ਬੜੇ ਨਹੀਂ ਹੜੇ ਇਹ ਤਾਂ ਚਿੱਤੀ ਜਿਹੜੇ ਸਿੱਖ ਬੜੀਆ ਦੀ ਇੱਛਾ ਸੀ ਚੇਲੇ ਨਹੀਂ ਬਣਦੇ ਜੇ ਜੇ ਜੇ ਕੋਆਰਡੀਨਲ ਨਾਲ ਜੁੜਦੇ ਹੂੰ ਕਿਉਂਕਿ ਪੰਜਾਬ ਵਾਲੀ ਨਾਲ ਜੁੜਿਆ ਹੈ ਬਾਣੇ ਨਾਲ ਬਾਣੇ ਨਾਲ ਜੁੜਿਆ ਹੈ ਤੇ ਇਹ ਬਾਣੇ ਨਾਲ ਨੂੰ ਕਾਸਲੀ ਗੇਰ ਦੇ ਨਹੀਂ ਇਹ ਪੂਰੇ ਸੰਤ ਹੈਗੇ ਨੇ ਉਹ ਫਿਰ ਕਹਿੰਦੇ ਨੇ ਚੰਚੀ ਫਿਰ ਆਓ ਹੂੰ ਜਿਹੜੇ ਸਰਬਉੱਚ ਉਥੋਂ ਰਿਤੂ ਤੋਂ ਤੇ ਪ੍ਰੋਬਲਮ ਆ ਗਈ ਜੀ ਸਿੱਖਾਂ ਨੇ ਪ੍ਰੋਬਲਮ ਜ਼ਰੂਰ ਹੈ ਜੁੜੇ ਨੇ ਬਾਣੀ ਨਾਲ ਜੁੜੇ ਨੇ ਇਹ ਨਾ ਨੇ ਪਲਾਨ ਬਣਾ ਕੇ ਡੁਪਲੀਕੇਟ ਜਿਹਾ ਸੱਤ ਵੀ ਰਹਿ ਰਹੇ ਇਸ ਕਰਕੇ ਕਿ ਸਿੱਖਾਂ ਲਈ ਇਹ ਸਾਰੇ ਕਰੂਪ ਲਾਗੂ ਉੱਤੇ ਨਹੀਂ ਸਿੱਖਣਦੇ ਸਿੱਖ ਤਾਂ ਕਰ ਲਾਗੂ ਸਿੱਖੋਂ ਖਰਾ ਟੇਰਾ ਦੀ ਬਣਾਉਂਦੇ ਪੜੀ ਬਣਾਉਂਦੇ ਬਾਵੇਂ ਬਣਾਉਂਦੇ ਨੇ ਬਣਾ ਨਹੀਂ ਸਿੱਖ ਜੇ ਬਣਾਉਂਦਾ ਗੁਰੂ ਉੱਥੇ ਪ੍ਰਕਾਸ਼ ਹੈ ਤਾਂ ਉਹ ਗੁਰੂ ਦਾ ਦਾ ਹੈ ਸਾਰਾ ਸਾਰਾ ਜਾਇਦਾ ਗੁਰੂ ਦਾ ਹੈ ਉਹ ਜਾਇਦਾ ਗੁਰੂ ਠੀਕ ਹੈ ਇਸ ਦੁਬਦਾਂ ਦੇ ਵਿੱਚ ਵੀ ਸਾਡੇ ਇਹਨਾਂ ਨੇ ਪ੍ਰਕਾਸ਼ ਕਰਦੇ ਪਰੇਸ਼ਾਨ ਸਾਹਿਬ ਨਹੀਂ ਲਾਉਂਦੇ ਕਿਉਂ ਨਿਸ਼ਾਨ ਸਾਹਿਬ ਨੂੰ ਗੁਰੂ ਦਾ ਰਾਜ ਹੋਣਾ ਚਾਹੀਦਾ ਸਾਰੀ ਪਲਾਨਿੰਗ ਕੀ ਹੈ ਪਲਾਨ ਸਿਰਫ ਵਾਇਆ ਸਾਡੀ ਰਹੇ ਕਰੋ ਸਾਡੇ ਤੇ ਲਾਹੂ ਲੋਲ ਲੋਕਾਂ ਨੂੰ ਧੋਖਾ ਦੇ ਕੇ ਇਹਨਾਂ ਤੋਂ ਅਸੀਂ ਭਾਂਪੀਣਾ ਆਪਣਾ ਕਸੂਰ ਕਰਦੇ ਹਾਂ ਉਹ ਝੰਡਾ ਲਾਉਂਦੇ ਨੇ ਵਜਾਇਦਾ ਸੰਤ ਦੀ ਨਹੀਂ ਸਕਦੀ ਹਾਂ}{|\text{ਨਿਸ਼ਾਨ ਲੋ}} ਸਾਰੀ ਬੇਬਦੀ ਹੈ ਵਾਇਆ ਵਿਚੇ ਆਦਰੀ ਅਭਿਤਾ ਨੂੰ ਰੋਟੀ ਖੁਰਚੀ ਸਭ ਢਿੱਡ ਦੀ ਭੁੱਖ ਹੈ ਹੋਰ ਕੁਛ ਨਹੀਂ ਬਾਣਾ ਦੇ ਨਾਲ ਧੋਤੀ ਟਿਕਾਇਆ ਹੈ ਗੁਰੂ ਨੇ ਸਿੱਖ ਬਣਾਏ ਨੇ ਸੰਤ ਬਣਾਏ ਜੀ ਸੰਤ ਤਾਂ ਪਹਿਲੇ ਹੀ ਜਦੋਂ ਦਰਦਕ ਵੇਲੇ ਵੀ ਸੰਤ ਬਹਿਗੇ ਨੇ ਜੇ ਇਹ ਸੰਤ ਨੇ ਤਾਂ ਸਿੱਖ ਨਹੀਂ ਬਣੇ ਜਿਹੜਾ ਸਿੱਖ ਹੁੰਦਾ ਸੰਤਰੀ ਉਹ ਤਾਂ ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀਂ ਡਿਗਦੀ ਇਸ ਕਰਕੇ ਬੁਝੇ ਦੂਈ ਦੇ ਨੀ ਡੀ ਦੂਈ ਦੇ ਤਾਂ ਡੇ ਨੂੰ ਪਹਿਲਾਂ ਮੁਸਲਮਾਨ ਦਾਰ ਹੈ ਉਹ ਵੀ ਛੱਡ ਕੱਪੜੇ ਨੂੰ ਦੇ ਤੱਪਰ ਜਿੱਤੇ ਕਪੜੇ ਫਿਰ ਦਵਾਰਾਂ ਤੇ ਚਿੱਟਾ ਕਰਕੇ ਦੂਆਰ ਤੇ ਚੜਦਾ ਤੇ ਮੁਸਲਮਾਨ ਦਾ ਚੜਿਆ ਹੈ ਇੱਕ ਵਾਰ ਆਹ ਗਰਾਮ ਨਹੀਂ ਦੇ ਕਹਿੰਦਾ ਕੀ ਹੋ ਰਿਹਾ ਹੈ ਜਦੋਂ ਦੂੰਦ ਆ ਰਹੀ ਜਿਹੜਾ ਬੇਸ ਹੋਈ ਹੈ ਬੇਸ ਦੇ ਬੇਸ ਹੈ ਇਹ ਜੇ ਕੋਈ ਮੁਸਲਮਾਨ ਆਇਆ ਵੀ ਉਹਨੂੰ ਉਮਰਤ ਨਹੀਂ ਚੁਕਾਇਆ ਉਹਨਾਂ ਦਾ ਉਹੀ ਹੈ ਉਹ ਵੀ ਰਹਿਣ ਦਾ ਕਰੈਕਸ਼ਨ ਜ਼ਰੂਰ ਕੀਤੀ ਹੈ ਉਹ ਇਹ ਮਹਤਾਵਾਂ ਦੇ ਵਿੱਚ ਕਰੈਕਸ਼ਨ ਜ਼ਰੂਰ ਕੀਤੀ ਹੈ ਪਰ ਉਹੀ ਰਹਿਣ ਦੇ ਉਹ ਤਾਂ ਜਲਬਨੂ ਦੀ ਜਰੂਰਤ ਹੈ ਉਹਨਾਂ ਦਾ ਉਹਨਾਂ ਦੇ ਸਾਰ ਦੇ ਉਤਪਤੀ ਦਾ ਹੀ ਹੋਰ ਹੈ ਕਿਵੇਂ ਤੁਹਾਨੂੰ ਪਤਾ ਹੋਇਆ ਇਹਨਾਂ ਦਾ ਮਿਲਦਾ ਕਉ ਕਿ ਇਹ ਇਸੇ ਰਾਹ ਤੋਂ ਸਲਿੱਪ ਹੋ ਕੇ ਗਰੇ ਹੋਏ ਥੇ ਇਸੇ ਰਸਤੇ ਚੜਦੇ ਚੜਦੇ ਥੱਲੇ ਡੇਗੇ ਹੁਣ ਜੜਾਂ 'ਚ ਪਏ ਸੀ ਇਹਨਾਂ ਨੂੰ ਉੱਥੇ ਝੜਾ ਦੇਣਾ ਉਹ ਕਹਿੰਦੇ ਹੋਰ ਪਏ ਜੇ ਉੱਥੇ ਪਹਿਲਾਂ ਛੱਡ ਕੇ ਇੱਥੇ ਹੋ ਫੇਰ ਇੱਥੇ ਪਾਉਂ ਉਹ ਰੰਗ ਨਹੀਂ ਲੈ ਸਕਦਾ ਪਹਿਲਾਂ ਉਹਨਾਂ ਦਾ ਰੰਗ ਲੈ ਕੇ ਮੈਂ ਇਹ ਹੋ ਸਕਦਾ ਬਚਪਨ ਦੇ ਵਿੱਚ ਇੱਕ ਬੱਚਾ ਹੋਵੇ ਉਹਨੂੰ ਪਤਾ ਨਾ ਹੋਵੇ ਤਾਂ ਸਤਾਰਾ ਕਿ ਤਾ ਉਹਨੂੰ ਸਿਕਵਾਣਾ ਆ ਤੁਸੀਂ ਹੋਰ ਲੈ ਲਓ ਛੱਡੋ ਐ ਨੂੰ ਇਸੇ ਕਮਲਾ ਦੇ ਇਨਾਂ ਨੇ ਕੀ ਹਾਲ ਕਰਤਾ ਤੁਹਾਡਾ ਹਾਂ ਇਹਨਾਂ ਦੇ ਤਾਂ ਐਸੇ ਬਰਾਤ ਵੀ ਇਹਨਾਂ ਨੇ ਕੀ ਹਾਲ ਕੀਤਾ ਆਇਆ ਇਹ ਗਾਜਾਂ ਜੀ ਘੋੜਾ ਗਿਆ ਨੇਾਰੇ ਸੱਤ ਕਿ ਬਗਮਨੋ ਲਾਲੰਦ ਫਿਰਦਾ ਰਹੇਗਾ ਅਖਿਰ ਇਹਨਾਂ ਨੇ ਨਹੀਂ ਰਹਿਣ ਦਿੱਤਾ ਕੁਛ ਆਪਣਾ ਸਾਰੇ ਲਿਆ ਕੇ ਘੋੜਦਾ ਆਪਣਾ ਵੀ ਛੱਡ ਰਿਹਾ ਹੈ ਆਪਣਾ ਨਾਮ ਵੀ ਛੱਡ ਰਿਹਾ ਹੈ ਗੁਰਬਾਣੀ ਨੂੰ ਨਾ ਬੰਦੀ ਰਿਹਾ ਆਪਣਾ ਜਪਨੀ ਛੱਡ ਰਿਹਾ ਗੁਰਬਾਣੀ ਦਾ ਜਪੇ ਰਿਹਾ ਅਜਬਾ ਜਾਪ ਹੈ ਜਿਹੜਾ ਨਹੀਂ ਜਪਿਆ ਜਾਂਦਾ ਮੂੰਹ ਨਾਲ ਨਹੀਂ ਜਪਿਆ ਜਾਂਦਾ ਹੱਥਾਂ ਨਾਲ ਨਹੀਂ ਜਪਿਆ ਜਾਂਦਾ ਸਾਂ ਨਹੀਂ ਗੋਡੀ ਨਾਲ ਕੋਈ ਉਹਦਾ ਸਬੰਧ ਨਹੀਂ। ਸਿਰਹਾਮ ਨੋਬ ਜਪ ਜਿਹੜੀ ਚੀਜ਼ ਸਰੀਰ ਨਾਲ ਇਨਵੋਲਵ ਆ ਤ੍ਰਕੂੜੀ ਤੱਕ। ਸਿਰਕੂੜੀ ਤੋਂ ਥੱਲੇ ਜਾਂ ਡੋਪਿਆ ਫੇਸਰੀਟੀ ਨੇ। ਫੇਸਰੀਟੀ ਤੋਂ ਗੱਲ ਚੱਲੀ ਗਈ ਫਿਰ ਕੱਲੇ ਦਿਰਾਕਾਰੀ ਸਰੀਰ ਦਾ ਰਸੂਦ ਸੈ। ਨਾਮ ਜਪਣਾ ਕੱਲੇ ਨਿਰਾਕਾਰੀ ਸ਼ਰੀਰ ਨਸਬੋਦਾ ਬਾਹਰ ਲੈ ਨੋਂਡੀ ਕੋ ਸਭ ਜਣਾ ਉਹਨੇ ਹੀ ਹੈ ਸਮਝਣਾ ਜਿਹੜਾ ਅਕਲ ਦਾ ਗੱਬ ਅਕਲੀ ਸਾਹਿਬ ਜੇਵੀਏ ਅਕਲੀ ਕੀਜੈ ਪਾਈਏ ਬਾਣ ਅਕਲੀ ਪੜਕੇ 부ਜੀਏ ਅਕਲੀ ਕੀਜੈ ਦਾਨ ਨਾ ਅਖੇ ਰਾਏ ਹੋ ਗੱਲਾਂ ਸ਼ੈਤਾਨ ਹਾਂ ਬਿਲ ਬੁੱਧੀ ਨਹੀਂ ਬਦਲ ਬੁੱਧੀ ਨੇ ਜਪੂ ਬੁੱਧੀ ਉਹ ਬਾਣੀ ਸਮਝੂ ਬਦਲ ਨਹੀਂ ਇਹ ਰੂ ਹੈ ਸੀ ਜਿਹੜੀ ਚੀਜ਼ ਨੂੰ ਬਦਲਣਾ ਹੈ ਕੱਢ ਕੱਢ ਕਿ ਉਹ ਸੁਰਤ ਮਤਮਨ ਬੁੱਧ ਐਸੀ ਜਾ ਕੱਢ ਦਾ ਕੀ ਕਹ ਪੜੀ ਦਾ ਨਹੀਂ ਫਿਰ ਉਹ ਫੜ ਕੇ ਕੱਢੋ ਤੁਸੀਂ ਬੁੱਧੀ ਬਾਹਲਾ ਨਾ ਬੁੱਧੀ ਕਿ ਮਗੜੀ ਜਾਊ ਸਮਾਧੀ ਨਾ ਬੁੱਧੀ ਕਿ ਮਗੜੀ ਜਾਊਂਗੀ गढ़िया तथ्या गढ़िया सुरत वत भर कि के करदे चारे सोर तथ्या गढ़िया सुरा सिधा की सुद सुर विश्वरूप भगत ने, विष्णु विभव ज सिद्ध शिवजी दर दोहा में गढ़ लो थे तिजे बोलबो के यही थे ਸੁਰਾ ਸਤਾ ਸਤ ਜੋ ਗਿਆ ਜਵਾਗਿ ਘੜਨ ਦੀ ਇਹਨਾਂ ਨੂੰ ਲੋੜ ਪਈ ਸਰਾ ਦੋ ਮੱਤਾ ਨੇ ਦੋਏ ਗਾੜੀਆਂ ਪੈਣੀਆਂ ਉੱਥੇ ਆ ਕੇ ਉਹ ਘੰਡੇ ਤੇ ਇਹੇ ਘੜਨ ਲਾਗੇ ਸਾਨੂੰ ਇਹ ਆਣ ਘੜ ਬਣਾਤੇ ਸਿੱਕੇ ਆਣ ਘੜ ਬਣਾਤੇ ਇਹਨਾਂ ਨੇ ਲਾਤੀਆਂ ਬਿਆਨ ਘੜਦਾ ਤੁਸੀਂ ਹੋ ਸੰਤ ਸਾਰੇ ਆਣ ਘੜਨੇ ਹੱਸ ਸੀ ਗੁਰੂ ਦੇ ਬਾਣੀ ਇਹਨਾਂ ਦੇ ਘੜ ਤਾਂ ਘੰਡੀ ਸੀ ਅਕਲ ਸੀ ਇਹਨਾਂ ਦੇ 2 ਰੁਪਏ ਦਾ ਡੋਲੇ ਕੇ ਤੇ 150 ਦਾ ਹੈ ਫੁੰਡਾ ਫੁੱਟਿਆਦਾ ਹੈ ਹਾਂ ਫੁੰਡਾ ਫੁੱਟਿਆਦਾ ਹੈ ਬੰਦਾ ਤੇ ਗੱਲ ਵੀ ਸਹੀ ਹੈ ਇਹ ਗੱਲ ਬਿਲਕੁਲ ਸਹੀ ਹੈ ਜੇ ਇਹ ਪ੍ਰਚਾਰ ਕਰੀਏ ਇਹਦਾ ਜਵਾਬ ਕੀ ਹੈ ਸੱਚ ਦਾ ਜਵਾਬ ਨਹੀਂ ਹੁੰਦਾ ਜੋ ਸੱਚ ਪਰ ਅਸੀਂ ਤਾਂ ਹੋਰ ਹੋਰ ਗੱਲਾਂ ਘੱਡੀਏ ਉਹ ਗੱਲਾਂ ਕਹਦੇ ਕਿ ਘੱਡਿਆਇ ਜਿਹੜੇ ਕੇ ਗੱਲ ਨਜਾਇਜ਼ ਨਾ ਕਹੋ ਗੱਲ ਪਾਣੀ ਖਾਣ ਕੇ ਪੂਰੇ ਰੱਖ ਦੋ ਨਾ ਕੀ ਦੋਚੋ ਦੁੱਧ ਚੋਂ ਅਸੀਂ ਪਾਣੀ ਕੱਢਦਾ ਲੜਨਾ ਕੀ ਹੈ ਵੀ ਤੇਰੇ ਕੋ ਪਾਣੀ ਹੈ ਦੁੱਧ ਸਾਬਤ ਕਰ ਦਿਓ ਵੀ ਪਾਣੀ ਹਟ ਪਿਆ ਉਹ ਕਰਾਹੇ ਨੇ ਹਾਂ ਕਰਾਹੇ पे ਪੱਥਰ ਨੋਹ ਬੂਝ ਰਹੇ ਨੇ ਸਾਬਤ ਹੁੰਦੇ ਨੇ ਵਿਅਕਤੀ ਪੂਜਾ ਉਹ ਕਰਦੇ ਨੇ ਤਾਂ ਨਮਨ ਤਾਂ ਅਰਪੋਤੇ ਸਾਰੇ ਪ੍ਰਭੂ ਮੇਰਾ ਵੋਹੀ ਜਿਹਨਾਂ ਪ੍ਰਭੂ ਬੁਲਾਵੇ ਪਰ ਪ੍ਰਭੂ ਆਇਆ ਸੀ ਗੱਲ ਵੀ ਪ੍ਰਭੂ ਛਤਰਪਤੀ ਰਾਜਾ ਇੱਕ ਉੱਧਾ ਰਹਾੜਾ ਇੱਕ ਉੱਧਾ ਰਾਜਾ ਇੱਕ ਉੱਧਾ ਰਾਉ ਆਜੜ ਤਾਂ ਛੋੜੇ ਉਧਰ ਸਰਦਾਰ ਉਦੋਂ ਵੱਡੇ ਰਾਲੇ ਹੁੰਦੇ ਨੇ ਹੂੰ ਪਰਮਾ ਦਾ ਲੋਕ ਪਰਮਾ ਦਾ ਪਰਮਾ ਤੋਂ ਫਕੀਰ ਉਦੋਂ ਵੱਡੇ ਹੁੰਦੇ ਨੇ ਰਾਜੇ ਰਾਣੇ ਅਤੇ ਸਦਾ ਰਾਜਾ ਉਦੋਂ ਵੱਡੇ ਫਿਰ ਤੁਰੀ ਰਾਜਾ ਜਿਵੇਂ ਸੈਟਰ ਦਿੱਲੀ ਦਾ ਸੀ ਅਕਬਰ ਸੀ ਰਾਜੇ ਦੋਈ ਰਿਆਸਤਾਂ ਵਾਲੇ ਸੀਗੇ ਰਿਆਸਤਾਂ ਰਾਜੇ ਸੀਗੇ ਉਹ ਬਰਦასი ਉਹ ਸ਼ਹਿਨशाह आलम ਫਰਹੰਸਾ ਬੱਕੀ ਰਾਜਾ ਤੇਰਾ ਯਾ ਇਹ ਜਿਹੜਾ ਸੁਭਨਾ ਉੱਪਰ ਹੁਕਮ ਚਲਾਵੇ ਵਾਲਾ ਹੈ ਲੋਬ ਇਹ ਪ੍ਰਮੁਖ ਇਹ ਸਭ ਦਾ ਹੀ ਪ੍ਰਮੁਖ ਜਿਹੜਾ ਆਪਣਾ ਆਪਣਾ ਪ੍ਰਾਧਾ ਆਪਣਾ ਆਪਣਾ ਹੋ ਰਿਹਾ ਦੋਏ ਪਰਬੂ ਸਾਰਿਆਂ ਉਬ ਉਹ ਜਿਹੜਾ ਗੁਰੂ ਆ ਉਹ ਸਾਰਿਆਂ ਵਾਸਤੇ ਉਪਦੇਸ਼ ਐ ਜਿਹੜਾ ਸਿਰਫ ਉਹਨਾਂ ਵਾਸਤੇ ਜਿਹੜਾ ਸਤਗੁਰ ਹੈ ਉਹ ਬਹਿਰ ਆਪਣੇ ਆਪਣੇ ਲੈਵਲ ਦਾ ਉਪਦੇਸ਼ ਦਿੰਦਾ ਮੈਂ ਆਪਣਾ ਗੁਰੂ ਪੁੱਛਦੇ ਜਿਹੜਾ ਆਪਣਾ ਗੁਰੂ ਮੈਨੂੰ ਉਪਦੇਸ਼ ਦਿੰਦਾ ਕਹਿੰਦੇ ਟਿਊਸ਼ਨ ਜਦ ਪੜਾਉਂਦਾ ਨਾ ਤਾਂ ਉਸੇ ਕੱਲੇ ਨੂੰ ਬਣਾਉਂਦਾ जब ਕਲਾਚ ਪੜਾਉਂਦਾ ਤਾਂ ਸਾਰੇ ਨੂੰ ਪੜਾਉਂਦਾ ਕਲਾਚ ਪੜਾਉਂਦਾ ਤਾਂ ਦੂਜੇ ਵੀ ਨਾਲ ਲੈ ਟਿਊਸ਼ਨ ਪੜਾਉਂਦਾ ਕਲਾਚ ਪੜਾਉਂਦਾ ਜਿਹੜਾ ਸਾਡੇ ਅੰਦਰ ਆਦਾ ਉਹ ਸਾਨੂੰ ਪੜਾਉਂਦਾ ਜਿਹੜਾ ਧੂਆ ਹੈ ਸਤਗੁਰ ਹੈ ਉਹ ਸਾਰਿਆਂ ਨੂੰ ਪੜਾਉਂਦਾ ਉਹ ਬਾਣੀ ਸਾਰਿਆਂ ਨੂੰ ਪੜਾਉਂਦੀ ਗੁਰ ਸਤਗੁਰ ਕਲ ਬਣਦਾ ਗੁਰ ਸਤਗੁਰ ਜਦ ਬਣਦਾ ਹੈ ਜਦ ਆਤਮ ਸਤਸੀ ਹੋ ਜਾਂਦਾ ਸਤਪੁਰਖ ਨੂੰ ਜਾਣ ਲੈਂਦਾ ਹੂੰ ਸਤਪੁਰਖ ਨੂੰ ਜਦ ਜਾਣ ਲੈਂਦਾ ਹੈ ਆਤਮ ਜਿਹੜਾ ਹੈ ਨਾ ਪ੍ਰਾਤਮਾ ਸਤਪੁਰਖ ਹੈ ਹੂੰ ਆਤਮਾ আর ਪ੍ਰਾਤਮਾ ਦੋਹਾਂ ਨੂੰ ਜਾਣ ਲੈਂਦਾ ਹੈ ਸਤਗੁਰ ਉਹ ਜਦੋਂ ਆਪ ਕੋਲ ਜਿੰਨਾਂ ਹੈ ਸਤ ਉਹ ਸਤਪੁਰਖ ਜੇ ਗੁਰੇ ਸਤਗੁਰ ਉਸ ਕਾਰਨ ਪਹਿਲਾ ਪਹਿਲਾਂ ਕੋਲ ਹਰ 스테이트 ਤੇ ਆਦੂ ਬੁੱਧੇ ਪਾਸ ਤੇ ਰਹੋ ਮਰ ਜਾਣ ਸਭਾਤ ਜਾਣਦੀ ਹੈ ਉਹ ਗੁਲ ਕਰੇ ਉਹ ਗੁਲ ਕਰਦਾ ਜਾਣ ਕੇ ਉਹ ਉਦੋਂ ਚਾਹੇ ਗੁਰੂ ਵਾਲਾ ਹੈ ਚਾਹੇ ਨਹੀਂ ਉਸ ਲੈਵਲ ਦਾ ਭੈਣ ਸਾਰਿਆਂ ਨੂੰ ਹੈਗਾ ਪਰ ਇਹ ਤਾਂ ਉਦੋਂ ਵੀ ਹਰਦਾ ਜੀਏ ਕਵੀ ਕਰ ਜੀਹਦੇ ਗੱਲਾਂ ਦਾ ਪਤਾ ਹੈ ਵਗਾਰ ਕਰਨਤ ਫੜੇ ਵਗਾਰ ਸੰਤਤ ਹੋ ਚ ਜਾਏ ਜਿਹੜੇ ਲੋਕਸਾਧਨ ਦੇ ਜੀ ਕਹਿੰਦੇ ਉਹਨਾਂ ਨੂੰ ਵੀ ਪਤਾ ਕਿਆ ਕੰਮ ਕਰਤਾ ਕ ਆਪਣਾ ਕਰੇ ਕਿਹੜਾ ਹਟਦੇ ਸਗਤ ਜਾ ਕੇ ਉਹ ਜਾਣਗੇ ਜਿਹੜੇ ਪਹਿਲਾਂ ਹੀ ਸੰਗਤ ਜਾ ਕੇ ਉਹੀ ਹਟਦੇ ਨੇ ਜਿਹੜੇ ਪਹਿਲੇ ਹੀ ਹਟਿਆ ਹੋਏ ਉਹ ਹੀ ਉਹ ਹੀ ਨੇ ਆ ਕੇ ਸੰਗਤ ਦੇ ਵਿੱਚ ਜਿਨ੍ਹਾਂ ਦਾ ਮਤਲਬ ਪਹਿਲਾਂ ਹੀ ਜਾਂਦਾ ਹੁੰਦਾ ਉਹ ਜਿਹੜੇ ਦੂਰੇ ਹੁੰਦੇ ਨੇ ਉਹ ਸੱਜਾ ਚਾਹ ਉਹ ਨਹੀਂ ਠਿੱਕਦੇ ਪਹਿਲਾਂ ਹੁੰਦੀ ਸੀ ਆ ਜਾਂਦੇ ਨੇ ਸਬਕ ਤੇ ਰਹਦੇ ਵੀ ਰਹੇ ਰਹਿੰਦੇ ਕਰਦੇ ਰਹੇ ਨਾਲੇ ਕਾਰਨ ਵੀ ਹੋਰ ਹੁੰਦੇ ਰਹਿਣ ਦਾ ਉੱਤੇ ਕਾਰਨ ਕਈ ਹੋਰ ਹੁੰਦੇ ਸੌਖੀ ਜ਼ਿੰਦਗੀ ਸੌਖੀ ਰੋਟੀ ਬਣਦੀ ਹੈ ਜਾਂ ਤਾਂ ਥੋੜੀ ਚੌਦਰਵੀ ਫालतੂ ਬਰਚਦੀ ਸੀ ਸਸਤਾ ਹੁੰਦੀ ਉਹਦੇ ਕਾਰਨ ਹੋਰ ਹੁੰਦੇ ਪਰ ਤਰਤੀਲੀ ਜਿੜੇ ਰਹੇ ਤਦ ਲਈ ਤੋ ਕੋਈ ਨਾ ਦਾ ਟਾਰਗੇਟ ਹੋ ਰਿਹਾ ਤੇ ਰਹਿਣ ਦਾ ਟਾਰਗੇਟ ਕੀ ਹੈ ਕਿਸੇ ਦਾ ਟਾਰਗੇਟ ਤੇ ਬੰਦ ਕਰ ਤੋ ਨਾਨਕ ਭ੍ਰਮ ਪਉ ਕਾਟ ਜੈ ਚੂਕਾ ਜਮ ਕੀ ਜੋ ਲਨਕ ਭ੍ਰਮ ਪਉ ਕਾਟ ਫਿਰ ਨਾਨਕ ਕਹਦਾ ਪਰਮਉਰ ਪਉ ਕੇ ਪਰਮਉਰ ਕੱਟ ਹੁੰਦਾ ਨਾ ਦੇ ਕੰਮ ਅਤਿਕ ਦਰਬੀ ਕੋਈ ਚੀਜ਼ ਨਹੀਂ ਹੈ ਪਰ ਮੁਟਪੇ ਦਾ ਉੱਪਰ ਵਾਲੀ ਚੀਜ਼ ਅਗਿਆਤਤਾ ਜੋ ਫੈਲਾਉਣ ਵਾਲੀ ਇੱਕ ਚੀਜ਼ ਹੈ ਜੀਵ जीव ਕਾਲ ਹੋਏ ਵਰਜੂ ਕੋ ਕਿਸੇ ਨੇ ਗਲਤ ਦੱਸਤਾ ਇਹਨੇ ਉਹ ਕਬਲ ਲਿਆ ਜਿਆਦੇ ਰੋੜੇ ਰੂ ਤੱਥੇ ਤੇ ਰੋੜੇ ਰੂ ਬੰਦ ਹੂੰ ਰੋੜੇ ਸਮਝਾਇਆ ਤੇ ਦੱਸੀ ਹੋਈ ਚੀਜ਼ ਦੱਸੇ ਤੇ ਚੀਜ਼ ਜਿਹੜੀ ਆਪਾਂ ਬੋਲ ਲੈਂਦੇ ਹਾਂ ਸਮਝਾਏ ਤੇ ਛੱਡਉਂਦੀ ਹੈ ਦੱਸੇ ਤੇ ਨਹੀਂ ਛੱਡਉਂਦੀ ਦੱਸੇ ਤੇਰੀ ਹੈ ਫਿਰ ਉਹ ਫੈਸਲਾ ਕਰਦਾ ਵੀ ਆਹ ਗੱਲ ਤਾਂ ਆਹ ਗੱਲ ਉਹ ਸੁਪਰੇ ਵਲਾ ਹੋਊਗਾ ਛੱਡਦਾ ਛੱਡਦਾ ਸਮਝ ਕੇ ਸਮਝ ਕੇ ਛੱਡਦਾ ਤੇ ਸਮਝ ਲੈਂਦਾ ਵੀ ਹੈ ਨਹੀਂ ਫੇਚਣ ਜਿੱਦਾਂ ਜਨ ਸੁਭਿਦਾਰ ਨਹੀਂ ਹੁੰਦੇ ਛੱਡ ਜੇ ਬੰਦੇ ਸੌਖਾ ਲੈਂਦਾ ਛੱਡਦਾ ਹੋਖਾ ਦੱਸੇ ਤੇ ਬਦਲ ਲੈਂਦਾ ਸਮਝ ਕੇ ਛੱਡਦਾ ਕੋਈ ਦੱਸਦਾ ਵੀ ਇੱਥੇ ਹੀ ਬੁੜੇ ਰਹੇ ਰਹੇ ਡੰ ਲੱਗਿਆ ਉਹ ਤਰ੍ਹਾਂ ਤੋਂ ਫੇਰ ਬਹੁਤ ਔਖਾ ਬਲਤ ਕਿਹੜਾ ਕੋਲੋਂ ਡੰ ਲੱਗਦਾ ਹੈ ਬੜੀਆਂ ਦੇ ਵਿੱਚੋਂ ਹੁੰਦਾ ਹੈ ਬੜੀਆਂ ਤੋਂ ਡਰ ਲੱਗ ਜਾਂਦਾ ਹਾਂ ਜੇ ਨਾਮ ਪਤਾ ਨਹੀਂ ਨਾ ਹਾਂ ਜੇ ਨਾਮ ਉਹ ਕਵਰੇਗਾ ਤੇ ਬੜੀਆਂ ਜਿਹੜੀ ਜਗ੍ਹਾ ਹੈਗੀ ਐ ਲੋਕਾਂ ਤੇ ਬੜੀਆਂ ਨੇ ਸਾਰ ਪਤਾ ਵੀ ਹੈਗੀ ਦੇ ਵਿੱਚ ਤਾਂ ਇੱਕ ਜਗ੍ਹਾ ਕ੍ਰਿਸ਼ਨ ਉਹ ਕਹਿੰਦਾ ਉਹਨਾਂ ਦਾ ਕਰ ਲ ਬਈ ਕ੍ਰਿਸ਼ਨ ਨੇ ਕਹਿੰਦਾ ਕਿ ਬਹੁਤ ਕੀ ਬਥੜਾ ਉਹ ਕਹਿੰਦਾ ਬਈ ਮੈਂ ਕੁਆਰੀ ਐ ਤੋ ਚਲ ਬਈ ਵੇਰੋ ਮੇਰੀ ਮਾਂ ਦਾ ਤੋ ਪਹਿਲਾਂ ਦਾ ਜਨਮ ਬੇਰਾ ਮੈਨੂੰ ਐਸੀ ਧਰਤੀ ਤੇ ਸੰਸਕਾਰ ਕਰੀ ਜਿੱਥੇ ਕੋਈ ਪਹਿਲਾਂ ਬੰਦਾ ਨਾ ਸੰਸਕਾਰ ਕੀਤਾ ਕਹਿੰਦਾ ਜਗਾਈ ਨਹੀਂ ਹੈ ਜੀ ਇਹ ਉਹ ਕਹਿੰਦਾ ਕੋਈ ਜਗ੍ਹਾ ਨਹੀਂ ਹੈ ਪ੍ਰਥਵੀ ਦੇ ਜਿੱਥੇ ਕੋ ਬੰਦਾ ਨਾ ਭੁੱਖਿਆ ਦਾ ਹੋਇਆ ਹੋਵੇ ਬੰਦੇ ਹੀ ਨੇ ਜਿਹੜੇ ਮਕੌੜੇ ਕਹਿੰਦੇ ਆਦਮੀ ਦੇ ਬੰਦੇ ਨੇ ਪਟਕ ਦਿਖਾਉਂਦਾ ਤਾ ਦੋ ਅਜਿਹੀ ਕੋ ਜਗ੍ਹਾ ਨਹੀਂ ਹੈ ਫਿਰ ਕਹਿੰਦਾ ਤੂੰ ਕਹਿੰਦੇ ਦੇ ਸਾਹਮਣੇ ਮੈਂ ਦੋ ਤਰਕੇ ਆਪਣੀ ਥੇੜੀ ਦੇ ਸੰਸਕਾਰ ਕਰੂਗਾ ਰੇਹ ਜੀ ਗੱਲ ਕੇ ਇਹਦੀ ਉਹ ਵੀ ਗੱਲ ਗਈ ਹੋਰ ਉਹ ਵੀ ਹੈ ਜੀ ਹਾਂ ਹਾਂ ਆਪਾਂ ਤਾਂ ਇਹ ਨਹੀਂ ਚਲੋ ਉੱਥੇ ਕਰਵਾਉਂਦੇ ਉਹ ਹੈ ਜੀ ਤੇ ਜੋ ਚੁੱਕਾ ਜੋਤੀ ਜੋ ਜੇ ਪਰਮਰ ਕੋ ਅਕੜ ਦਿੰਦਾ ਫਿਰ ਜਾਵਨ ਸਾਡੇ ਧਿਆਨ ਰੱਖਦਾ ਬਾਜ਼ਾਰ ਪਸਾਰ ਬੁਖ ਡਰਖਤ ਪੁੱਛ ਤਾ ਤੂ ਬੋਹ ਬੋਹਰ ਬੋਹਰ ਇਹ ਬੋਬਲਾ ਬੈਠਾ ਕਿੱਧਰ ਬੈਠਾ ਉੜਦਾ ਫੁੱਲ ਲੜਦਾ ਉਹ ਰਿਆਂ ਉੜਦਾ ਬੋਲਿਆ ਟੋਟੇ ਕਰ ਪੜ ਉਹ ਜਗਾਲੀ ਕਰਦਾ ਉਹ ਬੋਲ ਲੜਕੀ ਜਾਂਦਾ ਉਹ ਕਿੱਧਰ ਬੈਠਾ ਰਹਿੰਦਾ ਛਾਹ ਹੋਈ ਅਦੀ ਬੋਲਦਾ ਹੁਣ ਉਹਦਾ ਟੋਟਾ ਕਿੱਥੋਂ ਗੱਲ ਜਦੋਂ ਬੋਲਦੇ ਦੇਖੀ ਜਾਂਦਾ ਉਹ ਇਹ ਉਦਾ ਉੜਦਾ ਬੁੱਲ ਜਦ ਚਬ ਛੱਡੇ ਜਾਂਦਾ ਫਿਰ ਇਹ ਨੂੰ ਇਹ ਉੜਦਾ ਉਹ ਲੰਮਾਈ ਐਦੀ ਜਾਂ ਕਿ ਨਹੀਂ ਜੀ ਇਹ ਤੇ ਦੇ ਦਾ ਕਾਲ ਲੱਗਿਆ ਇੱਕ ਹੁਕਮ ਦੇ ਵਿੱਚ ਦੋ ਹੈ ਜਿਹੜਾ ਵਾਰੰਟ ਲੈ ਕੇ ਆਉਂਦੇ ਪਰਵਾਣਾ ਫਿਰੇ ਨਹੀਂ ਹੂੰ ਬਾਅਦ ਚ ਪਰਵਾਣਾ ਜਿਹੜਾ ਹੈ ਨਾ ਕਾਲ ਦਾ ਨਹੀਂ ਉਹਦਾ ਬਰਦਾਰੀ ਹੁੰਦਾ ਉਹਦੇ ਸਰੀਰ ਛੱਡਣ ਦਾ ਤਉਹਦਾ ਮਰਦਾਰੀ ਹੁੰਦਾ ਉਹਦੇ ਜੀ ਛੱਡਣ ਦਾ ਟਾਈਮ ਨਾ ਆਵਾ ਬਰਦਾਰੀ ਉਹ ਤੇ ਆਉਂਦਾ ਗੋਜ ਆ ਹਾਂ ਉੱਥੇ ਬੁਲਾਵਾ ਹੁੰਦਾ ਕੋਈ ਕੋਈ ਉਹਨੂੰ ਸੱਚਖੰਡ ਪੇ ਕਾਇਰ ਵੀ ਸੱਚਖੰਡ ਆ ਜਾ ਉਹ ਆਪਣੇ ਕੋਲ ਬੁਲਾ ਹਰ ਜੱਲੇ ਹਰਪੁਰ ਪਾਸ ਜੀ ਉਹਨੂੰ ਕੋਲ ਚੱਲੇ ਸੱਚਖੰਡ ਦਾ ਜੇ ਦੇਖਿਆ ਪਹਿਲੇ ਪਹੁੰਚਿਆ ਬੰਦਾ ਜੇ ਰਸਤਾ ਨਹੀਂ ਤੇ ਪਹਿਲਾਂ ਆਉਂਦਾ एरिगल एरिगल साच खानदे में आर्य अवस्था शुद्ध है पर इधर भी पैर होता है गोल्खाए जाए तो समझो उदा हृदय जुड़ा जो हृदय सेंटर च रहेगा उठे ओ वेले तक ठिरली क्यों जो अस्थिर लगया तब ठिर जाड़ोड़ो जे श्री हृदय जिदा जित शरीर है खालण वाला उठे बैठा है जो शरीर हमदा नाल हुंदा है ਗੱਲ ਬਾਤ ਵੀ ਕਰ ਲਈਏ ਜਦੋਂ ਅਸਥਿਰ ਤਾਂ ਹੁੰਦਾ ਥਿਰ ਨਹੀਂ ਹੁੰਦਾ ਉਹ ਨਾ ਜੰਦਾ ਹਾਂ ਥਿਰ ਹੀ ਹੁੰਦਾ ਹੈ ਥਿਰ ਨਾ ਰਹੇ ਇਸ ਕਰਕੇ ਨਾਰਾ ਤੇ ਵੀ ਪੈ ਰਹੇਗਾ ਦੀਵੇ ਦੋਏ ਜਗਦੇ ਰਹੇ ਉਹਨਾਂ ਚ ਦੀਵੇ ਦੋਏ ਸਰੀਰ ਛੱਡੜੇ ਸੰਸਾਰ ਦੇਖਣਾ ਬੰਦ ਹੋ ਲੋ ਉਹ ਤੋਂ ਵੱਡ ਨੂੰ ਹੂੰ ਵਾਓ ਉੜ ਕੇ ਸੰਸਾਰ ਨਹੀਂ ਗਿਆ ਆਇਆ ਫੇਰ ਅੱਖਾਂ ਰੋ ਉਹਨਾਂ ਹੰਡ ਰੋ ਜਿਹੜਾ ਕਮਜ਼ੋਰ ਹੁੰਦਾ ਹੈ ਕਿਹਨੂੰ ਸੋਕੀ ਹੋ ਰਿਹਾ ਰੋ ਭਗਤਾਂ ਨੇ ਵੀ ਕਿਹਾ ਵੀ ਰੋਲਣ ਤੇ ਰੱਖੋ ਉਹ ਲੜਦੇ ਦਾਲ ਚ ਨੂੰ ਬਿਡੋ ਨਾ ਮਨ ਕਿਸੇ ਬਲ ਕਿਸੇ ਤੋਂ ਦਾਲ ਚ ਬਿਡੋ ਸਕਦਾ ਦੋਤ ਜੇਦਾ ਕੋਈ ਵੀ ਉਹ ਫਟ ਲਵਾ ਸਕਦਾ ਕੋਈ ਗਲਤ ਕੰਮ ਕਰ ਸਕਦਾ ਕੋਈ ਵੀ ਗਲਤ ਕੰਮ ਕਰ ਸਕਦਾ ਜੇ ਰਹਿਣਾ ਉਵੇਂ ਮੰਨਦੀ ਵੱਡੀ ਚੀਜ਼ ਧਿਆਨ ਸਤਾਂ ਪ੍ਰੀਤ ਕਰ ਇਹਦੇ ਤੇ ਤੇ ਬੁੱਧੀ ਦੀ ਤੇ ਢਿੱਲੀ ਦੋ ਡੰਗਾਰ ਹੈ ਸੰਕਲੋ ਦਾ ਕੱਲੇ ਨਾ ਪਿਆ ਸਾਰਾ ਦਰ ਬੈਠਾ ਦਨ ਬੈਠਾ ਨਾ ਉਹਦੀ ਇਤੋ ਘੋੜੀ ਬੈਠੇ ਨਿਕੋਲ ਕੇ ਥੱਲੇ ਜਦੇ ਉੱਠਦਾ ਨੂੰ ਜਦੇ ਹਾਂ ਥੋੜਾ ਕਰੀਂ ਹੈ ਕਹਿੰਦਾ ਜੀ ਬੈਠਾ ਉੱਥੇ ਥਾਲੀ ਦੀ ਲੋੜ ਨਹੀਂ ਯਾਦ ਆ ਫਿਰ ਪਸੂ ਜੋ ਹੈ ਹਾਂ ਹਾਥੀ ਕੁੰਡੇ ਬਾਹਰ ਉੱਥੇ ਗਿਆ ਹੀ ਹੈ ਹਾਂ ਪਸੂ ਹੈ ਅਰੇ ਮਾਂ ਨੂੰ ਕੁੰਡਾ ਮਾਰਦਾ ਅਸੀਂ ਰੱਖਣਾ ਹੈ ਧਿਆਨ ਹੀ ਰੱਖ। ਧਿਆਨ ਨੇ ਰੱਖਣਾ। ਧਿਆਨ ਚੋਰ ਨਹੀਂ ਰੱਖੀਦਾ ਉਹ ਕਿਧਰ ਰੱਖੀ। ਰੱਬ ਦਾ ਜੋ ਰਹੇ ਨੀ ਰੱਬ ਕਹਿੰਦਾ ਰੱਬ ਦਾ ਧਿਆਨ ਰੱਖੂ ਲੋੜ ਨਹੀਂ। ਇੰਨਾ ਕਮਜ਼ੋਰ ਨਹੀਂ ਵੀ ਅਸੀਂ ਚਮਚੇ ਰੋਦੇ ਵਿੱਚ ਪਾਣੀ ਪਾਉਣੇ ਨੇ ਮਰ ਜੂਗਾ। ਨਹੀਂ ਵੀ ਉਹ ਦਵਾਈ ਨਹੀਂ ਚੱਕੜ ਦਵਾਈ ਜੜੀ। ਕਮਜ਼ੋਰ ਰ ਬਿਵਾਰ ਤਾਂ ਰੱਖੀਦਾ। ਨਕ ਕਮਜ਼ੋਰ ਰੋ ਰਿਹਾ ਜਦੋਂ ਬਿਮਾਰ ਦਾ ਧਿਆਨ ਰੱਖੀਏ ਤੇ ਹਾਂ ਜੀ ਜਦ ਬਾਹਰ ਕਮਜ਼ੋਰ ਹੈ ਸਭ ਦਾ ਧਿਆਨ ਹੋ ਰੱਖ ਰਿਹਾ ਅਸੀਂ ਉਹਦਾ ਧਿਆਨ ਰੱਖਣ ਅਜੀਬ ਗੱਲ ਅਸੀਂ ਆਪਣੇ ਦਾ ਤੰਤਰ ਵਾਲਾ ਦਾ ਧਿਆਨ ਰੱਖਣਾ ਬਰਾਬਰ ਬੁੱਢੀ ਦੇ ਤੱਤਰ ਨੇ ਵੀ ਸਾਨੂੰ ਕੀ ਹੁਕਮ ਦਿੰਦਾ ਵਾਹ ਕੋ ਕਰ ਜੇ ਅੱਧਰ ਧਿਆਨ ਲੱਗ ਕੇ ਇਸ ਕਰਕੇ ਰੱਖਣਾ ਜੇ ਨਾਲ ਰੱਖੇ ਤਾਂ ਬਰਚ ਫੁਰ ਦੇ ਪਹਿਲਾ ਹੋ ਜਾਂਦਾ ਜੇ ਲੱਕੜੀ ਨੂੰ ਪੱਠੀ ਚ ਪਾਵਾਂਗੇ ਅੱਗ ਫੜ ਲੈਣੀ ਫੜ ਲੈਣੀ ਜੇ ਉਹ ਚੱਕ ਕੇ ਪਾਣੀ ਦੇ ਬਾਗੇ ਰੱਖੋ ਉਹ ਅੱਗ ਤਾਂ ਨਹੀਂ ਫੜੂ। ਬਸ ਅੰਦਰ ਅੱਗ ਨਹੀਂ ਫੜਦੀ ਉਹ ਬਾਹਰ ਉਹ ਅੱਗ ਫੜ ਲੈਣੀ। ਅੰਦਰ ਬਰਬਤੀ ਨੂੰ ਉੱਤੇ ਇਸ ਕਰਕੇ ਰੱਖਣਾ ਵੀ ਅੱਗ ਰੋ ਫੜ ਲੈਣ ਇਹਦੇ ਚ ਅੱਗ ਫੜ ਲਈ ਤੂੰ ਬਰਗਲੇ। ਅੱਗ ਤਾਂ ਬਾਹਲੇ ਹੀ ਤੂੰ ਉਹ ਫੜ ਲੈ। ਦੇਖਣਾ ਜਨਾ ਉਹਦੇ ਵਿੱਚੋਂ ਧੂਮ ਗਈ ਇਹਦੀ ਅੱਛਾ ਵੜ। ਉਹ ਨਿਕਲਦਾ ਲੱਕੜੀ ਖਤਰੂ ਹੁੰਦੀ ਹੈ ਇਛਾਵਾਂ ਪੈਦਾ ਹੁੰਦੀਆਂ ਤੇ ਬੁੱਧੀ ਦਾ ਤੋੜੀਏ ਉਹ ਹੋ ਰਹੀ ਹੈ ਇਛਾਵਾਂ ਪੈਦਾ ਕਰ ਦੇ ਵਿੱਚ ਜਿਹੜੀ ਸ਼ਕਤੀ ਇਸਤੇਮਾਲ ਹੁੰਦੀ ਜਿਆਦਾ ਦਿਮਾਗ ਤੋਂ ਕੰਮ ਨਾ ਦੇ ਲੋੜੀ ਦਿਮਾਗ ਤੋਂ ਸਮਝਣ ਵਾਸਤੇ ਕੰਮ ਲੜੇ ਸੋਚਣ ਵਾਸਤੇ ਨਹੀਂ ਜਾਂ ਸੋਚਣ ਵਾਸਤੇ ਕੰਮ ਲੈਣੇ ਬਹੁਤ ਤੇਜ਼ ਗੜਨਾ ਪੈਂਦਾ ਠੋਟਾ ਸਦ ਸਭੇੜੇ ਬਾਤ ਨਹੀਂ ਸਭੇੜੇ ਬਾਤ ਤੱਕੇ ਦਿਮਾਗ ਇਧਰ ਟਕੇ ਆ ਉਹਨਾਂ ਨੂੰ ਚਾਉਂਦਾ ਹ ਜੇ ਟਿਕਿਆ ਹੋਇਆ ਹੈ ਇਹਦਾ ਸਮਝ ਨਹੀਂ ਹੁੰਦੀ ਕਰ ਤੇਰੀ ਹੋਰੀ ਜਦੋਂ ਕਿ ਲੜੇ ਜਿਹੜੇ ਸਕੇ ਛੋਟੇ ਭਾਂਡੇ ਚ ਕੋਈ ਉੱਤੋਂ ਧਾਰ ਬਣ ਕੇ ਪਾਈਏ ਚੀਜ਼ ਜੇ ਟਿਕਿਆ ਹੋਇਆ ਹੂ ਤਾਂ ਤੇ ਤਾਂ ਵਿੱਚ ਕੋਈ ਬੁੱਤ ਬੁੱਤ ਦੁਆਰਾ ਵਿਸੰਤrai ਹੈ ਜੇ ਮੰਨ ਟਿਕਦਾ ਜੀ ਦਾ ਦੇ ਵਿੱਚ ਕੁਝ ਪੇਦਾ ਵੀ ਹੈ ਟਿੱਕੇ ਬੈਠੇ ਟਿੱਕੇ ਸਮਝੇ ਤਾਂ ਕੋਈ ਸਿਧੁਰਾ ਬੁੱਝ ਪਾਇਆ ਜਿੱਟਕੇ ਨਾਲ ਕੁਛ ਵੀ ਨਹੀਂ ਬਪਾਪਾ ਸੋਪਲੀ ਤੇ ਕਰ ਗੁਣਿਤ ਗੋਬਿੰਦ ਰਾਏ ਤਤਾ ਤਾਸੋ ਤਾਸਿਓ ਪ੍ਰੀਤ ਕਰ ਉਹਦੇ ਰੋੜ ਪ੍ਰੀਤ ਕਰ ਤੇ ਸਿਮਰਨ ਪ੍ਰੀਤ ਕਰ ਜਿਹੜਾ ਗੁਣਾ ਦਾ ਆਧਾਰ ਨੇ ਗੋੜਾ ਦਾ ਖੰਭਦੜਾ ਖਜਾਦ ਦੇ ਵਰ ਕੋਬਿਤ ਰਾਇ ਅਸਲ ਦੇ ਵਿੱਚ ਇਹਦਾ ਕੋਬਿਤ ਰਾਇ ਗੋੜਾ ਦਾ ਰਿਤ ਨਹੀਂ ਗੁਰਬਾਲ ਜੀ ਦਾ ਜਿਹੜਾ ਕੋਬਿਤ ਗੋੜਾ ਰਿਤ ਵੀ ਹਰੋਂ ਜਿਹੜੂ ਇਹ ਕਹਿੰਦੇ ਨੇ ਕੋਬਿਤ ਗੋੜਾ ਦਾ ਖਜਾਦ ਨਹੀਂ ਗੋਬਿੰਦ ਗੁਰਬਾਣੀ ਵਾਲਾ ਆ ਗਿਆ ਹੋ ਗਿਆ ਇਹਦੇ ਗੋਬਿੰਦ ਗੋਲਦੇ ਦਾ ਹਲਪਾ ਵੀ ਮੰਦ ਬਸਤੇ ਤਬਦ ਤੋ ਹਾਰੀ ਜਾਏ ਉਸ ਕੋ ਵੀ ਦਿੱਤੋ ਬਨਵਾਇਸ ਤੇ ਜਿਹੜੇ ਤੁਹਾਡੇ ਗੋਬਦਲੇ ਤਾਂ ਹੀ ਇਹਦੇ ਜਵਾਬ ਦੇਤਾ ਭਾਈ ਇਹ ਤਾਂ ਦੇ ਨਹੀਂ ਸਕਦਾ ਇਹ ਤਾਂ ਤੇਰੀ ਪਾਵਰ ਤੇ ਬਾਹਰ ਕਿਉਂਕਿ ਗੋਲਦੇ ਦਾ ਨਹੀਂ ਸੀ ਹੂੰ ਕਿ ਸ਼੍ਰੀ ਰੂਪ ਨੂੰ ਜਵਾਬ ਦਿੰਦਾ ਮੇਰੇ ਮਾਤੀ ਗਾਦੀ ਹੈ ਕਿ ਦੇ ਸਰਦਾ ਮੇਰੀ ਪਾਵਰ ਤੋਂ ਬਾਹਰ ਹੈ ਕਦੇ ਨੇ ਜਵਾਬ ਦਿੱਤਾ ਚੱਲ ਜਾਈਂ ਉਹ ਮੇਰੀ ਪਾਵਰ ਤੋਂ ਬਾਹਰ ਹੈ ਹੂੰ ਪਾਵਰ ਤੇਰਾ ਬਾਹਰ ਹੈ ਇਹ ਗੋੜੀ ਨਾ ਆਏ ਗੋੜੀ ਤੂੰ ਸਾਹਿਬ ਗੋੜੀ ਰਧਾ ਉਹਦੇ ਚ ਬੈਰ ਉਹ ਰੋੜੀ ਬੈਰ ਉਹ ਰੋੜੀ ਵਿਸ਼ੂਜ ਬੈਰ ਉਹ ਉਹਦੇ ਆਪਣਾ ਪਰਾਇਆ ਰਹੀ ਹੈ ਵਿਸ਼ੂਜ ਆਪਣਾ ਪਰਾਇਆ ਹੈ ਰੌਕਸੀ ਜਾਨ ਉਹ ਤਾਂ ਦਾਕੁਰੀ ਤੂੰ ਦਰੜਕਾ ਦਿੱਤਾ ਉਹ ਤੇਰਾ ਜੋ ਮੀਂਹ ਦਾ ਲੀਡਰ ਹੈ ਬੇਈਮਾਨ ਹੈ ਮੇਂਸਾ ਭਲ ਨਹੀਂ ਦਿੱਤਾ ਜਿਹੜਾ ਲੀਡਰ ਹੈ ਬੇਈਮਾਨ ਹੈ ਉਹ ਤੇਲੇ ਬੰਦ ਕਰ ਕਿਵੇਂ ਹੋ ਜਾਣ ਤੇ ਉਹਨਾਂ ਦਾ ਬੰਦ ਨਹੀਂ ਤੁਸੀਂ ਖੇਲ ਸ਼ਾਸਤਰ ਪੜ ਪਤਾ ਲੱਗਦਾ ਸਾਰਾ ਤਾਂ ਦੇ ਰਿਹਾ ਇੱਟ ਬੇਈਮਾਨੀ ਦੀ ਪਈ ਹੈ ਇਸ करके ਗੁੱਸੇ ਬੋਲਦੇ ਨੇ ਖਲਾਫ ਦੇ ਦੇ ਕਹਿੰਦੇ ਤੇਰਾ ਜਦ ਤੱਕ ਰਹੇਗਾ ਕਰੂਗਾ ਉਹ ਇਸਰਾਲ ਗੁੱਸਾ ਉਹ ਵੀ ਨਹੀਂ ਇਹਨਾਂ ਨੂੰ ਮਾਰਨ ਵਾਸਤੇ ਜਿੱਦਾਂ ਫਰੇਬ ਕਰਨਾ ਹੋਵੇ ਝੂਠ ਬੋਲ ਲੋਗੇ ਜੋ ਵੀ ਕੁਝ ਕਰਨਾ ਹੋਵੇ ਜਾਇਜ਼ ਹੈ ਤਾਂ ਲੈ ਜਾਓ ਪਹਿਲੇ ਸਾਰਾ ਕੂੜਦਾ ਹੈ ਹੂੰ ਇਸ ਸਰਬੰਧਵਾਰਾ ਦੇ ਨਾਲ ਕੈਦੇ ਇਹ ਰੱਖੀ ਹੋਰ ਬੰਦੇ ਨੇ ਹਾਂ ਮੁਗਲਮਲਾਂ ਜਾਨ ਵਿਦਿਆ ਠੱਗੀ ਇਹ ਕੀਤੀ ਐ ਤੁਸੀਂ ਫਿਰ ਇਤਾਜ ਕਿਉਂ ਲਿਖੀ ਆ ਲਈ ਦੂਏ ਜਿਹਨਾਂ ਲਕੀਤੀ ਉਹ ਕਹਿੰਦੇ ਤੁਸੀਂ ਆਪੇਗਾ ਤੇ ਦੱਸੀ ਜਲੂ ਆਓ ਰੱਖੇ ਕਰਦੇ ਸੰਡੇ ਬਜ਼ੁਰਗ ਬੜੇ ਸਿਆਣੇ ਤੇ ਬਈ ਬੋਲਦੀ ਐਵੇਂ ਨੀ ਕਾਲੀ ਉਹਨੇ ਤੇ ਕੰਮ ਕਰਾ ਲੈ ਪੈਸੇ ਦਿੱਤੇ ਬੜੀ ਵਧੀਆ ਹਸਤੀ ਹੈ ਆਪੇ ਕਰਦੇ ਨੇ ਲੈ ਲਿਆ ਪੈਸੇ ਦਿੱਤੇ ਕਹਿ ਕੇ ਵੀ ਭਾਈ ਨਿਕਲਿਆ ਜਿੱਤਾ ਰੋੜ ਗੋਸਦੀ ਤਬੀਖੁਰੀ ਹਾਂ ਤਾਂ ਅਨੇਕ ਪਾਸੇ ਗਈ ਨੇ ਪ੍ਰਾਨਜਾਈ ਪਰਚਨਾਂ ਜਾਈ ਮਚਲੋ ਯਾਰ ਇਹ ਹੋ ਜਾਂਦੀ ਹੈ ਜੰਦੇ ਨੇ ਉਹ ਕਿਤੇ ਵੀ ਕਰਦਾ ਦੋਨੇ ਦੋਨੇ ਦਾ ਇਹ ਜਦੋਂ ਲੋਡ ਆ ਗੋਦ ਨੂੰ ਕਰਦੇ ਨੇ ਇਹਦੇ ਇਹਦੀ ਵਜਰ ਦਾ ਆ ਆਈ ਵਜਰ ਦਾ ਨਾ ਨਾ ਉਹ ਗੁਰੂਆ ਨੇ ਚੇਲਿਆਂ ਨੂੰ ਵੇਪ ਕੋ ਪੜਾਉਣ ਵਾਸਤੇ ਕੀਤਾ ਹੈ ਹੈ ਗੁਰੂ ਦਾ ਮਰਜੀ ਕਰਨ ਆਪ ਚੇਲੇ ਨਾ ਚੇਲਾ ਨਾ ਚੇਲਾ ਨਾ ਵੇ ਲੱਗਦਾ ਹੈ संतई राम जी किले हो कर गुरु गुरुडो करे गुरु जी लाकू है राजपूत उनन बडा है जी हां बेसन छतरीन बडा है बेसन जिंदे बधरे छतरी बधरे सर 10 ने छतरी है वो फस गया भगवान बाद में ऐसी जगह देती है प्राण जाए पर वचन न जाए ਅਗਰ ਵਾਲੀ ਨੇ ਗੱਲ ਨਹੀਂ ਕਰੀ ਮਰਵਾਣੀ ਦਾ ਸਮਤ ਰਿਆਚਰ ਤਲੇ ਜੇ ਇਹਨਾਂ ਦਾ ਤੁਸੀਂ ਦਵਾਰ ਕਰਕੇ ਮਾਰੇ ਜਾਓ ਚੌਕਸ ਕੀ ਕਰਨ ਕਲੇਕ ਕਾਇਦਾ ਰੋਲਾ ਸਰੀਰ ਮਾਣ ਦੇ ਪਿੱਛੇ ਉਮਰਾਨ ਪ੍ਰੋਗਰਾਮ ਬੰਦ ਲਿਆ ਉਹਦੇ ਪ੍ਰਾਣ ਜਾਇ ਪਰਚਨ ਰਜਾਇਆ ਹਾਂ ਉਹ ਉਹ ਉਹ ਉਹ ਕਾਨੂੰਨ ਦੇ ਤਹਿਤ ਲਿਆ ਉਹ ਫਰੂਦ ਦੇ ਤਹਿਤ ਲਿਆ ਔਰਗਨਾਈਜ਼ਰ ਲਿਆ ਰਗੂ ਗੁੱਲ ਰੀਤੀ ਆਪਣਾ ਕਹਿ ਲਾਇਆ ਮੰਗਾ ਸਾਡੇ ਦੇ ਹੱਥ ਚੈਰੀ ਕੁਛ ਉਹ ਲਈ ਆਲਾ ਵੀ ਜਿੱਲਤ ਦਿਵਾਉਂਦਾ ਤੇ ਨਾਲ ਦੋ ਦੋਸਤਾਂ ਨਾਲ ਹੀ ਉਹ ਜਿੱਲਤ ਆ ਥੋੜਾ ਹੀ ਉਸ ਇਹਨਾਂ ਨੂੰ ਜਿੱਲਤ ਰਸਤਾ ਅੰਦਰ ਉਹ ਕਹਿੰਦੇ ਇਹਨੂੰ ਕਾਸੇ ਦਾ ਵੀ ਪਤਾ ਤੁਹਾਨੂੰ ਬਾਣੀ ਦਾ ਪਤਾ ਨਾ ਬਾਣੇ ਦਾ ਪਤਾ ਰੱਥ ਗੱਲ ਦਾ ਪਤਾ ਕੁਝ ਵੀ ਨਹੀਂ ਪਤਾ ਨਾ ਇਹ ਰੋਲੋਂ ਦਾ ਪਤਾ ਬਚਨ ਵਾਲੀ ਗੱਲ ਤਾਂ ਕੋ ਨੇ ਇਸ ਤਰੀਕੇ ਦਾ ਰਗੜਨੇ ਨੇ ਦਾ ਬਹੁਤ ਜੰਮੀ ਉਤ ਹੈ 12 ਦਾ ਉਹ ਗਿਰੋਹੀ ਹੈ ਨਾ ਭਾਈ ਗੁਰਦਾਸ ਦੀ ਕਿਉ ਮਰੇ ਨੇ ਸਾਰੇ ਆ ਜੀ ਐਡਾ ਸਵਾ ਸਵਾ ਸਵਾ ਆਦਮੀ ਆ ਕੇ ਸਾਰੇ ਤੋਂ ਤੇ ਰਾਜ ਕਰਕੇ ਲੁੱਟ ਕੇ ਲੈ ਜਾਂਦੇ ਸੀ ਕੀ ਕਬੂਲਰੀ ਆ ਗਈ ਸੀ ਨਾ ਇੱਕ ਤਾਂ ਕੱਲੇ ਮਾਰਦੇ ਸੀ ਬਰੂਪੜਾ ਤੇ ਆ ਕਰਦੇ ਸੀ ਰਾਜਪੂਤ ਵਾਹ ਵੈਲੀ ਗਾ ਇਹ ਸੋ ਤੋਂ ਵੱਡਾ ਇਹ ਇਹ ਹੰਕਾਰ ਦਾ ਪ੍ਰਤੀਕ ਸੀ ਪੂਰਾ ਵੱਡਾ ਹੋ ਗਿਆ ਨਾ ਰਾਜਪੂਤੋਂ ਰਾਜਪੂਤ ਸਾਲ ਦੇ ਕੋਲ ਉਹਨਾਂ ਸਾਡੇ ਅੱਤਵਾਦੀ ਸੀ ਇਹ ਵੀ ਉਹ ਸੀ ਮੋਰ ਦਾ ਲੜੂਆ ਅਰਦਾਸ ਵਾਲੀ ਵੀਚ ਤੇ ਜਿਹੜੀ ਗੱਲ ਹੈ ਨਾ ਬਚਨ ਬਾਅਦ ਚ ਬਚਨ ਦੇ ਬਚਨ ਵਾਲੇ ਕੰਮ ਹੋ ਜਾਂਦੇ ਨੇ ਬਾਅਦ ਚ ਅਤਿਆ ਦੇ ਵਿੱਚ ਲਿਖੀ ਹੁੰਦੀ ਹੈ ਵੇਦਾ ਗੁਰੂ ਜੀ ਆਹ ਖਾਲੀ ਫੁੱਲਾ ਤੋਂ ਬੜੇ ਤਾਂ ਉਹੀ ਬਾਤ ਚ ਲਿਖੀ ਹੋਈ ਗੱਲ ਆ ਇਹ ਨਾ ਲਿਖੀ ਹੋਈ ਗੱਲ ਗੁਰੂ ਘਰ ਮਿਲੇ ਨਹੀਂ ਹੋਈ ਰਹੀ ਨਾ ਨਾ ਫੁੱਲ ਘਟਣਾ ਅਰਦਾਸ ਆ ਜੀ ਨਹੀਂ ਹੈਗੀ ਵੇਲੇ ਜੋ ਮਰਜ਼ੀ ਹੁੰਦਾ ਤਰਾਸ ਮਿਟਾ ਜਮ ਪੰਥ ਕੀ ਜਾਸ ਬਸੈ ਮਨ ਨਾ ਆਪਾਂ ਜਦੋਂ ਜਪਤ ਕੀ ਜਾਂ ਪੰਤਖੀ ਜਾਂ ਪੰਤਖੀ ਇਤਰਾਸ ਕੀ ਹੈ ਜੇ ਜੇ ਕਲਪਨਾ ਦੇ ਇਛਾ ਤੋਂ ਪੈਦਾ ਹੁੰਦੀ ਹੈ ਨਾ ਬਾਇਆ ਦੀ ਔਰ ਉਹਦੀ ਇਤਰਾਸ ਹੁੰਦੀ ਹੈ ਇਤਰਾਸ ਤਰੇ ਨੂੰ ਕਹਿੰਦੇ ਲੋ ਪਿਆਸ ਹੀ ਹੁੰਦੀ ਹੈ ਇਤਰਾਸ ਅਪਰਾਸ ਵੀ ਉਹਦਾ ਤਰਾ ਵੀ ਹੁੰਦੀ ਪਰ ਵੀ ਹੁੰਦੀ ਹੈ चीज दी प्यास है नहीं मिली चीज त्रास है, है त्रास जो हो जल्दी जो प्यास है पानी है जी वो त्रास हो गई फिर पानी है नी, प्यास कोई चीज दी इच्छा की थी चीज है दी ਮੁਗੋਚਾ ਆ ਗਿਆ ਮੁਗੋਚਾ ਤਰਾਸ ਰੂ ਗਿਆ ਜਪ ਪੰਥ ਕੀ ਤਤਰਸਦਾ ਜਪ ਪੰਥ ਦੀ ਤਰਾਸੇ ਜਪ ਪੰਥ ਪਿਆਸ ਰਹੂਗੀ ਤਰਾਸ ਰਹੂਗੀ ਜੋ ਪੰਥ ਵਿੱਚ ਜਿੱਤ ਵਰਜੀ ਕੁਛ ਬਲਜੇ ਜਪ ਪੰਥ ਵਿੱਚ ਇਤਰਾਸ ਰਹੂਗੀ ਬਦੂ ਘਟਦੀ ਨਹੀਂ ਪਿਆਸ ਘਟੇ ਨਾ ਕੋਟ ਤਾ ਤਰਾਸ ਬੜਤੀ ਜਦੋਂ ਬਲਸ ਚਲੂ ਬਤੇ ਵੀ ਬੜਤੀ ਜੋ ਪਾਪ ਕੀ ਇੰਦਰ ਨੇ ਇਤਰਾਸ ਕਬ ਬੜ ਜੂਗੀ ਪਦਾਰਥ ਨਾਲ ਨਹੀਂ ਜਾਗਾ ਜਦੋਂ ਪਦਾਰਥਾ ਦੀ ਇਤਰਾਸ ਹੈ ਪਦਾਰਥ ਨਾਲ ਫਾਇਦਾ ਨਹੀਂ ਧੰਮਾ ਵਈ ਗੱਲ ਤਰਾਸ ਬਿਚਨ ਨਾਲ ਹੈ ਦਰ ਨਾਲ ਹੈ ਧਾਰਾ ਦੀ ਰਸ਼ੀਦ ਨਾਲ ਨਾਲ ਜਿਆਦਾ ਦੇਗੇ ਹੈ ਚਲ ਢਾਰਗਾ ਜੰਮ ਦੇ ਫੰਸਨ ਨਾਲ ਉਹ ਨਹੀਂ ਹੈ ਪਹਿਲੇ ਨਾ ਤਪ ਤ ਹੋਰੀ ਜਾਏ ਹਲ ਜੇ ਤਪ ਜੇ ਤੁਸੀਂ ਅੱਗ ਚ ਰੱਖੋਗੇ ਲੱਕੜ ਤੂੰ ਹੋ ਬੈਦਾ ਹੋਊਗਾ ਪਹਿਲਾਂ ਤੂੰ ਹੋ ਹੋਊਗਾ ਫਿਰ ਅੱਗ ਭਟੂਗੀ ਲੱਕੜ ਤੇ ਤਪ ਤਪਤ ਵਿੱਚੋਂ ਜਮਨਾ ਜਿਹੜੀ ਕਹਦੇ ਨੇ ਪਰਮੋਹ ਦੇ ਹੁਕਮ ਨੂੰ ਜਮਨਾ ਅਸਲ ਤੇ ਅਸੀਂ ਜਪਦਾ ਮਾਰਗ ਦੀ ਛੁਰਜੇ ਜੇ ਜਪਦਾ ਮਾਰ ਨਹੀਂ ਲਾਉਂਦੇ ਕੱਲਾ ਢਾਕਾ ਢਾਕਾ ਲਾ ਲੈ ਢਾਕਾ ਲੈ ਫਿਰ ਉੱਥੇ ਕੜੀ ਦੇ ਪਹਿਲਾਂ ਤਾਂ ਇੱਕ ਪੰਕਤੀ ਹੋਰਾਂ ਦੀ ਜੰਗ ਕੀ ਇਤਰਾਜ਼ ਕਹੋ ਕਿ ਸਭ ਹੋ ਗਿਆ ਪਤਾ ਹੈ ਬਾਤ ਮੇਰੇ ਦਮ ਰੋਜ਼ ਜਾਂ ਉਹ ਜਾਂ ਬਹੁਤ ਆਉ ਹਰ ਵਕਤ ਜਾਂਦਾ ਪੈਰ ਪੈਰ ਤੇ पैर पैर ते है, पैर पैर ते गिदता वो जो पैदा ही किंदा उठ दिए से होरी तो पैदा ही कुछ नहीं दुदा आए बिगुते जादो जादो पंथ बड़ा बिगुते लब जाया है ओके चिंता दी लो बिगुत्ता की है लोड़ा दी इच्छा रख ली बीडी ਜਾ ਉਹਨੇ ਕੀ ਜਦੋਂ ਪ੍ਰਾਪਤ ਹੋਈ ਜੀ ਦੀ ਲੋੜ ਸੀ ਬੁਗਾ ਚ ਆ ਗਿਆ ਤੇ ਮੈਂ ਲੋੜ ਪਈ ਕਿਤੇ ਭਾਈ है ਕਿਸੇ ਵੀ ਕੀ ਤੋਂ ਲਈਏ ਕਿ ਤੋਂ ਪੂਰੀ ਕਰੀਏ ਭਜੜ ਤੋਂ ਜਿਆਦਾ ਖਰਚ ਕਿਸੇ ਇਤੇ ਆ ਗਿਆ ਕੋਤਿਆ ਆਇਆ ਕੋਤਖਾਲੇ ਉਹ ਚੀਜ਼ ਵਿਚਾਲੇ ਖੜ ਗਿਆ ਹਾਂ ਉਹਦੇ ਪਰੇਸ਼ਾਨੀ ਚਿੰਤਾ ਰਹੇ ਪੈਰ ਪੈਰ ਦੀਓ ਦੋਚੀ ਬਸ ਤੂੰ ਮੁਕੇ ਤੇ ਬਣਦੀਓ ਚਿੰਤਾ ਅੰਦਰ ਲੱਗੀ ਹੋਈ ਹੈ ਰੋਲੇ ਚਿੰਤਾਰੂ ਚਿਤਾ ਸਬੋਰ ਕਹਿੰਦੇ ਨੇ ਉਹ ਡਰ ਦੇ ਵਿਚਾਰ ਚਿੰਤਾ 'ਚ ਕੋਈ ਥੋੜਾ ਜਿਹਾ ਫਰਕ ਹੈ डर हैगा उस वेले जिस वेले कोई डार वाली चीज सबले खड़ी जे डार डरे जे दार तो डार जवे ना कोई खास टाइम पे होवे खास टाइम सामने कोई मिलके ਰਾਜ ਨੂੰ ਭਜਾਦੇ ਆ ਸਕੂਟਰ ਫੂਲ ਵਾਲੇ ਖੜੇ ਨੇ ਪੂਰੇ ਪੁਲਸ ਵਾਲੇ ਖੜੇ ਨੇ ਡਰ ਉਦੋਂ ਹੀ ਕਰੇਟ ਹੋਇਆ ਨਾ ਪਰ ਨਹੀਂ ਆਪਾਂ ਜਾਂਦੇ ਹਾਂ ਵੀ ਪਿਆਰ ਹੋਰ ਚੀਜ਼ ਡਰ ਹੋਰ ਜਦੋਂ ਮੌਕੇ ਦੇ ਮੌਕੇ ਪੈਸਾ ਹੁੰਦਾ ਚਿੰਤਾ ਲਗਾਤਾਰ ਰਹਦੀ ਏ ਕੰਤਾ ਲਗਾਤਾਰ ਆਲੀ ਚੀਜ਼ ਹੈ ਢਾਲ ਲਗਾਤਾਰ ਦੀ ਹੈ ਢਾਲ ਜਿਹਦਾ ਬੰਦਾ ਨਾਰਮਲ ਨਹੀਂ ਹੁੰਦਾ ਡਾਕਟਰ ਮੌਤ ਦਾ ਲਗਾਤਾਰ ਸਭ ਬਹੁਤਿਆਦੇ ਕੀ ਸਭ ਕੁਰਬਾਨੀ ਕਰਦੇ ਤੇ ਤਾਂ ਆਪਣਾ ਕੰਮ ਕਰੇ ਲੋ ਸਿੱਧਾ ਪੈਰ ਲੱਗ ਜੂ ਢਾਲ ਦੀ ਬੰਦਾ ਆਏਗਾ ਹੈ ਢਾਲ ਪਰ ਜਾਂਦਾ ਹੈ ਚਿੱਟਾ ਨਹੀਂ ਬੋਲਦੀ ਨਾਲ ਜਾਂਦਾ ਹੈ ਇਹ ਨਹੀਂ ਕਰਿਆ ਡਾਕਟਰ ਬੰਦੋ ਦਾ ਤਾਂ ਬਸਰੀਆਂ ਦਾ ਲੋਕਾ ਤਾਹੀ ਕਹਿਰ ਮਾਰਣ ਬਣੋ ਬਸਾਰਿਆ ਬਣ ਦਾ ਢਾਰਾ ਤੇ ਜੂਤਾ ਬਸਾਰੇ ਭੁੱਲੇ ਆ ਉਹਦਾ ਪਾਏ ਯਾਦ ਕਰਾਇਆ ਹੂੰ ਹੂੰ ਚਿੰਤਾ ਹੁੰਦੀ ਜਾਂ ਡਰ ਹੁੰਦੀ ਹਾਂ ਡਰ ਤੋਂ ਚਿੰਤਾ ਪੈਦਾ ਹੁੰਦੀ ਹੈ ਇਹ ਕਹਿ ਸਕਦੇ ਤੋ ਜਿੱਦਾਂ ਪੈਦਾ ਹੁੰਦੀ ਐ ਪਰ ਉਹਦਾ ਰੂਪ ਹੋਰ ਜਿਵੇਂ ਤੂੰਰੇ ਤੋਂ ਅੱਗ ਪੈਦਾ ਹੁੰਦੀ ਐ ਤੂੰ ਇਹਨਾਂ ਵੀ ਲੱਕੜੀ ਖਤਮ ਹੋ ਜਾਂਦੀ ਐ ਜਿਵੇਂ ਦੇ ਵਿੱਚ ਫਰਕ ਆ ਇਹ ਜਿੱਦਾਂ ਦੇ ਵਿੱਚ ਫਰਕ ਜਿੱਤਾਂ ਕੁ ਹੋਰ है, ਢਾਰ ਕੁ ਹੋਰ ਚੀਜਾਂ ਜਦ ਤਬ ਲੋਕਤੇ ਆਇਆ ਕਦਰ ਜੇੜ ਢਾਰ ਤੁਰ ਕਬੀਰ ਨੂੰ ਸੜ ਦਤਾ ਸਹਿਜਾ ਮੈਨੂੰ ਢਾਰ ਆਇਆ ਉਹ ਓਡਰ ਸੀ ਦਾ ਤਾਉਰ ਦਿਤ ਫਗਣਾ ਢਾਰ ਦਤਾ ਢਾਰ ਦਤਾ ਢਾਰ ਦੂਆ ਦੰਦਾ ਜਿੰਤਾ ਆਪੇ ਕਰਦਾ ਜਿੱਤਾਂ 8 ਮਿੰਟ ਬੈਗਾਂ ਹੁੰਦੀ ਤੇਸ਼ਨਾ ਦੂਜਾ ਸਾਨੂੰ ਡਰ ਦੁੱਦਾ ਨਹੀਂ ਐ ਕਰ ਦੂਗਾ ਐ ਬਰ ਦੂਦੇ ਦੀ ਦੂਜੇ ਤੋਂ ਜਿਹੜਾ ਡਰ ਮਿਲਦਾ ਉਹ ਦਾ ਦੂਜੇ ਤੋਂ ਕਹਦਾ ਸਭ ਤੋਂ ਡਰ ਗਿਆ ਚਿੰਤਾ ਹੈ ਕੁਝ ਨਹੀਂ ਉਹ ਅਪਗ੍ਰੇਡ ਦੀ ਤਾਰਾ ਕਿਸੇ ਤੋਂ ਟੁੱਟ ਗਈ ਇਸ ਗੱਲ ਦੀ ਇਹਨੂੰ ਮਾਰਨ ਦੀ ਹੈ ਮੈਂ ਕਿਤੇ ਮਰਨਾ ਜਾਵਾਂ ਇਹਦੇ ਨਾਲ ਇਹਦਾ ਫਿਰ ਜਿਹੜੂਏ ਜਿੰਨਾ ਚਿਰ ਮਰਦਾ ਨਹੀਂ ਚਿੰਤਾ ਦੰਦਾ ਹੋਊਗਾ ਜਦੋਂ ਕੀ ਚਿੰਤਾ ਨਹੀਂ ਜਿਵਨ ਕੀ ਰਹੀ ਆਹੋ ਚਿੰਤਾ ਘਟੜ ਘਟਕੇ ਜਿਹੜਾ ਲੰਬੇ ਟਾਈਮ ਤੁਹਾਡੀ ਸਬਤ ਕਰੂਗਾ ਚਿੰਤਾ ਰਹਿਣੀ ਲੱਭੇ ਟਾਈਮ ਜਿਹੜੀ ਸੰਗਤ ਕਰਦੀ ਐ ਨਾ ਬੁੱਧੀ ਦੀ ਉਹ ਚੇਤੇ ਆ ਰੋਚੀਦਾ ਬਟ ਆਰਦਾ ਇੰਨਾ ਕੋਹੜਾ ਹੀ ਆ ਜਦ ਆਇਆ ਜੇ ਫਟ ਗਿਆ ਤੂੰ ਕਰ ਗਿਆ ਤੀ ਉਹ ਤਾਂ ਭੋਕਾ ਵੀ ਚਲਾ ਗਿਆ ਲੱਭਾ ਜਿਹੜੇ ਦਾ ਨਾਲ ਸੰਗਤ ਕਰੇ ਉਹ ਚਿੰਤਾ ਬਣ ਕੇ ਰਹੇ ਉਹ ਡਿਪਰੈਸ਼ਨ ਦਾ ਰੂਪ ਧਾਰਨ ਕਰ ਜਾਂਦਾ ਉਹ ਫਿਰ ਉਹ ਤ੍ਰਾਸ ਹੈ ਕਹਿਣ ਦਾ ਮਤਲਬ ਇਹ ਆਪਾਂ ਡਰ ਕਹਿਣਾ ਹੈ ਨਹੀਂ ਜਿੱਦਾਂ ਖਤ ਮੁਕ ਜਦੇ ਨੇ ਇਹੇ ਚਾਹਵਾ ਦਾ ਖਤਮ ਹੋ ਜਾਂਦਾ ਕਾਰਜ ਦੇ ਛਾਵਾ ਖਤਮ ਹੋ ਰਿਹਾ ਦੀ ਆਪਾਂ ਇਛਾਵਾ ਮ ਆਇਆ ਦੀ ਖਤਮ ਹੋ ਜਾਂਦਾ ਸਭ ਕੁਝ ਖਤਮ ਕਰੀਏ ਜਿਹਦੇ ਨਾਲ ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਜੇ ਉਤਲੇ ਉਹ ਅਰਥ ਕਰ ਲਏ ਬਾਕੀ ਥੱਲੇ ਆਲੇ ਰਹਿ ਗਏ ਤੋਂ ਵਿੱਚ ਆਪਾਂ ਵੰਡ ਲਿਆ ਦਸਤੂਰ ਹੈਲੋ ਯਾਰ ਫੋਟੇ ਆਉਂਦੀ ਹੈ ਉਹ ਅਰਥ ਨੇ ਜਿਹੜੇ ਬੂਲ ਨੇ ਉੱਤੇ ਅਰਥ ਆ ਜਾਂਦੇ ਨੇ ਪਿੱਛੋਂ ਦੇ ਕਿ ਬੂਲ ਛੱਡ ਦੀਏ ਉਦੋਂ ਉਦੋਂ ਅਰਥ ਨਾਲੀ ਥੱਲੇ ਵਾਲੇ ਰਹਿ ਗਏ ਪੂਰੇ ਅਰਥ ਨਹੀਂ ਬਣਦੇ ਆ ਗੱਤ ਪਾਵੇਂ ਮਤ ਹੋਏ ਪ੍ਰਗਾਸ ਇਹ ਆ ਗੱਲਾਂ ਨਹੀਂ ਹੋਈਆਂ ਬੈਨ ਹੀ ਪਾਵੇ ਤਾਉ ਗੱਲਾਂ ਨਹੀਂ ਹੋਣੀ ਜੇ ਸਿਰਫ ਡਰ ਮਿੜਦਾ ਚੇਤਾਵੜੀ ਦੇ ਦੋਏ ਗੱਲਾਂ ਨਹੀਂ ਹੋੜੀ ਜਿੰਨਾ ਚਰ ਬਰਦੇ ਵਿਚ ਜਿਹੜੀ ਛਾਵਾ ਪਾਇਆ ਰੀਆ ਜੇ ਇਹ ਖਤਮ ਨਹੀਂ ਹੁੰਦੀ ਕਿਉਂ ਦਾ ਗਾਤ ਪੈਰ ਪਟਰੇ ਜੇ ਤਰ ਬਲੂ ਦਾ ਬੈਲੀ ਤਾਉ ਬੋਲ ਜੇ ਮੰਦੇ ਵਿਚੋ ਬਾਇਆ ਦੀ ਪੁਖ ਸੁਭਾਵਤ ਹੋਊਗੀ ਬਾਕੀ ਸਾਰੇ ਕੋੜਵਾਂ ਬੁਰਾਲੇ ਵਰਗੇ ਉਹਨਾਂ ਉਤਲਾ ਫਰੋ ਚਿੱਤਾਂ ਉਹ ਉਹ ਜਿੱਦਾਂ ਵੀ ਕੁਛ ਹੈ ਸਾਰੇ ਵਰਗੇ ਇਤਕਬ ਨਹੀਂ ਕਿਹੜੀ ਗੱਲ ਦੀ ਹੈਗੀ ਚਿੱਤਾਂ ਅਸ ਦੇ ਵਿੱਚ ਜਿਹੜੀ ਸਿੱਖ ਉਹ ਪਰਵੇਸ਼ ਤੇ ਛੱਡੀ ਜਾਂਦੀ ਹੈ ਦਾਰਕ ਚਿੱਤਾਂ ਬਾਤ ਕਰ ਉਹ ਜੇ ਤਾਂ ਅਸੀਂ ਹੀ ਇਸ ਕਰਕੇ ਚਿੰਤਾ ਦਾ ਸਮਝ ਨਹੀਂ ਆਦੀ ਟਾਰਗੇਟ ਨਹੀਂ ਲੱਗਿਆ ਉਹ ਵਿਚੇ ਤਗਾਦੀ ਹਿੱਤੇ ਡੈਗਟਾ ਬਿਆਪਨ ਤਾਂ ਅਪਰਦਰ ਵਾਸਤੇ ਅਲੱਗ ਹੈ ਜਿੰਦਗੀ ਇਹ ਇਹ ਤਾਂ ਨਹੀਂ ਹੋਇਆ ਤੇ ਤਬਰੀ ਦੀ ਜੇ ਛੇਤੀ ਬਿੜੇ ਬਿਆਪਨ ਤਾਂ ਉਹ ਬਿੜੀਏ ਦੀ ਰਹੀ ਬਿੜੀਏ ਜਿੱਤਦਾ ਵੀ ਚੀਜ਼ ਤਾਂ ਮਿਲ ਜਾਣੀ ਏ ਛੇਤੀ ਤੋਂ ਨਹੀਂ ਬਣਦੀ ਬਗਾਨਾ ਮਾਨ ਕਾਲਾ ਪੈਂਦਾ ਫੇਰਾ ਕਹਿੰਦੇ ਕਾਲਾ ਪੈਂਦਾ ਉਥੇ ਕਾਲਾ ਪੈਂਦਾ ਵਰ ਜਿੱਤਦਾ ਜਿਹਨੂੰ ਕਹਿੰਦੇ ਬਿਆਪਨ ਤਾਂ ਦਰ ਜਰੂਰ ਆਦਿਕ ਆਵਾਂ ਤੇ ਨਾ ਆਪਣਾ ਕਿਸੇ ਗੱਲ ਨੂੰ ਕਿਨੂੰ ਛੇਤੀ ਮਿਰਚ ਪ੍ਰਸਾਦ ਪਹਿਲਾਂ ਪਿੱਛੇ ਮੈਂ ਜਾਣਾ ਮੇਰਾ ਉਹ ਹੀ ਉਹ ਬਿਆਕੁਲ ਤੈਉ ਗੱਤ ਪਾਵੇਂ ਮਤ ਹੋਏ ਪ੍ਰਗਾਸ ਗੱਤ ਪਾਵੇਂ ਮਤ ਹੋਏ ਪ੍ਰਗਾਸ ਜੇ ਗੱਤ ਪਾਵੇਂ ਅੱਗੇ ਤੁਰੇਗਾ ਤਾਂ ਹੀ ਚੱਲਣਾ ਬਾਲ ਸਤਸਾਰ ਦੀ ਜਿੱਦਤ ਪੁਛਾਏ ਇਹ ਨਾਲ ਨਹੀਂ ਜਾਂਦਾ ਮਹਾਰਾਜ ਦਾ ਰਾਜ ਜਤ ਤੇ ਘਰ ਜਾਂਦਾ ਨਾ ਜੋਗ ਉਹਦਾ ਪੈਸਾ ਕੋਈ ਨਹੀਂ ਜਾਂਦਾ ਇਤੋਂ ਤਨਾ। ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਤਾਣਾ ਨਹੀਂ ਪੰਥ ਉਹ ਹੈ ਜਿਹੜੇ ਪੰਥ ਵਿੱਚ ਚੱਲ ਕੇ ਜਾਂਦੇ ਝਾਲ ਕੇ ਫਸਦੇ ਜਾਓ। ਜਿਹੜੇ ਰਸਤੇ ਜਾਂਦੇ ਆ ਕਿ ਜਪ ਬੈਠਾ ਪੂਰੇ ਕੋਲ ਸਾਰਾ ਮਾਲ ਉਹਦੇ ਉੱਥੇ ਸਾਰਾ ਹੀ ਮਾਲ ਜਗਾ ਚਲੇ ਐਸ ਲੋਕ ਦਾ ਜਿਹੜਾ ਸੌਦਾ ਕਹਿੰਦਾ ਵੀ ਉਹ ਚੀਜ਼ ਲੈ ਜਾ ਜਿਹੜੀ ਲੈ ਕੇ ਆਇਆ ਸੀ ਹੂੰ ਉਹ ਲੈ ਜਾ ਕਿ ਜਿਹੜੀ ਕੰਮ ਦੀ ਤੇਰੇ ਕੰਮ ਦੀ ਚੀਜ਼ ਆਤਮਾ ਨੇ ਕੰਮ ਉਹ ਕਿਸੇ ਕੋ ਜਿਹੜੀ ਸੀ ਜਿਹੜਾ ਤੇਰੇ ਕਬਦ ਤੇ ਲੈ ਜਾ ਦੱਸ ਕੀ ਕਰੂ ਉੱਥੇ ਪਈ ਲੈ ਜੂ ਰੋਟੀ ਲੈ ਜੂ ਰੋਟੀ ਲੈ ਜੂ ਚੋਤੇ ਲਈ ਨਾਲੀ ਪਾਉ ਦੇ ਚੱਕੋ ਖਾਣਾ ਹੱਥ ਦਾ ਹੈ ਦੀ ਲੈ ਕਰ ਲਈ ਦੀ ਲੈ ਲਈ ਉਹ ਚਾਹ ਤੂੰ 10 ਕੀ ਕਰੇ ਨਾਲ ਇਹ ਇਹੜੇ ਤੋਂ ਤਾਂ ਹੋਰ ਕੰਮ ਲੱਗੇ ਰਹੇ ਲੋਕ ਤੇ ਬਿਰੋਨਾਂ ਬਿਰੋਨ ਤੋਂ ਕੁਝ ਵੀ ਤੇਰੇ ਕੰਮ ਨਹੀਂ ਹੈ ਕੰਮ ਦੀ ਚੀਜ਼ ਵੀ ਹੈ ਜੋ ਪੈਦਾ ਹੋ ਰਹੀ ਤੇਰੇ ਕੰਮ ਹੋਣਾ ਨਹੀਂ ਤੇਰੇ ਕੰਮ ਹੋਣਾ ਨਹੀਂ ਜੀ ਸਿਰ ਤੇ ਪਾਪੇ ਕੰਮ ਹੋਣਾ ਹੈ ਹੋਰ ਕਿਸੇ ਦਾ ਕੰਮ ਹੋ ਰਿਹਾ ਹੈ ਤੇਰੇ ਕੰਮ ਹੋਣਾ ਕੰਮ ਹੋਣਾ ਕੀ ਹੈ ਤੇਰੇ ਬਿਰਸਾ ਦਾ ਸਬਤ ਕੇ ਇਹ ਕੰਮ ਕਰੇਗਾ ਇਹ ਕੰਮ ਇਹ ਤੇਰੇ ਨਾਲ ਜਾਣਾ ਸਤ ਸੰਗ ਸਿਮਰਤ ਰੋ ਇਹ ਹੈ ਤੁਹਾਰਾ ਕਾਜ ਸਤ ਸਗ ਸਿਮਰਤ ਰੋ ਸਿਮਰਤ ਰੋ ਸੰਤ ਤੇ ਨਾਲ ਜੁੜ ਕੇ ਅਗੇ ਤੁਰਦੇ ਰਹੋ ਸਿਮਰਨ ਨੂੰ ਜੀ ਅਸੀਂ ਅਗੇ ਤੁਰਦੇ ਜੇ ਤੇ ਆਪਣੇ ਘਰ ਵਾਲ ਨੂੰ ਰਹੋ ਚਾਲਣ ਵਾਲ ਨੂੰ ਰੋਸ਼ਨੀ ਵਾਲ ਨੂੰ ਰਹੋ ਇਹ ਸਿਮਰਨ ਸੰਗਤ ਰਹਿਣਾ ਸੂਰਜ ਵੱਲ ਉੱਧਰ ਰਹੋ ਰੋਸ਼ਨੀ ਵੱਲ ਉੱਧਰ ਰਹੋ ਬਾਤਾਂ ਵਿੱਚ ਪਰਮ ਨੂੰ ਮਟਾਉਂਦੇ ਦੂਰ ਕਰਦੇ ਰਹੋ ਤੇ ਚੱਲਣਾ ਪੈਗਾ ਸੱਜਣਾ ਗਿਆਨ ਹਾਸਲ ਕਰਦੇ ਰਹੋ ਆ ਪਾਤਾ ਕਸ਼ੂਨੋ ਹੋਈ ਹੈ ਜੋ ਤਾਪ ਨਿਵਾਰਾ ਆਪ ਪਾਤਾ ਕਸ਼ੂਨੋ ਹੋਈ ਹੈ कि अपना ताप आप पैदावार रहे अपनी चित्त आप पैदा गाल रहे ताप और चित्त की गल आ सकबी छ तू अंदर ये ताप है, पैदा उधर पर फिर तात्ता क जो तात्ता वो है जेड़ा जरूर इच्छा होता है ਇਹ ਤਾਂ ਦੋ ਲਹਿਰ ਹੈ ਨਾ ਤਾ ਤੈ ਰਾ ਨਹੀਂ ਸਰਦਾ ਅਗਰ ਸੰਗਤ ਤੇ ਤੈਨੂੰ ਸੇਖ ਨਹੀਂ ਲੰਦਾ ਜੇ ਤੂੰ ਆਪਣੇ ਗੋਦੀ ਇੱਛਾ ਮ ਖਤਮ ਹੋ ਜਾਵੇ ਜੇ ਮਾਇਆ ਦੀ ਇੱਛਾ ਮ ਖਤਮ ਹੋ ਜਲ ਤੈਨੂੰ ਇਹ ਤਾਂ ਲੰਦਾ ਇਛਾ ਇਹ ਖਬਰ ਇਹ ਜੇ ਤਾਂ ਤਾਂ ਕਛੂ ਨਾ ਕੋਈ ਹੈ ਕੋਈ ਹੈ ਕੁਛ ਵੀ ਤੈਨੂੰ ਸਿੱਖ ਨਹੀਂ ਲੱਗਦਾ ਹੁਣ ਜੋ ਤਾਪਨ ਵਾਰ ਆਪ ਇਹ ਤਾਂ ਆਪ ਇਹ ਆਗੜੇ ਡਰ ਪੈਦਾ ਕਰ ਰਹੀ ਹੈ ਜਿ ਆਪਣੇ ਮਨ ਦੀ ਇੱਛਾ ਜਰੀ ਬਦੀ ਛੋਟੀ ਜਿੰਨੀ ਛਾਦੀ ਬਦੀ ਹਾਂ ਬਦੀ ਛਾਇਦੀ ਛੋਟੀ ਉਹ ਆਪ ਖਤਮ ਕਰ ਲਵੇ ਤੂ ਦੁਆਰ ਵਿੱਚ ਕਿਸੇ ਕਸੂਦਾ ਪਾਵ ਸਾਗਰ ਦੇ ਸੇਖ ਤਰੁ ਲਖ ਦਾ ਸੇਖ ਜਿਆਦਾ ਹੁੰਦਾ ਜਦ ਇਛਾ ਮੰਦੇ ਤੇਰੀ ਦੀਕ ਤੇ ਤੇ ਰਹੀ ਚਾਹ ਰਾਮ ਹੋਵੇ ਪਹਿਲਾ ਹੋਈ ਜਾਂਦੀ ਪਰਤਪਾਲ ਲੈ ਨਾਲੇ ਕਿ ਹਮੇ ਆਪੇ ਮਾਈ ਬਾਪ ਭਾਈ ਬਾਪ ਜੀ ਦਾ ਪਰਤਪਾਲ ਕਰਦਾ ਹੁਵੇ ਆਪ ਚਿੰਤਾ ਬਾਪ ਹੋਵੇ ਚਿੰਤਾ ਦੀ ਕੀ ਲੋੜ ਕਰਨ ਆਪ ਤਾਂ ਆ ਬੁਣਵਾਣਾ ਮਤਲਬ ਹੈ ਵੀ ਇਸ ਗੱਲ ਨੂੰ ਸਮਝ ਕੇ ਆਪਣੀ ਚਿੰਤਾ ਕਰਨੀ ਛੱਡ ਦਿਓ ਇਹੀ ਤਾਂ ਆਪਣਵਾਰਨਾ ਆਪਨਵਾਰੇ ਆਪ ਆਪ ਆਵੇ ਛੱਡ ਲਈ ਜੋਗੀ ਸਤਿਪਾਲਿਆ ਨਾਲ ਕਿ ਹਮੇ ਮਾਈ ਬਾਪ ਇਸ ਗੱਲ ਤੇ ਵਿਸ਼ਵਾਸ ਕਰਕੇ ਛੱਡੀ ਜਾਂਦੇ ਬਾਪ ਕਰਦੇ ਨੇ ਬੱਚੇ ਚਿੰਤਾ ਕਰਦੇ ਨੇ ਕੋਈ ਕਿਉਂ ਕਰਦਾ ਹੈ ਫਸਾ ਦਿੱ ਭਾਈ ਬਾਹ ਬਾਹ ਬਣੇ ਰਿਹਾ ਹੈ ਇਹ ਸਮਝ ਆ ਰਿਹਾ ਹੈ ਸਮਝ ਆ ਰਿਹਾ ਸਮਝ ਨਹੀਂ ਆ ਸਮਝ ਨਹੀਂ ਆ ਰਿਹਾ ਸਮਝ ਆਇਆ ਰਿਹਾ ਹੈ ਬਸ ਜਿੱਦੜ ਹੁਕਮ ਸਮਝ ਕੇ ਆਏ ਵੀ ਹੈ ਥੋੜਾ ਥੋੜਾ ਕਰਕੇ ਪੁਰਾ ਥੋੜਾ ਕਰਕੇ ਪ੍ਰਤਿਆਵਾਂ ਲਊਗਾ ਬਈ ਹਾਂ ਤੇ ਹੈ ਤਾਂ ਠੀਕ ਕਿਸੇ ਚੀਜ਼ ਨੂੰ ਪਰਖੂਗਾ ਤਾਂ ਹੀ ਠੀਕ ਹੋਰ ਗੱਲ ਰੱਖਦੇ ਜੇ ਤੇ ਪਰਖ ਲਈ ਦੇ ਤਾਂ ਤੈਨੂੰ ਕੀ ਦੱਸੂਗਾ ਠੀਕ ਹੈ ਇਹ ਗੱਲ ਤੇ ਦੇਖੇਗਾ ਨਹੀਂ ਪਤਾ ਲੱਗਿਆ ਐਵੇਂ ਹਰ ਗੱਲ ਸੁਣੇ ਤੇ ਹੀ ਪਤਾ ਲੱਗਦਾ ਸੁਣਨਾ ਤੇ ਚਲੋ ਪਤਾ ਤਾਂ ਲੱਗਿਆ ਨਾ ਨਹੀਂ ਬਰਦਾਵਾਦ ਪਰਖੇ ਦੇ ਬਰਦਾਵਾਦ ਪਰਖਦੇ ਅਸੀਂ ਹੈ ਦੀ ਇਸ ਕਰਕੇ ਅਸੀਂ ਪਰਖ ਲਿਆ ਉਹ ਉਹ ਜਿਹੜੀ ਉਹ ਪ੍ਰਲਾਦ ਦੀ ਗੱਲ ਸੁਣਉਂਦੇ ਸੀ ਨਾ ਬਿੱਲੀ ਦੇ ਬੱਚਿਆਂ ਵਾਲੀ ਉਹ ਪੱਖੇ ਉੱਥੇ ਪਰਖ ਲੀ ਵੀ ਉਹ ਸਮਝ ਪਰਖੀ ਗਈ ਬਿਲੀ ਦੇ ਬੱਚੇ ਸੇਗ ਲੱਗਿਆ ਜੀ ਅੜ ਨਾਲੇ ਘੜਿਆ ਬੱਚੇ ਚਉਦੇ ਨਿਕਲੇ ਆਏ ਪਰਖ ਪਰਖੀ ਗਈ ਬੱਚੇ ਦੇ ਖੜ ਗਿਆ ਪਿਰਾ ਪਰਖੇ ਤੇ ਬਰ ਆ ਉਹ ਸਿੱਧਾ ਨੂੰ ਇੱਕ ਜਗ੍ਹਾ ਗਈਆ ਪਰਖੇ ਗੁਰ ਕੀ ਬਾਤ ਖੜੀ ਨਾ ਕਰੇ ਬਹੁਤ ਹੀ ਸਟੈਸ ਪਰਖਦੇ ਦਿੱਤੀ ਬਿਚਾਰ ਅਰਥ ਦਾ ਦਿੱਤੀ ਹੋਈ ਵਿਚਾਰ ਦਾ ਮਤਲਬ ਵੀ ਪਰਖਣੀ ਹੈ ਪਰਖਣਾ ਹੀ ਹੈ ਵਿਚਾਰ ਦਾ ਮਤਲਬ ਪਰਖਣਾ ਹੈ ਪਰਖੇ ਤੇ ਮੇਰਾ ਕੀ ਵਿਚਾਰ ਉਹ ਪਰਖੇ ਵਿਚਾਰ ਅਸਲ ਵਿੱਚ ਪਰਖ ਕਰਦੀ ਕਿਹਦੀ ਵਿਚਾਰ ਪਰਖ ਵਿਚਾਰ ਵਿਚਾਰ ਨੇ ਪਰਖ ਵੱਡ ਜਾਣਾ ਉਹ ਸਾਨੂੰ ਜੀਵਨ ਵੱਡਦੇ ਸੀ ਪਰਖ ਕੇ ਵੱਣਦੇ ਸੀ ਜੀਵਨ ਵੱਡ ਨਹੀਂ ਉਹ ਆਇਆ ਕਿੰਨਾ ਗਰਵਾਣੀ ਲੈ ਕੇ ਤਾਂ ਗੱਲ ਬਣ ਗਈ ਤੂੰ ਕਹਿੰਦਾ ਮੇਰੀ ਘਾਤੀ ਹੋਈ ਜੀ ਬਜ਼ੁਰਗ ਆਵਿਆ ਬਹਿ ਕੇ ਬੱਲਣ ਜਿਹੜੀ ਗੱਲ ਦਵਾਈ ਇਹਨੂੰ ਭਟਾ ਗਈ ਇਹਨੂੰ ਰਾਮ ਆ ਗਿਆ ਸੁਰੀਆ ਨਰਾਵ ਨਾਵੇਂ ਬਾਰੇ ਕਹੋਗਾ ਵੀਰਾ ਮੈਂ ਇਹ ਨਹੀਂ ਠੀਕ ਹੈ ਮੈਂ ਪਰ ਤੁਸੀਂ ਕੋਈ ਗਲਤੀ ਕੀਤੀ ਹੋਗੀ ਤੁਸੀਂ ਕੋਈ ਕبھی ਕੀਤੀ ਹੋ ਗਲਤੀ ਕੀਤੀ ਹੋਗੀ ਇਹਦੀ ਹੈ ਕੋਈ ਕੁਝ ਨਹੀਂ ਬਿਨਾ ਪਰਖੇ ਤੇ ਮੈਂ ਬੋਲਦਾ ਅਸੀਂ ਪਰਖਦੇ ਹਾਂ ਲੈ ਲੈ ਰੱਖੀ ਜਦੇ ਸੋੜ ਸੋੜ ਰੱਖੀ ਜਦੇ ਪਰਖਦੇ ਹਾਂ ਹਰ ਚੀਜ਼ ਬੜਦੀ ਹੈ ਫਿਰ ਉਹਦੀ ਪਰਖ ਕਿ ਵਾ ਯਾਰ ਇਹ ਵੀ ਪਰਖ ਹੋਤੀ ਹੈ ਤੁਹਾਨੂੰ ਪੱਖੀਆਂ ਜਾਂ ਮਾਰਕੀਟਿੰਗ ਹੁੰਦੀ ਹੈ ਆਹੋ ਆਇਆ ਤੇ ਪੱਖੀ ਜਾਂਦੀ ਪਰਖ ਦੇ ਪਰਖਦੇ ਆਹ ਦੀ ਵੀ ਪਰ ਟ੍ਰੈਕਸ਼ਨ ਹੁੰਦਾ ਉਹ ਪਰਖੰਦਾ ਆਰਬ ਦੇ ਖੇਤਰ ਵਿੱਚ ਅਸਲ ਚੋਰਾ ਨੇ ਪਰਖ ਵੱਧ ਕੀਤੀ ਜਿੰਦਾ ਦੇ ਨੇ ਪਰਖ ਵੱਧ ਕੀਤੀ ਨਕਲੀ ਹੈ ਆਲੇ ਨੇ ਅਸਲੀ ਵਾਲੇ ਕਹਿੰਦੇ ਨੇ ਪਰਖ ਕਰੋ ਪਰਖ ਅਸਲੀ ਪਰਖ ਦੀ ਤਾਂ ਗੱਲ ਬਹੁਤੀ ਚਲਦੀ ਵੀ ਹੈ ਜੀ ਜੋ ਆਪਣੇ ਵੀ ਸ਼ਰਧਾ ਤਾਂ ਹੀ ਸ਼ਰਧਾ ਸੱਚੇ ਸ਼ਰਦਾ ਪਰਖ ਸ਼ਰਦਾ ਪਰਖ ਵੱਧ ਕਰਦੀ ਹੈ ਪਰ ਘੜੀ ਰਹੀ ਹੈ ਇਹ ਗੱਲ ਇਹਦਾ ਉਹਨੇ ਤੂੰ ਗ੍ਰਹਿਤਾਂ ਲੈ ਲੈ ਆਂਦੇ ਹਾਂ ਲੈ ਲੈ ਪਰਖ ਜੈਸਾ ਸਤੂ ਸੁਣੀ ਸੁਣਿਆ ਸੀ ਬਾਕੀ ਪਰਖੇ ਦੇ ਪਰਖ ਪਰਖ ਦੇ ਬਲੋ ਤੁਸੀਂ ਅਪਰਖਾ ਨਹੀਂ ਅੰਦਰ ਦਰਦ ਜੇ ਪਰਖ ਨੂੰ ਦਾ ਭਰੋਸਾ ਵੱਜ ਜਾਣਾ ਜਿਉਂ-ਜਿਉਂ ਪਰਖੋਗੇ ਤੇ ਉਦੋਂ ਭਰੋਸਾ ਵੱਜ ਜਾਣਾ ਪਰਖੇ ਤੇ ਬਿਨਾ ਭਰੋਸਾ ਨਹੀਂ ਵੱਜਦਾ ਉਹ ਬੰਦੇ ਸ਼ੰਤਾਰਾ ਕੋਲੋਂ ਹੋਣ ਉਹ ਫਿਰ ਉਹਨੂੰ ਕਹਿੰਦਾ ਉਲਪਰ ਦਾ ਸਾਰੀ ਖੋਟ ਕੇ ਤਾਂ ਕੇ ਬਹੁਤ ਥਕ ਕਰ ਤੇ ਤ੍ਰਿਪਤ ਨਾ ਤ੍ਰishna ਲਾਥ ਤ੍ਰਿਪਤ ਨ ਤ੍ਰਿਸ਼ਨਾ ਨਾ ਤ ਨਾ ਇਹ ਦੋ ਜਗਾਂ ਥਕੇ ਬਹੁਤ ਕਾਲ ਤੇ ਬੜੇ ਭਜਨ ਅਠ ਕਰਕੇ ਥਕਲੇ ਬਹੁਤ ਜੀ ਨਾਲ ਤ੍ਰਿਸ਼ਨਾ ਦਾ ਕਹੀ ਹੈ ਦੋ ਪੂਰੀ ਹੋਈ ਦਲਾਤੀ ਆ ਤ੍ਰਿਸ਼ਨਾ ਉੱਥੇ ਉੱਥੇ ਤ੍ਰਿਸ਼ਨਾ ਖਾਤੇ ਹੋਈ ਹੈ ਸ਼ਾਂਤ ਤੇ ਰਹਿੰਦਾ ਲੱਤਿਆਂ ਦੀ ਹੁੰਦਾ ਸ਼ਾਂਤ ਹੋ ਜਾਂਦਾ ਜਿਹੜਾ ਬਤਨ ਵਸੂ ਦੀ 14 ਸੀ ਆ ਬੁਢੀ ਯਾਦ ਜਿਲ ਕਹਦੇ ਤ੍ਰਿਸ਼ਨਾ ਲੱਥ ਗਈ ਦੇਸ਼ ਨਾਤਾ ਕਰੀਏ ਜੇ ਤ੍ਰਿਸ਼ਨਾ ਨੂੰ ਕਰਦੇ ਰਹੂਗਾ ਫੇਰ ਹੀ ਕ੍ਰਿਸ਼ਨ ਲਾਥੇ ਆਵੇਗਾ ਵੀ ਸਾਡੇ ਬਾਬੇ ਦੇ ਕਾਲ ਤੇ ਤੇ ਮਨ ਲਖਿਸ਼ਨਾ ਲਾਥਾ ਦਾ ਤ੍ਰਿਪਤ ਹੋਏ ਸਾਰੀਆਂ ਤੇਰੇ ਸ਼੍ਰਾਮਾਂ ਸਾਡੇ ਕੋਲ ਸੌਦਾ ਚ 14 ਤੇ ਬਿਲਜੇ ਨਾ ਤਰਪ ਤੋਏ ਮਾਨ ਨਾ ਤਰਛ ਲੋ ਗਈ ਸੱਚ ਸੱਚ ਸਾਖਤ ਹੋਈ ਇਹ ਆ ਤੇ ਯਾਰ ਦੇਖੋ ਇਹ ਪਰਖ ਹੋ ਗਿਆ ਹੁ ਪਰਖ ਹੀ ਹੋਈ ਗੱਲ ਆ ਇਹ ਗੁਰੂ ਪਰਖੀ ਹੈ ਜੀ ਹਾਂ ਕੇ ਗਈ ਹੋਈ ਗੱਲ ਆ ਇਹ ਚਾਹੇ ਪੋਜ਼ਿਟਿਵ ਨੇ ਚਾਹੇ ਨੇ ਸਾਰੀਆਂ ਪਰਖ ਕੇ ਗਈ ਹੋਈ ਹੁੰਦਾ ਤੁਹੇ ਭੱਜਦੇ ਹੋਏ ਪਰ ਡੈਗੜੇ ਦਾ ਆਪਾਂ ਨੂੰ ਪਤਾ ਵੀ ਏ ਠੀਕ ਹੈ ਤੇ ਨਾ ਜਾਂਦੀ ਪੋਜ਼ਿਟਿਵਲੀ ਅਸੀਂ ਪਰਖੀਏ ਕਿਉਂ ਰਾਤ ਹੀ ਰਤ ਰਹੇ ਤੁਰੇ ਹੋਏ ਸਾਨੂੰ ਪਤਾ ਹੀ ਹੈ ਉਹ ਤ੍ਰਿਸ਼ਨਾ ਕਿੰਦੀ ਪੂਰੀ ਹੁੰਦੀ ਕਿੰਦੀ ਕਿਦੂ ਚੱਲਦੀ ਹੈ ਦਾਦਾ ਤੈਸ ਨਾਲ ਆ ਤ੍ਰਿਪਤ ਹੁੰਦਾ ਹੁੰਦਾ ਨਾ ਤ੍ਰਿਸ਼ਨਾ ਦੀ ਦੂਰ ਹੁੰਦੀ ਹੈ ਲੱਗ ਇਹ ਕਦੇ ਇਤਾਂ ਦੇ ਇਹਦਾ ਆਪ ਵੀ ਲੋ ਕਰਨਾ ਸਕਦੇ ਮੰਦੇ ਦੀ ਹੁੰਦੀ ਹੈ ਨਾ ਪੂਰੀ ਇਹ ਤਾਂ ਸਾਰੇ ਗੱਲ ਬੋਲਦੇ ਨੇ ਇਹ ਵੀ ਵੈਸੇ ਪਰਖੀ ਹੋਈ ਗੱਲ ਹੈ ਤੇਪਤ ਨਾਨਕ ਮਾਇਆ ਦਾ ਸਾਥ ਭਾਵੇ ਸਾਥ ਪਹਿਲਾਂ ਬਹੁਤ ਸਾਰਾ ਤਨ ਇਕੱਠਾ ਕਰ ਲਿਆ ਤਾਂ ਤ੍ਰਿਸ਼ਨਾ ਫੇਰ ਵੀ ਸੀ ਮਾਰ ਗਏ ਨੇ ਖਰਚ ਲਿਆ ਖਾ ਲਿਆ ਫਿਰ ਵੀ ਬਾਤੂ ਬਹੁਤ ਪਰ ਤ੍ਰਿਸ਼ਨਾ ਫਿਰ ਵੀ ਸੀ ਤੇ ਇਸ ਰਾਤੀ ਸੀ ਲੱਤੀ ਨਿਕਾ ਦਾ ਕਾਰਜ ਸਾਰ ਜੋਗਾ ਨਹੀਂ ਬੜਿਆ ਖਜ਼ਾਨੇ ਭਰੇ ਪੈਸੇ ਤੇ ਉਹਨਾਂ ਨੂੰ ਰਾਜੇ ਲੈ ਲਿਆ ਹੁਣ ਰਾਜੇ ਖਜ਼ਾਨੇ ਭਰੇ ਪੈਸੇ ਤੇ ਉਹਨਾਂ ਦੀ ਮੈਂ ਤ੍ਰਿਸ਼ਨਾ ਤਾਂ ਨਹੀਂ ਗਈ इस कर के री जानी साच्य <laughs> साच्य सगले मुए साकतम मुए नाल कमाया ना साथ और पाया फिर साथ वली लेके तशिरो फेर उठे नी उठे जी जानदे ओए ओडी त्रिशना सी साच्य साच्य साथ जे नहीं लेके आया है माया, माया। देखो जे नहीं लेके आया वे इथों ਇਹ ਤੋਂ ਜਾਂਦਾ ਤ੍ਰਿਸ਼ਨਾ ਲੈ ਗਿਆ ਲੈ ਗਿਆ ਤ੍ਰਿਸ਼ਨਾ ਲੈ ਕੇ ਆ ਸੀ ਨਾਮ ਦੀ ਭੋਖ ਲੈ ਆ ਲੈ ਕੇ ਜਾ ਰਿਹਾ ਤ੍ਰਿਸ਼ਨਾ ਜਦੋਂ ਹੈ ਟਾਟਾ ਵਾ ਗਿਆ ਉਹ ਕਾਟਾ ਕਿਵੇਂ ਪਾ ਗਿਆ ਤੇਰੇ ਕਹੇ ਬੂੜੋ ਪਾ ਗਿਆ ਲਾਹੇ ਕਾਰਨ ਆਇਆ ਪ੍ਰਾਣੀ ਤੇ ਨਾਲ ਦੇ ਰੋ ਤੇ ਬਾਣੀ ਬਾ ਨਾਲ ਦੇ ਦੀ ਬਾਣੀ ਦੀ ਹੈ ਚੱਲਿਆ ਹੋ ਲੋ ਘਾਟਾ ਪਾਇ ਵਕਤੋਂ ਪੁੱਠੀ ਨਾਨਕਾ ਪਬੜਕੂ ਸੇ ਖਾਏ ਦਰਗਦੀਏ ਫਕੀਰ ਦਾ ਵੀ ਕੱਲ ਕੋਈ ਇਹੀ ਝਗੜਾ ਕਰ ਲਵੇ ਵੀ ਦਰਗਦੀ ਬਣ ਕੇ ਵੀ ਇਹ ਤਾਂ ਰਹਿ ਗਈ ਹੋੜੀ ਐ ਅੱਜੋ ਪਾਸੇ ਰਹੀ ਬੜੀ ਗੱਲ ਹੋ ਹੀ ਗਈ ਗੱਲ ਕਿੰਦੀ ਨਾਲ ਮਿਲਦੀ ਕਹੀ ਹੈ ਇਹ ਬਬਲੂ ਪੂਸਾ ਦਾ ਫੇਰ ਕਿਹਦਾ ਨਹੀਂ ਆਇਆ ਬਬਲੂ ਆਇਆ ਨਹੀਂ ਇਹ ਤਾਂ ਪਤਾ ਲੱਗਾ ਬਾਤ ਹੀ ਆਹ ਐ ਰਹੇ ਨੇ ਕੁੜੇ ਦਿਨ ਪਹਿਲਾਂ ਸਪੋਕ ਪੰਜ ਬਾੜੀ ਆਈ ਉਹਦੇ ਚਾਇ ਆਇਆ ਉਹ ਉਹ ਆਪਣੇ ਥੋੜਾ ਸਪੈਲਿੰਗ ਦਾ ਫਰਕ ਆ ਬੋਲਣ ਜਾਂ ਥੋੜਾ ਜਿਹਾ ਉਹ ਹੈ ਇਹ ਅੱਛਾ ਬੱਲ ਕੋਸੇ ਖਾਈ ਨਲਕ ਦੀ ਵਾਲੀ ਕਿਹਾ ਪੌਲੀ ਥੱਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਵ ਅਨੇਕ ਕਵਾਂ ਚ ਥੱਥਾ ਥੱਥਾ ਥਿਰ ਕੋ ਨਹੀਂ ਥਿਰ ਕੋ ਰੇ ਕਾਇ ਪਸਾਰੋ ਪਾਵ ਇੱਥੇ ਤਾਂ ਥਿਰ ਕੋਈ ਨਹੀਂ ਭਾਈ ਸਾਬ ਨੇ ਮੰਨੇ ਤਰੋ ਕਾਦੇ ਪੈਰ ਫਿਰ ਕਾਦੇ ਫਲਾਈ ਜਾਂਦੇ ਜਦ ਜਾਦਾ ਪਾਉ ਮਰ ਅਰਦਾ ਕੀ ਕਰਾ ਤੇ ਤਾਂ ਤੇ ਪਾਲਣ ਵਾਲੇ ਬੱਚੇ ਕਿਸੇ ਨਾਲ ਤਾਕਤ ਨਾਲ ਹੋਵੇ ਤਾਕਤ ਨਾਲ ਹੋ ਲੈਣ ਜਾਂ ਫਰੇਵ ਨਾਲ ਲੈਣ ਇਸੇ ਤੋ ਉਹ ਵੀ ਤਾਕਤ ਹੈ ਬੁੱਤਵਾਲ ਹੁੰਦਾ ਹੈ ਮਨ ਦਾ ਉਸ ਬਲੇ ਬਾਇ ਇੱਕ ਕੀ ਇਹਦਾ ਸਾਰਾ ਅਹ ਟਾਰਗੇਟ ਕੀ ਹੈ ਬਾਇ ਬਾਇ ਕਠੀ ਕਰਦਾ ਬਾਬ ਉਹਨਾਂ ਨੇ ਕੀਤਾ ਇਹਨਾਂ ਸਾਥ ਨੇ ਜਿਹੜੇ ਛੱਡ ਕੇ ਚਲੇ ਗਏ ਫਿਰ ਸਾਰਾ ਉਹਨਾਂ ਦੇ ਤਾਲੂ ਬੁੱਦਲਾ ਪੜਛੜ ਕਰਕੇ ਬਾਇ ਕਠੀ ਕਰਨ ਦੂਗਾ ਬਾਨਾ ਸਿਰ ਚਾਈ ਕਰ ਕਠਾ ਕਰਤੇ ਦਾ ਜਿਹੜੇ ਕੇ ਖਜਾਨੇ ਫਿਰ ਇੱਥੇ ਛੱਡ ਗਏ। ਤਰ ਵੱਢੀ ਲੈ ਕੇ। ਮੁਰਾਦੀ ਅਕਲ ਨੂੰ ਡਿਸਕਸ ਕੀਤਾ ਵੀ ਕਿ ਡੇਟਸ ਅਸਰੇ ਜੀਓ। ਦੁਨੀਆਂ ਨੂੰ ਸਾਰੇ ਵੱਢੀ ਸੀ। ਤੇ ਹੁਣ ਵੀ ਸਾਰੇ ਵੱਢੀ ਹੈ। ਇਹਨੇ ਲੋਕ ਪੈਸੇ ਵਾਲੇ ਨੇ ਪੈਸਾ ਕਬੂਲ ਰੱਖੇ ਵੀ ਬਾਹਰ ਕਰਦੇ ਉਹਨਾਂ ਦੀ ਜਿੱਤ ਹੈ ਇੱਥੇ। ਫਾਰੇ ਬਾਣੀ ਕਹਿੰਦੀ ਹੈ ਉਹ ਸਾਰੇ ਦੀ। ਤੋ ਜੀਵ ਲੋਪਰ ਨਹੀਂ। ਗਾਰੇ ਉਹ ਤਾਂ ਸਜਿਆ ਜੀ ਦਾ। ਬੁਰ ਗੁਲਾਬ ਦੀ। ਲੈ ਕੇ ਕੁਝ ਹੋ ਰਾਇਆ ਸੀ ਲੈ ਗਿਆ ਕੁਝ ਹੋ। ਲੋਭ ਦੀ ਭੁੱਖ ਲੈ ਕੇ ਆਇਆ ਸੀ ਉਹ ਤਾਂ ਪੂਰੀ ਕੀਤੀ ਤੇ ਇਸ ਲਈ ਤਾਂ ਲੱਗੀ ਸੀ ਜਨਮ ਤੇ ਨੂੰ ਜਿਵੇਂ ਛੁਟਕੀ ਲੱਗੀ ਤ੍ਰਿਸ਼ਨਾ ਜੀਵ ਤ੍ਰਿਸ਼ਨਾ ਦੀ ਪੂਰਤੀ ਕਰਨ ਲੱਗਿਆ ਸਾਰੀ ਜ਼ਿੰਦਗੀ ਤ੍ਰਿਸ਼ਨਾ ਦੀ ਪੂਰਤੀ ਕਰਦਾਰਿਆ ਤ੍ਰਿਸ਼ਨਾ ਵਧਦੀ ਹੋ बहुत बड़े-बड़े महल बाड़ियां बनाले जायदाद ना बनाली जांदा होया की लेके गया फिर भी तृष्णा नाल ही चली गई वो सब कुछ अच्छी रहते नाम दी भूख लेके आया थी ले तृष्णा लेके चला गया काटाबागे शांत आया सी सडदा चला मेरा शांत आया और और ज्यादा शांत होलाया सी शांत तो पहले भी थी खूब ज्यादा चतुत्तो ना ऐसी पापड़ मचने लगे कष्ट तो पहले ही हो गए पाए जन्म जुए हार के चले तू तो तृष्णा ले गया ना होबे ले गया ना उड़ा के पाठ पड़े और भेद बिचारियो ਇਹ ਤਾਂ ਕੋਈ ਤਾਂ ਦੇਵਲਪੇ ਜਾਂ ਕੋਈ ਬਸਾ ਦੇ ਪੰਚ ਜਿਹੜਾ ਸਤਿਗੁਰੂ ਨੇ ਛੁਡਕਿਆ ਅਧਿਕ ਉਹ ਬੁੱਧ ਜੇ ਧਾਰਮਿਕ ਵੀ ਹੋਇਆ ਤਾਂ ਵੀ ਲੈ ਗਏ ਉਹ ਲੈ ਗਿਆ ਤਾਂ ਹੰਕਾਰ ਆਮ ਆਦਮੀ ਜਿਹੜਾ ਹੈਗਾ ਨਹੀਂ ਤਾਰੂਖ ਸਖਤ ਹੈ ਉਹ ਤ੍ਰਿਸ਼ਨਾ ਲੈ ਗਿਆ ਜਿਹੜਾ ਸੰਤ ਹੈ ਉਹ ਤੁਕਾਰ ਲੈ ਦੋਈ ਬੰਦ ਬੰਦ ਇਕ ਧਾਰਮਿਕ ਆ ਉਹ ਹੰਗਾਲ ਦੀ ਧਾਰਮਿਕ ਗੁਰੂ ਹੈ ਧਾਰਮਿਕ ਰਾਜਾ ਉਹਦੇ ਵੀ ਟੈਕਸੀ ਤੇ ਲੋਕ ਆਪੜੇ ਕਿਹੜਾ ਮਤਰਾਉਂਦੇ ਐクセਓ ਟੈਕਸੀ ਇਹ ਕਿਸੇ ਤਰ੍ਹਾਂ ਉਹ ਵੀ ਟੈਕਸੀ ਨੁਕਸਾਨ ਉਠਾ ਕੇ ਜਾ ਰਹੇ ਉਹ ਉਹਦੇ ਵਧਾ ਕੇ ਜਾ ਰਹੇ ਉਹ ਤ੍ਰਿਸ਼ ਵਧਾ ਕੇ ਤੇ ਦੋਹਰੇ ਲੋਕ ਆਦਮੀ ਜੁੜੇ ਹੋਏ ਨੇ ਦੋਹਰੇ ਲੋਕ ਪਬਲਿਕ ਜੁੜੀ ਹੋਈ ਐ ਸਿਆਸਤਦਾਨ ਉਧਰ ਜੁੜੇ ਹੋਏ ਨੇ ਜਿਹੜੇ ਆ ਵੀ ਦੋ ਵਿਚਾਰੇ ਲੋਕ ਨੇ ਸੱਤਾ ਕੋਲ ਜਾਂਦੇ ਜੇ ਤਾਂ ਉਹਨਾਂ ਦੇ ਮਹੂਰ ਪੂਰੀਆਂ ਕਰਦੇ ਨੇ ਫਿਰ ਤਾਂ ਤ੍ਰਿਸ਼ਨਾ ਵਧਾ ਰਹੇ ਨੇ ਸੱਤ ਇਹ ਲੋਕ ਇਹਨਾਂ ਵਰਗੇ ਹੀ ਨੇ ਜਿਹੜੇ ਸਿਆਸਤਦਾਨ ਨੇ ਇਹਨਾਂ ਵੱਖਰੇ ਨਹੀਂ ਹਲੋ ਹੇਗੇ ਇਹਦੇ ਸਿਰ ਸਰਦਾ ਕੋਲ ਤਾਂ ਜਾਂਦੇ ਨੇ ਗੁਰਦੁਆਰੇ ਤਾਂ ਜਾਂਦੇ ਨੇ ਤਲਕੋ ਤਾਂ ਜਾਂਦੇ ਨੇ ਵੀ ਸਾਡੀਆਂ ਜਿਹੜੀਆਂ ਸਾਰੀ ਲੋੜਾਂ ਨੇ ਪੂਰੀ ਹੁੰਦੀ ਐਸੇ ਕਰਕੇ ਚਾਤਨ ਕੋਲ ਵੀ ਤਾਂ ਹੀ ਜਾਉਗਾ ਧਰਮਾ ਚਾਤਨ ਕੋਲ ਵੀ ਤਾਂ ਹੀ ਜਾਂਦੇ ਨੇ ਤੇ ਉੱਥੇ ਜਿਹੜਾ ਸਾਰੀ ਲੋੜਾਂ ਵਾਸਤੇ ਨਾ ਜਾਂਦਾ ਉਹ ਦੋਏ ਸੌ ਜਾਂਦਾ। ਕੋ ਉਹ ਪੂਰੀ ਕਰਦੇ ਕਰਦੇ। ਪਤੰਗ ਹੋਣੀ ਕਿਤੇ। ਕਿਉਂਕਿ ਜੋਰੂ ਲੋੜ ਹੈ। ਕੋਲ ਪੂਰੀ ਹੁੰਦੀ ਹੈ ਉਹ ਦੋਹਾਂ ਉਹ ਦੋਹਾਂ ਇਸ ਕਰਕੇ ਨਹੀਂ ਜਾ ਰਿਹਾ ਨਾ ਉਹਦੀ ਲੋੜ ਪੂਰੀ ਨਹੀਂ ਹੁੰਦੀ। ਉਤਾਰੀ ਜਾ ਰਿਹਾ। ਉਹਨੂੰ ਭੁੱਖ ਹੋ ਗਈ ਹੋਰ ਉਹਦੀ ਹੋਰ ਭੁੱਖ ਹੈ। ਹੈ। ਹੈ ਲਈ ਸੰਜੋ, ਸ਼ਰਮ ਕਰੋ, ਥਾਕ ਪਰੋਗਾ ਵਾ। ਆਰੇ। ਹੈ ਲਈ ਸੰਜੋ। ਥੈਲੀ ਕਰੋ, ਥੈਲੀ ਖਜ਼ਾਨੇ ਦਾ ਇਕੱਠੇ ਕਰੋ। ਵਾਲੇ ਇਕੱਠੇ ਕਰੋ। ਥੈਲੀ ਉਹ ਹੁੰਦੀ ਹੈ ਜੀ ਹਰ ਵਕਤ ਤੁਹਾਡੇ ਨਾਲ ਰਹੇ। ਥੈਲੀ ਨਾਲ ਹੁੰਦੀ ਹੈ। ਥੈਲੀ ਵਾਲਾ ਜਿਹੜਾ ਹੁੰਦਾ ਨਾ ਅੱਗੇ ਬਡੂਆ ਹੁਣ ਬਡੂਆ ਰਹਿ ਕੇ ਥੈਲੀ ਹੁੰਦੀ ਸੀ ਹਾਂ ਜੀ ਹਲੋ ਦੋ ਜਰੂਰੀ 30 ਰੁਪਏ ਆ ਦੂਏ ਬੋਰਾ ਉਹ ਤਾਂ ਥੈਲੀ ਹੁੰਦੀ ਸੀ ਹੁਣ ਬਡੂਆ ਕਾਹਨ ਲਾਗੇ ਲੋਡਾ ਥੈਲੀ ਸੱਚੋ ਉਹ ਥੈਲੀ ਇਕੱਠੀ ਕਰੋ ਜਿਹੜਾ ਨਾਲ ਹਰ ਵਕਤ ਜੋ ਹੈ ਤੇਰੇ ਨਾਲ ਰਹੇ ਤਾਲੂ ਆਹ ਦਾ ਥੈਲੀ ਆ ਇਹ ਥੈਲੀ ਪਾ ਲੋ ਜਿਹ ਨਾਲੇ ਰਹਦੀ ਹੈ ਥੈਲੀ ਗੁਰਮੇਰਾ ਸੰਗ ਸਦਾ ਹੈ ਤੇ ਤੇ ਗਿਆਨ ਗੁਰ ਗਿਆਨ ਗੁਰਦਾਰ ਤੇ ਤੇ ਗਿਆਨ ਜੋ ਮੈਂ ਗਿਆਨ ਇਕੱਠਾ ਕੀਤਾ ਹਰ ਵਕਤ ਮੇਰੇ ਉਹਦੇ ਕੋਲੇ ਉੱਥੇ ਜਾ ਕੇ ਕੋਈ ਬਰੀਜ ਐ ਦੇਖ ਲੂ ਉੱਥੇ ਕਰੇ ਕਮਾਉਣਾ ਜੇ ਨਾ ਕਰਾਉਂ ਤਾਂ ਪਰਮਕਾਰ ਦਾ ਕਰੇ ਦਊਗਾ ਜੇਦਾ ਭਰਾ ਦਾ ਕਰੇ ਦਊਗਾ ਉਹਦਾ ਕੋਲੇ ਹੈ ਇਹ ਗੋਲ ਘਰ ਵਾਂਗਤ ਕੋਲੇ ਰਹਿਣ ਦੇ ਜਿੱਥੇ ਮਰਜ਼ੀ ਚਲੇ ਜਾਓ ਆ ਵੀ ਗਿਆ ਮੈਂ ਡਾਕਟਰੀ ਘਰੇ ਭੁੱਲਿਆ ਇਹ ਨਹੀਂ ਕਦੇ ਹੋਵੇ ਬਈ ਫਾਈ ਡਾਕਟਰੀ ਦਾ ਸੰਸਾਰੀ ਜਿਹੜਾ ਗਿਆਨ ਥੈਲੀ ਦਾ ਸਮਝ ਆ ਗਈ ਬਥੈਲੀ ਕੀ ਹੈ ਬਥੈਲੀ ਤਾਂ ਵਰਤੀ ਹੈ ਲਾਫਜ਼ ਨਾਲ ਰਹਿਣ ਕਰਕੇ ਬਥੈਲੀ है, है ना ਵਾਲੀ ਚੀਜ਼ ਹੈ ਨਾ ਜੀ ਤੋਂ ਆਪਾਂ ਜੈਮਰ ਜੀ ਘੱਟਣੇ ਲੋੜ ਪੈਣ पैसा, ਖਰਚਣੇ ਨੂੰ ਪੈਸਾ ਜੇ ਉਹ ਪੈਸਾ ਗੱਠ ਕਹਦੇ ਬਾਣੀ ਗੱਠ ਬਾਣੀ ਗੱਠ पोथी है ਕੋਡਾ ਡੋੜ ਲਾਉਂਦੇ ਕੋਈ ਪੋਤੀ ਹੈ ਜੀ ਆ ਬਾੜ ਕਰਦੇ ਨਹੀਂ ਪੋਤੀ ਹੈ ਜੀ ਬਾੜ ਕਰਦੇ ਜੇ ਬਾਣੀ ਪਰਦਲਾ ਪੈਸਾ ਹੋਆ ਜਿਹੜਾ ਤੇਰੇ ਜੇਬ ਚ ਤੂੰ ਬੜੂ ਅਗੜ ਲੈਵੇ ਕੋਈ ਕਿਤੇ ਬਾਹਰ ਗਿਆ ਜੇ ਤੇ ਜਿੰਨੇ ਮਰਜ਼ੀ ਪੈਸਾ ਉਹ ਉੱਥੇ ਫਿਰ ਪੈਸਾ ਹੋ ਜੂਗਾ ਕੀ ਕਰੀਏ ਵੀ ਤੇਰੀ ਸੱਚੋ ਕਰੋ ਸ੍ਰਮ ਕਰੋ ਸਾਥ ਪਰੋਗਾ ਭਾਰ ਐਸਾ ਸ੍ਰਮ ਕਰੋ ਜਿਹੜਾ ਥੈਲੀ ਚ ਬੋਲ ਰਹਾ ਤਾਂ ਉਹਦੇ ਨਾਲ ਇਹ ਠਾਕ ਪਰੋ ਇਹ ਮੇਰੇ ਥੈਲੀ ਬਾਹਰ ਨਹੀਂ ਇਕੱਠੀ ਕਰ ਰਹੇ ਉਹਦੀ ਗੱਲ ਹੈ ਸਾਡੀ ਬੱਚੋ ਸਮ ਕਰੋ ਠਾਕ ਤੇਰੇ ਰਕੋ ਥੈਲੀ ਤਾਂ ਉਹ ਵੀ ਹੈ ਇਹ ਤਾਂ ਇਕੱਠੀ ਕਰਨ ਕਦੇ ਤੱਕ ਆ ਰਿਹਾ ਇਹ ਥੈਲੀ ਇਕੱਠੀ ਕਰਨ ਦਾ ਹੋਇਆ ਪਾਥੈਲੀ ਉਹ ਨੂੰ ਕਹਿੰਦੇ ਨੇ ਜਿਹੜੀ ਤੇਰੇ ਨਾਲ ਰਹਦੀ ਹੈ ਮਨ ਕਾ ਕਾਮ ਨਾ ਹੋਈ ਜਿਹੜੀ ਬੰਦ ਦੇ ਕਮਰੀ ਹੋਣੀ ਥੈਲੀ ਉਹ ਕਬਾਰਾਂ ਤੇ ਚੱਲਣ ਲੱਗੇ ਆਪ ਵੇਲੇ ਜੋ ਥੈਲੀ ਬੰਦ ਦੇ ਇਹਦਾ ਮਤਲਬ ਹੈ ਬੰਦ ਦੇ ਕੰਬਲ ਵਾਲੀ ਥੈਲੀ ਹੋਵੇ ਬੰਦ ਦੇ ਕੰਬਲ ਵਾਲੀ ਥੈਲੀ ਹੈ ਇੱਕ ਇੱਕ ਤੇ ਸਾਡੇ ਸਰੀਰ ਦੇ ਕੰਮ ਹੋ ਰਾ ਨਹੀਂ ਚਾਹੀਦਾ ਉਦੋਂ ਹਰ ਟਾਂਕੇ ਭਰ ਲਓ ਪੰਡਾਲ ਜਾਂਦੇ ਆ ਹਰ ਟਾਂਕੇ ਭਰ ਲਓ ਪੰਡਾਲ ਉੱਤੇ ਤਾਂ ਕੱਢਣ ਵਾਲਾ ਜਿਹੜਾ ਧਾਰਨਾ ਉਹ ਦੂਆ ਹੁੰਦਾ ਆਪਣਾ ਜਿਹੜਾ ਨਾਮ ਧਾਰਨਿਆ ਗਿਆਨ ਧਰਤੀ ਚ ਜਦੋਂ ਨਾ ਤੇ ਵੀ ਹੋਰ ਭਾਸ਼ਾ ਦਾ ਲਫਜ਼ ਹੈ ਥੈਲੀ ਕੋਈ ਹੋਰ ਕੋਈ ਕੋਈ ਜਿਹੜੀ ਹੈ ਉਹ ਥੈਲੀ ਦੀ ਗੱਲ ਉਹਨੇ ਕੀਤੀ ਹੈ ਵੀ ਸਮਝੋ ਥਕੋ ਬਹੁਤ ਥੱਕਦੇ ਹਨ ਥੈਲੀ ਮੈਨੂੰ ਸਟੋਰ ਕਰਨ ਦੀ ਗੱਲ ਹੈ ਕਠਾ ਗੰਦੀ ਇਕ ਤਾਂ ਲੋਨ ਜਿੰਨਾ ਕੁ ਵਰਤਦਾ ਹੈ ਸਟੋਰ ਕਰਨ ਦੀ ਗੱਲ ਹੋ ਗਈ ਸ਼ਾਇਦ ਨਹੀਂ ਨਹੀਂ ਸਟੋਰ ਇਹ ਕਰਨਾ ਹੈ ਥੈਲੀ ਥੈਲੀ ਸਟੋਰ ਕਰਨ ਦੀ ਨਹੀਂ ਥੈਲੀ ਕਰਨ ਦਾ ਕੋਈ ਸੰਚਣਾ ਇਹਦਾ ਕੋਈ ਇਕੱਠੀ ਕਰਕੇ ਢੇਰ ਵਕਤ ਥੈਲੀ ਜਿੱਕਾ ਠੀਕ ਕਰੀ ਥੈਲੀ ਭਰ ਦੀ ਹਾਂ ਥੈਲੀ ਤਾਂ ਉਦੋਂ ਹੀ ਪੈਣੇ ਲੋ ਆਉਮੇ ਬਣਾ ਹਾਂਜੀ ਮੰਨ ਕਾ ਕੰਮ ਨਾ ਵਾਰ ਅੰਤ ਕਰਦੇ ਅੰਤ ਤੇ ਗੋਬਿੰਦ ਪਜੋ ਸੰਤਾਂ ਕੀ ਸਿੱਖ ਲਿਓ ਖੇਤ ਪਾਬੋ ਗੋਬਿੰਦ ਪਜੋ ਜੇ ਤੁਸੀਂ ਚਾਹਦੇ ਹੋ ਫਿਰ ਹੋ ਗੋ ਤਾਂ ਫਿਰ ਗੋਵਿਰਧਨ ਗੁਰ ਆਪਣੇ ਅੰਦਰ ਆਣੇ ਲਿਜੋ ਇਹ ਸੰਤਾਂ ਦੀ ਸਿੱਖਿਆ ਰੋ ਜਿਹੜੇ ਸੰਤ ਇਹ ਸਿੱਖਿਆ ਦਿੱਤੇ ਕੇ ਅਸਰ ਲਿਜੋ ਆਪਣੇ ਫਿਰ ਹੋ ਜਾਵੋ ਉਹ ਸਿੱਖਿਆ ਲਓ ਸਤਨ ਕੀ ਅਸਾ ਜਿ ਸਿੱਖਿਆ ਜਿਹੜੇ ਸੰਤਾਂ ਨੇ ਸਾਡੇ ਨਾਲ ਜੁੜੋ ਉਹ ਸਤਰੀ ਉਹ ਆਵੇ ਸਤਰੀ ਹੋ ਜੇ ਕਿਹतरी ਹੋ ਸਕਦਾ ਹੈ ਫਿਰ ਉਹੀ ਹੋ ਸਕਦਾ ਹੋ ਸਕਦਾ ਹੈ ਤੇਰ ਅਤੇ ਦੇ ਵਿੱਚ ਕੋਈ ਫਰਕ ਹੈ ਬਹੁਤ ਜ਼ਿਆਦਾ ਹੂੰ ਤੇ ਤੋਂ ਹਦਾ ਟਿਕਿਆ ਹੋਇਆ ਜਿਹੜਾ ਡੋਲਰ ਹੂੰ ਡੋਲਰ ਨਹੀਂ ਹੂੰ ਥੱਲੀ ਹੈ ਹੂੰ ਦੇ ਵਿੱਚ रहेगा करदा कोई नहीं डोलदा तो है दी पर वो माया तो अलग बैठा है वो माया तो अलग है थे ता ता का करदा कोई हैगा पर डोलदा है हैं <coughs> माया <coughs> ना सुंदर तेरी ओदा जदों माया ना बिल्कुल कोई सुंदरी सिर्फ आकाश ना सुंदर कहते है ਜਿੱਦਾਂ ਜਿਹੜਾ ਸਰੀਰ ਨਾਲ ਸੰਬੰਧ ਹੈ ਥੇਤ ਹੋ ਸਕਦਾ ਛੱਡੀ ਹੋ ਥੇਤ ਪਾਈ ਜਾ ਵਿਸ਼ਰਾਮ ਵਿਸ਼ਰਾਮ ਮੰਨ ਲੇਂਦਾ ਹਾਂ ਹੁਣ ਤੇ ਕਿਉਂ ਕੰਮ ਬੈਠੋ ਬਸ ਬਸ ਬਸ ਤਾਂ ਹਮੋਂ ਨੀ ਹੈਗਾ ਕਲਪਨਾ ਨਹੀਂ ਕਰਦਾ ਇੱਛਾਵਾਂ ਨਹੀਂ ਪੈਦਾ ਹੁੰਦੀਆਂ ਕੋਈ ਚਿੰਤਾ ਨਹੀਂ ਕੋਈ ਬਸ ਬੁਰਕਾ ਹਾਂ ਤੇਨੇ ਕਵੀ ਜੀ ਆਹ ਮੋ ਤੇ ਕਹਿੰਦਾ ਥੁੰਨੀ ਪਾਈ ਥਿਤ ਪਈ ਹਾਂ ਥੁੰਨੀ ਥੁੰਨੀ ਪਾਈ ਥਿਤ ਪਈ ਬਿਲਕੁਲ ਗੁਰੂ ਉਹ ਕੀ ਭਈ ਨੂੰ ਚਿੰਨ ਥੋਡੀ ਜਿਹੜੀ ਹਾਂ ਉਹ ਦਰੂਪੀ ਆ ਤੁੰਮੀ ਆ ਫੱਬੀ ਰੁਗੈ ਜਿਆਦਾ ਜ਼ੋਰ ਤੱਕ ਲਗੀ ਫਿਰ ਬਣ ਗਿਰਦਾਰੀ ਥਲੇ ਜਿਵੇਂ ਬਰ ਰੁਪੀ ਛੱਤ ਗਿਰਦੀ ਆ ਨਾ ਮਾਰ ਕੋਠਾ ਅਨਸਰ ਛੱਤ ਕੋਠਾ ਜਾਂ ਥੱਲੇ ਰੁਗਰਦਾਂ ਥੱਲੇ ਥੱਬੀ ਲਾਗੀ ਤੇ ਖੜ ਜਾਈਂ ਅੱਗੇ ਸਤੀਰ ਤੋਂ ਕਰਾ ਕੇ ਥੱਬੀ ਲਾ ਦਦੇ ਤਾਂ ਕਮਜ਼ੋਰ ਦੇਖਿਆ ਵੇ ਤੂੰ ਤੂੰ ਵੀ ਲੱਗੀ ਉਹ ਗੱਰੀ ਆਸੀ ਬੋ ਫੱਲੇ ਰੂ ਗੱਰੀ ਆਸੀ ਜਦ ਸੁਰਤ ਟਿਕ ਗਈ ਥੱਭੀ ਲੱਗੀ ਬਸ ਬੋਲ ਡਾਉਨ ਤੇ ਹੁਣੀ ਪਾਈ ਪਾਈ ਹਾਂ ਹੁਣੀ ਪਾਈ ਤੇ ਤਬਈ ਜੇ ਅਚਾ ਜਿਹੜੀ ਸੁਰਤ ਸੀ ਡੋਲਦੀ ਉੱਤੇ ਬੋਝ ਆਇਆ ਹੈ ਵੀਰ ਜੀ ਥੱਭੀ पे ਮੈਨੂ ਥੱਭੀ ਵੀ ਧਰ ਹੋ ਗਈ ਪਰ ਵੀ ਜੋ ਰੋ ਗਿਆ ਦੋਹੇ ਨੂੰ ਪਰ ਉਹ ਦਬੀ ਉਹ ਹਰਾਰੀ ਕਰਨ ਦੇ ਦੱਤੇ। ਅੱਬੀ ਦੇਤੀ YouTube ਉਹ ਜਾਂਦੇ ਨੂੰ ਬਹਿਣਾ। ਇਹ ਨਾ ਥੋਨੀ ਦੇਰ ਕੀਤਾ ਜਿਹੜਾ ਉਹ ਕੋਈ ਹਾਂ ਛੋਟਾ ਕੋਈ ਹੁੰਦਾ ਕੇ ਉਹ ਇਕੜੀ ਥੋੜੀ ਯੂਪੀ ਦਾ ਲਾਭ ਜਦੋਂ ਛੱਪਰ ਬਣਾਉਂਦੇ ਨੇ ਲੱਕੜਾਂ ਸਿੱਧੀਆਂ ਉਹਨੂੰ ਬਲੈਂਡਾ ਅਸ਼ਰੇ ਵਾਲੀ ਦੁਜੇ ਰੁਪਏ ਤੋਂ ਨਿਕਰੀ ਤੋ ਕਿੱਤੀ ਕੀ ਦੁਇ ਥੂਨ ਘਰਾਂ ਦੀ ਉਹ ਬੰਨ ਰੁਪਾ ਉਹ ਬਲੇਡਾ ਟੁੱਟਾ ਤ੍ਰਿਸ਼ਨਾ ਚਾਂਪਰੀ ਤੇ ਉੱਪਰ ਦੁਰਗਤ ਬਾਡਾ ਫੁੱਟਾ ਉਹ ਉਹ ਅੱਜੂ ਪਿਓ ਖਬੇ ਰੁਪਏ ਦੇ ਤਾਂ ਬੰਬੇ ਕੇ ਆਇਓ ਵੀਰ ਦੱਬੇ ਇਹ ਬੁੱਧਰਤਮਨ ਉਹ ਤਮੋਈ ਇਹ ਬੰਨ ਤਮੋਈ ਦਬਲੇ ਆਇਓ ਮਾਪਾ ਕਰਿਓ ਉਹ ਥੋਬਲੇ ਨੂੰ ਥੋੜੀ ਕੈਸੇ ਥੁੱਡੀ ਪਰ ਲੱਗਣਦੀ ਹੁੰਦੀ ਐ ਧਮਲਾ ਹਟਾਣਾ ਥੱਮੀ ਆਪਾਂ ਥੱਮੀ ਗੱਲ ਦਾ ਸੁਨੇ ਗਾਦੇ ਬੱਲੀ ਵੀ ਉਹੀ ਕੰਮ ਕਰਦੀ ਆ ਬੱਲੀ ਆ ਬੱਲੀ ਹੁੰਦੀ ਆ ਉਹ ਨਾ ਉਹ ਸਮਝ ਨਾ ਬਲੀਆਂ ਲਖਾਦੀਆਂ ਨਹੀਂਆ ਸਪੋਰਟਾਂ ਇਹਨੂੰ ਇਹ ਅਜੇ ਅੰਗਰੇਜ਼ੀ ਲੱਗ ਸਪੋਰਟ ਸਪੋਰਟ ਅੰਗਰੇਜ਼ੀ ਲੱਗਦਾ ਸਪੋਰਟ ਆ ਅੱਛਾ ਤੇ ਨਹੀਂ ਸਪੋਰਟ ਤੇ ਤਪਾਵੋ ਗੁਰਿੰਦ ਪਾਓ ਕੀ ਸਿੱਖ ਦੀ ਪ੍ਰੀਤ ਕਰੋ ਸਭ ਇੱਕ ਸਿਓ ਕਿ ਸੱਚਾ ਕਰੋ ਸਭ ਦੇ ਇੱਕ ਕਰੋ ਸਭ ਇੱਕ ਸਿਓ ਕਿੱਕਰ ਉਹਨਾਂ ਪ੍ਰੇਤ ਕਰੋ ਕਿਕਰ ਉਹ ਕਿਹਾ ਬਲੋ ਤੇ ਬੁੱਧ ਜੂ ਦੂਰੀ ਬਣਾ ਲੈ ਇੱਕ ਹੋ ਉਹ ਫਿਰ ਫੇ ਮਰੀ ਬੁੱਧੀ ਦੋਖ ਦੇ ਵਿੱਚ ਛੱਡ। ਤਾਂ ਉਹਨੇ ਇੱਕ ਅਸਰ ਜਿੱਤਤਾ ਵੀ ਲਾਇਆ ਵੀ ਤੇ ਤਾਂ ਇੱਕ ਅਸਰ ਜਿੱਤਤਾ ਹੈ। ਜੇ ਇੱਕ ਕਰੇ ਜੇ ਤਾਂ ਨਾਲ ਉੱਚਾ ਪਾਸੇੋਂ ਪਾਣੀ ਜੀਤ ਕਰੋ ਸਭ ਨੂੰ ਹੈ ਆਪਾਸ ਨਹੀਂ ਉਹ ਪੀਰ ਨੇ ਤਾਂ ਗਿਆ ਮਾਨਾ ਚਤ੍ਰਿਕ ਹੋ ਚੁੱਕੇ ਫ੍ਰੀਤ ਸंसਾਰ ਦੇ ਲੋਕਾਂ ਨੂੰ ਗਿਆ ਵੀ ਜਿਹੜਾ ਇੱਕ ਮਨ ਇੱਕ ਚੇਤ ਹੈ ਉਹਦੇ ਨਾਲ ਫ੍ਰੀਤ ਕਰੋ ਹਾਂ ਸंसਾਰ ਦੇ ਲੋਕਾਂ ਨੂੰ ਜਿਹੜਾ ਇੱਕ ਆਪ ਡੁੱਬਿਆ ਹੋਇਆ ਹੈ ਉਹ ਲੈ ਕੇ ਡੁੱਬ ਜੂਗਾ ਉਹ ਕਾਲਜ ਜਿਹੜਾ ਦੂਜੇ ਉਸ ਹਰਦਵਾੜਾ ਜਾਂ ਤੇ ਸਿਕਦਾਰਾਂ ਤਿੰਨਾਂ ਬੜਿਆ ਨੋ ਉਹ ਤਾਂ ਉਹ ਕੋ ਫਾਈ ਉਹਦੇ ਜੰਦੇ ਜਾਲ ਵਾਲੇ ਨੇ ਉਹਨਾਂ ਨੇ ਪ੍ਰੇਤ ਨਾ ਕਰ ਲੈ ਜੰਦੇ ਜਾਲੇ ਚ ਸਾਲ ਇੱਕ ਜੰਦੇ ਜਾਲ ਚ ਫਸੋੜ ਵਾਲੇ ਜੀ ਇੱਕ ਪਾਲ ਉਹੜ ਵਾਲੇ ਜੀ ਜਿਹੜੇ ਇੱਕ ਬੰਦੇ ਚ ਤਰੇ ਨਾ ਜਿਹੜੇ ਇੱਕ ਹੋ ਕੇ ਰਹਿੰਦੇ ਨੇ ਸੰਸਾਰ ਚ ਆਪ ਮੁਕਤ ਸंसਾਰ ਨੂੰ ਮੁਕਤ ਕਰਦੇ ਜੇ ਕੋਈ 14 ਚਾਹਦਾ ਹੋਵੇ ਪਰ ਤੋੜਦਾ ਜਿਹੜਾ ਹੋਲੇ ਨਹੀਂ ਚਾਹਦਾ ਉਹਦਾ ਤੋਂ ਪਰ ਜਿਹੜਾ ਬੁੱਕਤ ਹੋ ਲੋ 14 ਹੋਵੇ ਉਹ ਜਿਹੜੇ ਦੂਏ ਰੇ ਜੰਕੇ ਯਾਰ ਵਾਲੇ ਉਹ ਉਹਨੂੰ ਮੇਲ ਜਾ ਕੇ ਫਸਾ ਲੈ ਤੇ ਗਾਰਡੀਨ ਤੇ ਟੋੜਾ ਦਾ ਰਸਤਾ ਉਲਟਾ ਉਹ ਰਸਤਾ ਉਲਟਾ ਪਹਾੜ ਜੋੜ ਦੇ ਲੋ ਆਪੜੇ ਨਾਲ ਜੋੜ ਦੇ ਜਿਹੜਾ ਗੁਰਮੁਖ ਹੈ ਇੱਕ ਹੈ ਉਹ ਤੈਨੂੰ ਇੱਕ ਬਣਾਊਗਾ ਉਹ ਆਪਣੇ ਨਾਲ ਜੁੜੂਗਾ ਕਹੂਗਾ ਤੇਰੇ ਅੰਦਰ ਆਪਣੇ ਉਦਾਰਾਂ ਦੇ ਨਾਲ ਜੁੜ ਤੂੰ ਵੀ ਸਾਖਤ ਹੋ ਜਿਵੇਂ ਇੱਕ ਹੋ ਜਿਵੇਂ ਜਿਵੇਂ ਉਹ ਆਪ ਇੱਕ ਹੋਇਆ ਉਹ ਤੇਨੂੰ ਇੱਕ ਕਰ ਦੂਗਾ ਉਹਨੇ ਆਪਣੇ ਬਰਾਬਰ ਦਾ ਬਣਾ ਲਿਆ ਤੇ ਜਿਹੜਾ ਆਪ ਹੈ ਉਹ ਹੀ ਆ ਬਣਾ ਲਿਆ ਨਾ ਉਹ ਜਿਹੜਾ ਦੂਏ ਨਕਲੀ ਸੋਤ ਨੇ ਆਪਣੇ ਕੋਲ ਗੱਲ ਬਣਾਉਂਦੇ ਆਪਣੇ ਚੇਲੇ ਰਸਤੇ ਤੇ ਲੋਕ ਤੇ ਚੇਲੇ ਚਾਈਦੇ ਆਪਣੇ ਵਰਗਾ ਬਣਾ ਕੇ ਉਹਨੂੰ ਸ੍ਰੀ ਕੋ ਬਣਾਉਂਦੇ। ਉਹ ਇਹ ਤੇ ਚੇਲਾ ਗੁਰੂ ਨਾ ਨਹੀਂ ਉਧਰ ਚੇਲਾ ਗੁਰੂ ਤੇ। ਇਹ ਤੇ ਚੇਲਾ ਨਹੀਂ ਸਕਦਾ। ਇੱਕ ਉਹ ਹੈ ਕਿ ਕੇ ਤੂੰ ਬਣ ਗਿਆ ਇੱਕ ਹੋਰ ਹੈ ਉਹ ਬਣ ਗਿਆ ਕਿ ਉਹ ਬਰਾਬਰ ਹੋ ਗਏ ਸਾਰ। ਇਹ ਤੇ ਭਾਈ ਰਿਸ਼ਤਾ ਸੋ ਭਾਈ ਸੋ ਬੇਰਾ ਸੋ ਇੱਟੇ ਭਾਈਆਂ ਦੀ ਦਿਲ ਵਾਲਾ ਰਿਸ਼ਤਾ ਉੱਥੇ ਗੁਰੂ ਹੋਰ ਚੇਲੇ ਵਾਲਾ ਰਿਸ਼ਤਾ ਭਾਈ ਬਰਾਬਰ ਦਾ ਹੁੰਦਾ ਇੱਟੇ ਵੀ ਬਰਾਬਰ ਦਾ ਹੁੰਦਾ ਭਾਈ ਅੱਜ ਸਾਲ ਪਹਿਲਾਂ ਦਾ ਭਾਈ ਹਿੱਸਾ ਦਾ ਬਰਾਬਰ ਆ ਗਿਆ ਆਪ ਦੀ ਜਿਹੜਾ ਬਰਾਬਰ ਆ ਗਿਆ ਬਰਾਬਰ ਦਾ ਇੱਦਾਂ ਕਾਰਨ ਕਰਨ ਕਰਾਵ ਨੂੰ ਚੇਲਾ ਨਹੀਂ ਕਿਹਾ ਹੋ ਗਿਆ ਹਾਂ ਜੀ ਕਹਿੰਦਾ ਗੁਰੂ ਕਿਤੇ ਗੁਰੂ ਤਾਂ ਕਿਤੇ ਗੁਰਬਾਣੀ ਦਾ ਗੁਰੂ ਬੰਦੀ ਹੋਣੀ ਕਿਤੇ ਇਹ ਤਾਂ ਗੁਰੂ ਅਸੀ ਕਹਿਣ ਲੱਗੇ ਇਹਨਾਂ ਨੇ ਕਹਿਆ ਭਾਈ ਸਾਡੇ ਮੂੰਹ ਚ ਪਾਇਆ ਲਾ ਇੱਕ ਵਾਰ ਗੁਰੂ ਘਰ ਆਲੋ ਫਿਰ ਹਟਸਤ ਵੇਰੀ ਹੈ ਉਹੀ ਗੱਲ ਆ ਜਿਹੜਾ ਸ੍ਰਿਸ਼ਟੀ ਰਚਿਆ ਦਾ ਕਾਰਨ ਕੌਣ ਕਾਰਨ ਵੀ ਹੈ ਆ ਬਈ ਜੀਵ ਹੈ ਗਾੜਨ ਇਹ ਤੋਂ ਤੋਂ ਹੋਇਆ ਹੈ ਕਾਰਨ ਹੈ ਕਾਰਨ ਕੌਣ ਕਰ ਰਿਹਾ ਮੇਰਾ ਜੋ ਸ੍ਰਿਸ਼ਟੀ ਕਰ ਰਿਹਾ ਹੈ ਇਹੀ ਕਾਰਨ ਹੈ ਜੀਵ ਪੈਦਾ ਜੀਵਲ ਤੋਂ ਜੀਵ ਪੈਦਾ ਵੀ ਹੁੰਦੇ ਨੇ ਜੀਵ ਜੀਵਾ ਦੀ ਪਰਲੋ ਵੀ ਕਰਦੇ ਨੇ ਜੀਵ ਜੀਵ ਨੂੰ ਮਾਰਦੇ ਵੀ ਨੇ ਕਿਤੇ ਕੰਮ ਤੇ ਦੇਖੇ ਬਾਹਰ ਦਾ ਕਿਸੇ ਨੂੰ ਮਾਰ ਦਿੱਤਾ ਜੀਵ ਜੀਵ ਨੂੰ ਮਾਰ ਦੇਰ ਕਹਿੰਦਾ ਦੇਖਿਆ ਦੇਖੇ ਜਾ ਲੱਗਦੇ ਪੂਰੇ ਦੇਖੇ ਨੇ ਕਹਦਾ ਫਿਰ ਮਾਰਨ ਵਾਲੇ ਜੀਵ ਨੂੰ ਸ਼ਿਵ ਜੀ ਵੱਲੋਂ ਆਪ ਹੂੰ ਕਰਨ ਵਾਲੇ ਨੂੰ ਬਿਸ਼ਰੂ ਵੱਲ ਲੋ ਇਹੀ ਬੰਦੇ ਬਾਣੀ ਦੇ ਕਹਤੇ ਸਿਰ ਇਹ ਤਾਂ ਅਗਰਾਂ ਤੋਂ ਤਿਲ ਕੋ ਉਹ ਪਿਆਗਰ ਬਦ ਕਾ ਮੋ ਜੀਵਨ ਹੀ ਹੋਇਆ ਜੀਵਨ ਹੀ ਹੋਇਆ ਇਹ ਸਾਰੇ ਪ੍ਰਸਾਦ ਹੀ ਦਾ ਅਸੀਂ ਲੈਂਦੇ ਇਹ ਸਾਰਾ ਆਵੇ ਵਰਤੀਏ ਨੂੰ ਉਹ ਅੱਗਲਾ ਦਾ ਰਾ ਲੈ ਰਿਹਾ ਜਿਹੜਾ ਜੇ ਸਾਨ ਆਵੇ ਸਰੀਰ ਕਾ ਕੁਟਮੇ ਕਰੂ ਜੇ ਸਰੀਰ ਨਾ ਵੀ ਕੰਮ ਲੈਂ ਕਰਦੇ ਨਾ ਤਾਂ ਵੀ ਸਰੀਰ ਨੂੰ ਚਲਾਉਣ ਵਾਸਤੇ ਦੋਹਾਂ ਦਾ ਪਾੜ ਟੋਜੇਗੇ ਬਲਕਿ ਅੰਦਲੇ ਦਾ ਜ਼ਿਆਦਾ ਅਸੀਂ ਸੁਝਦੇ ਸਾਹਿਬ ਫਿਰ ਵੀ ਹੁੰਦਾ ਸੁੱਤੇ ਪਏ ਹੁੰਦੇ ਅਸੀਂ ਸਾਹ ਹੁੰਦਾ ਸਾਹ ਲੈਦੀ ਸਭ ਲਵਾਇਆ ਹਾਂਡ ਧੜਕਦਾ ਸਾਡਾ ਸਾਡੇ ਵਾਸਤੇ ਵੀ ਸਾਡੇ ਨੂੰ ਨਾ ਬੰਦ ਕਰਨਾ ਸਾਡੇ ਵਾਸਤੇ ਨਾ ਢੋਲੋ ਬਾਜਾ ਕਿਉਂ ਧੜਕਦਾ ਐਡੀ ਫੋਰਸ ਚਾਹੀਦੀ ਕਿਥੋਂ ਦੀ ਹੈ ਉਹ ਜਿਹੜਾ ਨਾਲ ਦਾ ਅੱਧਾ ਉਹਦੇ ਹੱਥ 'ਚ ਹੈ ਸਰੀਰ ਦਾ ਵਿਯੋਗ ਜੇ ਅਸੀਂ ਕਰਦੇ ਦੀ ਤਾਕਤ ਬਣ ਤਾਂ ਸਰਦੇ। ਜੇ ਜੀ ਸਰੀਰ ਦਾ ਹਾਰ ਨਾਲ ਚੱਲੇ ਫੇ ਤੁਸੀਂ ਇਹ ਨਾਲ ਕਰਕੇ ਦਿਖਾਓ ਕੀ ਕਰੋਗੇ। ਹਾਂਜੀ ਮੈਂ ਤਾਂ ਅੱਗੇ ਖਰਾਦ ਹੁੰਦੇ ਸੀ। ਉਹ ਆਲਮੀ ਪੱਇਆ ਘੇੜਦਾ ਹੁੰਦਾ ਸੀ। ਇੱਕੋ ਟੂਲ ਲਾਉਂਦਾ ਹੁੰਦਾ ਸੀ। ਰੇਲਵੇ ਰੋਡ ਤੇ ਹੁੰਦੇ ਸੀ। ਆ ਸੀਗੇ। ਸੀ ਗੱਡੇ ਦਾ। ਉੱਥੇ ਬੜਾ ਜਿਹੜਾ ਹੁੰਦਾ ਸੀ। ਉਹ ਚਲਾਈ ਜਾਂਦਾ ਸੀ। ਹੋਲੀ ਹੋਲੀ ਹੋਲੀ ਬੇਰ ਦੇ ਚਲੀ ਜਾਂਦੇ ਸੀ ਆਪਣੇ ਸਾਡੇ ਜਿਹੜੇ ਖਿਡਾਰੀ ਰਹਿੰਦੇ ਨੇ ਉਹਨੂੰ ਖੜਾ ਦੇ ਦਿੱਤੇ ਸੀ ਉਹ ਕੱਲਾ ਦੋ ਆਦਮੀ ਕੰਮ ਕਰ ਰਹੇ ਰਹੇ ਸੀ ਅਜੇ ਉਹੀ ਹਰ ਜਿਹੇ ਚੱਕਰ ਦੇਣ ਦੋ ਇਹ ਚੱਕਰ ਦੇਣ ਤੇ ਘੜੀਏ ਢੋਲ ਵਾਲਾ ਕੀ ਕਰੂਗਾ ਹਾਂ ਜੇ ਚੱਕਰ ਦੇਣਾ ਚੱਕਰ ਦੇਈਏ ਢੋਲ ਵਾਲਾ ਢੋਲ ਨਾਲਾਵੇ ਫਿਰ ਕੀ ਹੋਊਗਾ ਕੰਮ ਨਹੀਂ ਹੋਣਾ ਉਹੀ ਜਿਹੜੀ ਬਸ ਇਹ ਤਰੀਕਾ ਹੈ ਲੋ ਕੰਮ ਕਰਨ ਵਾਲੇ ਦੋ ਸੇ ਮਿਲ ਕੇ ਦੋਵੇਂ ਲਕਾਰ ਜੋ ਉਪਜਾ ਆਹ ਜਿਹੜਾ ਕਾਰਜ ਹੈ ਦੋਹਾਂ ਤੇ ਬਿਲਕੇ ਉਪਜਿਆ ਹੈ ਰੋਲ ਹੈ ਦੋਨਾਂ ਦਾ ਰੋਲ ਹੈ ਅੱਧੀ ਅੱਧੀ ਜਾਣਕਾਰੀ ਹੋਣਾ ਬਾਕੀ ਦੇਖੋ ਕੋਈ ਕੀ ਚੱਕੜੀ ਫੜੀ ਰਖੜੀ ਭਜਣਾ ਨਠਣਾ ਉਹ ਇਹ ਤਾਂ ਹੈਗਾ ਬਾਹਰੋਂ ਸਾ ਲੈਣਾ ਅਰਹਾਰਡ ਤਲਕੋਲਾ ਹੁੰਦਲੇ ਦੀ ਪਾਵਰ ਐ। ਆਹ ਹਜਮ ਕਰਦਾ ਸਾਰਾ ਸਿਸਟਮ। ਰੋਟੀ ਦੀ ਹਜਮ ਉਹਦੀ ਦੁਆ ਲੈਦਾ। ਸਾਡੇ ਬਾਅਦ ਚ ਹੋਵੇ ਤਾਂ ਹਜਮ ਕਰਨਾ ਲੱਗਿਆ। ਅਰੇ ਕੀ ਗੱਲ ਕਹਿੰਦਾ ਵੀ ਪਤਾ ਨਹੀਂ ਹਜਮ ਦੀ ਉੱਤੇ ਰੋਟੀ। ਜੇ ਹਜਮ ਕਰਦੀ ਸਾਡੇ ਬਸ ਚ ਹੋਵੇ ਤਾਂ ਹਜਮ ਕਰਨਾ ਲਈਏ। ਕਿਉਂ ਰਾਜਮਾ 'ਚ ਖਾਣੀ ਹੱਥ ਹਜਮ ਹੋਣਾ ਹੱਥ 'ਚ। ਖਾਣ ਨਾਲ ਖੂਰ ਬੜ ਜਾਲੇ ਖੂਰ ਬਣਾਉਣਾ ਸਾਡੇ ਹੱਥ ਚ ਦੀ ਫਿਰ ਉਹਦਾ ਪੰਪ ਕਰਨਾ ਸਾਡੇ ਹੱਥ ਚ ਦੀ ਬਸ ਇਹ ਦੋਹਾਂ ਦੇ ਹੱਥ ਚ ਹੈ ਉਹ ਦੋਰ ਹੈ ਕੋਈ ਹਾਈ ਕੋਈ ਹੱਥ ਦੋਰ ਇੱਕੋ ਸਰੀਰ ਤੇ ਜੇ ਤੂੰ ਬਿਲ ਘਾਰੀ ਉਪਜਾ ਕਬੀਰ ਦੇ ਕਹਨ ਹਾਂਜੀ ਜਿਤ ਜਿਤ ਇਹਨਾਂ ਗੱਤਨੇ ਦਾ ਵਿਚਾਰੇ ਅਨਾਥ ਨੇ ਇਹ ਅਨਾਥ ਆ ਗਿਰੋ ਪਰੇ ਮਰੀ ਹਾਂ ਨਾ ਨੂੰ ਫਿਰ ਉਹ ਪਿਛੇ ਲੈ ਗਏ ਵੀ ਹੁੰਦਾ ਸਾਰਾ ਕੁਝ ਉੱਥੇ ਉਹਨਾਂ ਦੇ ਅਨਾਥ ਤਾਂ ਵੈਸੇ ਹੁੰਦੇ ਨਹੀਂ ਕਿ ਅੰਦਲੇ ਦੀ ਬਾਹਰ ਲੈਦੇ ਰੱਤ ਭਾਈ ਹੋ ਜੇ ਉੱਤੇ ਸੱਤ ਕੰਡ ਦੇ ਨਾਥੋ ਮੇਰੇ ਹੱਥੇ ਚ ਸੱਤ ਕੰਡ ਦੇ ਜਿਹੜੀ ਰਸਤਾ हो ਦੇ ਤੇ ਸੋਚ ਉਹ ਚੱਲਦਾ ਕੰਟਰੋਲ ਜੇ ਹੋਵੇ ਬਹਿਤਾ ਸਾਰੀ ਫਿਰ ਇੱਕੋ ਸਪੀਡ ਨਾਲ ਸਾਰੇ ਜਾਂ ਫਿਰ ਕੋਈ ਸਪੀਡ ਫਿਰ ਅੱਗੇ ਪਿੱਛੇ ਨਹੀਂ ਹੁੰਦਾ ਇਹ ਆਪ ਸਵੈਪ ਉਹ ਵੀ ਐ ਤਰੀਕੇ ਨਾਲ ਹੀ ਰੱਥ ਗਈ ਹੱਥ ਜਿਵੇਂ ਆਪਾਂ ਕਹਿੰਦੇ ਕਰਵਾ ਲੈਂਦਾ ਹੈ ਤੇ ਜੇ ਮਨ ਚਿੱਤ ਤੇ ਆ ਕਰਾ ਲੰਦਾ ਸਿੱਧੇ ਹੋ ਕਰਵਾ ਲੈਂਦਾ ਇਹ ਵੀ ਉਹ ਤੇ ਕਰਵਾ ਲੈਂਦਾ ਉਹ ਵੀ ਉਹ ਤੇ ਕਰਵਾ ਲੈਂਦਾ ਕਈ ਚੀਜ਼ਾਂ ਚਿੱਤ ਨਾਲ ਜਾਵਾ ਹੋਇਆ ਵੀ ਚਲ ਕਿਉਂਕਿ ਚਿੱਤ ਤਾਂ ਬਣਾ ਹੋਣਾ ਹੀ ਨਹੀਂ ਗੰਮ ਮਨ ਬੁੱਧੀ ਜੋਰ ਬਾਗੇ ਕਈ ਕੰਮ ਉਲਟ ਨੇ ਕਈ ਸਿੱਧੇ ਕੰਮ ਕਰਾ ਲੈਂਦੇ ਇੱਕ ਦੂਏ ਜੇ ਮਨ ਚਿੱਤ ਦੇ ਅੰਦਰ ਹੋਵੇ ਉਹ ਅਨਾਥ ਨੇ ਆਪ ਨਾਥ ਨਾਥ ਸਿੱਸਾ ਵਾਲਕ ਦੀ ਵਿੱਚ ਆਇਆ ਅਨਾਥ ਅਨਾਥ ਆਪਾ ਨਾਥ ਕਹਿੰਦੇ ਅਨਾਥ ਅਸੀਂ ਬਾਇਆਜ ਉਹ ਬਾਇਆ ਦੀ ਗੱਲ ਹੈ ਇਹ ਅਨਾਥ ਉਹਦੇ ਖਾਣ ਪੀਣ ਦਾ ਕੋ ਬਾਲੀਬਾਰ ਸਿਰੋ ਹੋਵੇ ਉਹ ਸਾਰਿਆਂ ਦਾ ਬਾਲੀਬਾਰ ਦਾ ਖਾਣ ਪੀਣ ਦਾ ਰਾਜ ਆਜ ਦੇ ਬੱਚਾ ਬਾਪੋ ਮਰ ਗਿਆ ਉਰੇ ਕੋਲ ਕਰੂਗਾ ਤੇ ਆਜ਼ਾਦਲੇ ਸਰੀਰ ਦੀ ਭਲਣ ਇੱਥੇ ਆਤਮਿਕ ਲੈਵਲ ਦਾ ਰਾਜ਼ ਬਣਦਾ ਹੈ ਉਸੇ ਸਰੀਰ ਦੇ ਜਦ ਅਸੀਂ ਕਹਿੰਦੇ ਆ ਕੋਈ ਅਰਾਧ ਨਹੀਂ ਤਾਂ ਉਹ ਜਿਹੜਾ ਅਰਾਧ ਨਹੀਂ ਜਿਹੜੇ ਸੰਸਾਰ ਚ ਅਸੀਂ ਅਰਾਧ ਬਣ ਕੇ ਕਹਿੰਦਾ ਸਾਡੇ ਬਣਾਏ ਹੋਏ ਮਾੜੀ ਬਚੀ ਮਰੀ ਜਿਆ ਸਭਨਾਂ ਜੀ ਉਹ ਕਾ ਇੱਕੋ ਦਾ ਨਾਤ ਪੜੋਗੇ ਉਹ ਸੱਚ ਕਰਦੇ ਹਾਂ ਉਹ ਕਿਸੇ ਦੇ ਥਰੂ ਦਿੰਦਾ ਹੈ ਵਾਲਿਆਂ ਨੂੰ ਕੌਣ ਦਿੰਦਾ ਵੀ ਪੂਰਾ ਕਾਲਾ ਬੱਚੇ ਨੇ ਅਦੇ ਜਗਦੇ ਉਹਦੇ ਨੌਦੇ ਨੇ ਉਹਨਾਂ ਦੇ ਨੌਦੇ ਦਿੰਦੇ ਨੇ ਲੰਗਰ ਚੱਲਦਾ ਗੁਰਦਾਰੇ ਲੰਗਰ ਦੇ ਨੌਦੇ ਦਿੰਦੇ ਨੇ ਆਖਿਓ ਜਿਹੜੇ ਚਲਾਉਂਦੇ ਵਾਲੇ ਦੇ ਨੌਦੇ ਦਿੰਦੇ ਪਾਪ ਉਤਾਰਦੇ ਨੇ ਜਾਂਦਾ ਨਾ ਫਿਰ ਜਾਂਦਾਦਾਲੂ ਵੇਲੇ ਸਾਗਰੀ ਅਸਾ ਦਾ ਦੋਨਾਂ ਦੇ ਉੱਤੇ ਜਾਂਦਾ ਉਹ ਵੀ ਲੰਗਰ ਮੇਰਾ ਚੱਲਦਾ ਉਹਨੂੰ ਭਰਮ ਹੋ ਜੋ ਲੰਗਰ ਅਸੀਂ ਚਲਾਉਂਦੇ ਇਹ ਤਾਂ ਉਹਨਾਂ ਦਾ ਭਰਮ ਪਰ ਜੋ ਕੁਝ ਸੰਗਤ ਦੇ ਰਹੀ ਹੈ ਆ ਰਹੀ ਹੈ ਉਹ ਸਿਰਫ ਲੰਗਰ ਵਾਸਤੇ ਆ ਰਿਹਾ ਕਿ ਸੰਗਤ ਛੱਡੀ ਨਹੀਂ ਕੋਈ ਆਵੇ ਛੱਡਿਆ ਨਾ ਬਿਲਦਾ ਗੱਜਾ ਹੋਰਸੇ ਦੇ ਵਿੱਚ ਤੇੜੇ ਵਾਲੇ ਦੀ ਸੰਸੋਰ ਦੂਜੇ ਨੂੰ ਭਰ ਬੋਝ ਉਹਨਾਂ ਦੀ ਗਲਤੀ ਹੈ ਫਿਰ ਇਹ ਅਸੀਂ ਬਦਲ ਲੀਏ ਵੀ ਸੰਤ ਬੱਲੇ ਬੱਲੇ ਵੀ ਬਣਾ ਦੇ ਤਾਂ ਲੰਗਰ ਚੱਲਦਾ ਇਹ ਤਾਂ ਸਾਡੀ ਗਲਤੀ ਹੈ ਪਰ ਜੋ ਉਥੇ ਆ ਰਹੇ ਹੈ ਜਾਂ ਜੋ ਜਾ ਕੇ ਠੀਕ ਹੈ ਗਿਆ ਬੰਦੇ ਰਹੇ ਹਮ ਗੁਰੂ ਬਾਲੰਗਰ ਦੇ ਭਾਈ ਸਰਕਤ ਹਉਦੀਆ ਸਾਧ ਦੀ ਹੈ ਏ ਕਹੇ ਗਿਆ ਬੰਦੇ ਤੇ ਬੇਜਾਉਣਾ ਕੋਲ ਆ ਗਿਆ ਉਹਨਾਂ ਦਾ ਬਣ ਗਿਆ ਜੀ ਦੇ ਦੂਤੇ ਲੈ ਹੈ ਫਿਰ ਉਹ ਆ ਗਈ ਜਦ ਕਿਉਂਕਿ ਇਹ ਆਦਤ ਹੈ ਇਹਦਾ ਜਦੋਂ ਸਰੀਰ ਮਿਲ ਗਿਆ ਉਧਰ ਜਿਹਦੇ ਦਿੱਤਾ ਉਧਰ ਉਹ ਉਧਰ ਖਾ ਫੇਰ ਗਿਆ ਹੈ ਦਾਤ ਪਿਆਰੀ ਬਚਿਆ ਦਾਤਾ ਫਿਰ ਤਾਂ ਜਿਹੜਾ ਦਿੱਤਾ ਅਲੰਗਰ ਬਾਤ ਹੈ ਉਹਦਾ ਵੀ ਰਿਆ ਫਿਰਦਾ ਸੰਤ ਦਾ ਬਣ ਗਿਆ ਚਾਹੇ ਵੇਚ ਦੇਵੇ ਮੇਹਦੇ ਜੀ ਵੀ ਚਾਹੇ ਕਿ ਦੇਵੇ ਚਾਹੇ ਲੋਟਾ ਕੇ ਕਢਾ ਦੇਵੇ ਚਾਹੇ ਉਹ ਵੇਚ ਕੇ ਕੋਈ ਗੱਡੀ ਲੈ ਲਵੇ ਟ੍ਰੋਲ ਬਾਲ ਫੇਟੋਦਾ ਹੋ ਗਿਆ ਕਿਤਾ ਦਾਦਾਰ ਬਿਸਰ ਗਿਆ ਦਾਸ ਪਿਆਰੀ ਹੋ ਗਈ ਦਾਦੋ ਜੀ ਵਰਤੀ ਇਹ ਸਾਰਿਆਂ ਦੀ ਉਹ ਹੀ ਹੈ ਸਭ ਆਏ ਆਦਮੀ ਦਾ ਵੀ ਇਸ ਵਾਰ ਦਾ ਬਰੀ ਦਸਰੇ ਦਾਤਾ ਅ ਆਇਆ ਵੀ ਦੇ ਵਾਸਤੇ ਦੁਆਇਆ ਕੀਨੇ ਆਇਆ ਉਹਨੇ ਪ੍ਰੇਰਣਾ ਦਿੱਤੀ ਵਿਦਿਆ ਦੇ ਸ਼ਾਇਦ ਉਹਦੇ ਵਾਸਤੇ ਇਸ ਸਭ ਤੋਂ ਬਾਅਦ ਉਹਨੂੰ ਦਤਾ ਕਿ ਕੋਈ ਪਤਾ ਤੇ ਕੋਈ ਬੀਜ ਕੋਲ ਉਹ ਇਹ ਵੀ ਆਖਰ ਖਾਏ ਕੋਲ ਰਲ ਕੋਈ ਤਾਂ ਖਾਣੇ ਬੀਜ ਦਾ ਕੋਈ ਭਾਈ ਉਹਨੂੰ ਵੱਢਦਾ ਕਣਕ ਬੀਜਦੇ ਨੇ ਆਪਾਂ ਪਕੜ ਲੇਖਦੇ ਨੇ ਵੀ ਆਹ ਬੱਲੀ ਦੇ ਦਾਣੇ ਕੋਲ ਖਾਊਗਾ ਬਣਾਉਂਦਾ ਆਪਾਂ ਠੀਕ ਵੀ ਤਾਂ ਆਂਦਾ ਭਈਏ ਦੋ ਫੜੇ ਬੀਜ ਹੈ ਚਲੋ ਉਹਨੂੰ ਤਿਆਰੀ ਲਈ ਚਲੇ ਕੇ ਬੱਟਣ ਵਾਲੇ ਕੋ ਬੱਟਣ ਵਾਲੇ ਕੋ ਬਹਿ ਰਾਹੀ ਆਪਰਾ ਹੋ ਲਾਈ ਵੇਮੜਾ ਹੀ ਵੇਸੇ ਖਲਿਆਣ ਪੌਂਦੇ ਤੇ ਚਲੋ ਕੋਈ ਪਾਏ ਖਲਿਆਣ ਕਿਸੇ ਨੇ ਲੋੜਿਆ ਚੁਗਿਆ ਕਿਸੇ ਨੇ ਕੱਢਿਆ ਖਲਿਆਣ ਚ ਆਰ ਗਾਹ ਨੂੰ ਇਹ ਨਹੀਂ ਪਤਾ ਖਾਊਗਾ ਕੌਣ ਘਰ ਵੀ ਆ ਗਿਆ ਚਾਹੇ مالک ਦੇ ਬਿਲਕੁਲ ਠੀਕ ਹੈ مالک ਦੇ ਘਰ ਆ ਗਿਆ ਹੁਣ ਤਾਂ مالک ਦੇ ਆ ਗਿਆ हां ਇਹਦੇ ਅੰਦਰ ਬੱਡਣ ਵਾਲਾ ਲੈ ਪੱਕੇ ਤੱਕ ਨਹੀਂ ਪਤਾਵਾ ਇਹ ਖਾਣੂ ਪਤਾ ਉਹਦੇ ਖਤਰੇ ਹੈ ਨੇ ਆ ਇਹਨੇ ਘਾੜੇ ਦੇ ਇਹ ਸਾਨੂੰ ਇਹ ਭਰ ਮੈਂ ਸਾਡੇ ਸਾਡੇ ਬਣਾ ਲੈਣਾ ਆਪਣੇ ਇਹਦਾ ਸਾਨੂੰ ਭਰ ਮੈਂ ਉਹਦਾ ਕੋਈ ਭਰ ਨਹੀਂ ਉਹਨੇ ਕੋਲ ਕਾ ਸੱਚ ਹੈ ਦੁਪਹਿਰ ਨੂੰ ਖੜੀ ਕਿਥੇ ਜਾ ਖੜੀ ਘਰ ਖੜੀ ਉਹਨੇ ਉਹਨੇ ਘਾੜੀ ਆ ਘਾੜੀ ਕਿਤੇ ਹੋ ਜਾ ਘਾੜੀ ਕਰੋਂ ਦੇ ਪੱਕੀ ਪਕਾਈ ਚਾਹੇ ਰਹਿ ਜਾਣੀ ਹੈ ਛੇਤੀ ਕਰ ਲੰਡੀ ਆ ਨਾ ਜਿੱਤੇ ਜਿੱਤ ਲਾਓ ਉਸ ਤੇ ਲੱਗੇ ਸਭ ਨੂੰ ਉਹ ਸਭ ਨੂੰ ਇਹ ਦਿੱਤਾ ਹੋਇਆ ਉਹ ਉਹ ਉਸ ਹਿਸਾਬ ਨਾਲ ਉਹ ਸਾਨੂੰ ਅਭਿਆ ਬੇਰਾ ਤੇਰਾ ਉਹਦਾ ਉਹਦਾ ਉਹ ਸਾਨੂੰ ਉਪਲੇਖਾ ਇਸ ਕੰ ਦਾ ਇਹੀ ਤਾਂ ਭਰਦੋਰ ਭਰਕੀ ਹੈ ਐਸਾ ਦਹੀ ਹੈ ਜੈਸਾ ਜੈਸਾ ਮੰਨੀ ਹੋਰ ਆਂਦੀਏ ਕੋਈ ਨਾ ਤੈਸਾ ਬਾਨ ਦੇ ਕਾ ਜੈਸ ਆ ਜੈਸਾ ਅਸੀਂ ਬਨ ਰਹਾ ਹੈ ਰੋ ਤੇ ਉਹਦਾ ਜੀ ਇੰਦੀ ਕਣਕ ਹੋਗੀ 400 ਕੋਟ ਲਹੂਗੀ ਕਿਨੇ ਖਾੜੀ ਹੈ ਪਤਾ ਨਹੀਂ ਬਿਹਾਰ ਚ ਜਾ ਕੇ ਕਿਨੇ ਖਾੜੀ ਹੈ ਖਾੜੀ ਹੈ ਅਦਾ ਇੱਕ ਬਗਾਲ ਚ ਜਾ ਕੇ ਤੇ ਖਾ ਲਈ ਹੈ ਕੀ ਹੋਣਾ ਕੋਈ ਨਾ ਸੁਸਰੀ ਉਹਦੇ ਪਿੱਛੋਂ ਫੀਸ ਦੋਸਤ ਉਹ ਉਹਦੇ ਜੋ ਬੋਰੀ ਜੋ ਦਾਣੇ ਗੱਜਰ ਦੇ ਦਰਕ ਤੇ ਪਾੜ ਗਈ ਆ ਪਤਾ ਨਹੀਂ ਕਿੱਥੇ ਕੀ ਖਾਣ ਚੱਲਦਾ ਮੰਮਨ ਬੋਲੋ ਹਾਂਜੀ ਆਹੋ ਤਤ ਤਤ ਲੱਗੇ ਨਾਲ ਕਿ ਜੰਤ ਅਨਾਥ ਜਿਵੇਂ ਜਿਵੇਂ ਤਾਂ ਲਾਇਆ ਹੋਏ ਨੇ ਲੱਗੇ ਹੋਏ ਨੇ ਅਧਾਰ ਹੋਰ ਹੈ ਇਹਨਾਂ ਦੇ ਹੱਥ ਦੀ ਕੁਛ ਨਹੀਂ ਇਹ ਅਨਾਥ ਉਹਨੂੰ ਇਹ ਉਹਦੇ ਮਨ ਦੇ ਇਹਦੇ ਸਾਰੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਰਦੇ ਅਨਾਥ ਮਲਕ ਦੀ ਸਿਸਟਮ